ਨਾ ਕਿਸੇ ਖਾਸ ਜੋਤ ਨਾਲ ਜੁੜਿਆ ਹੋਇਆ ਹੈ ਉਹ ਜੋਤਾਂ ਨਾ ਆਹਾਂ ਬਾਹਰ ਲਿਓ ਜੋਤਾਂ ਦੀ ਗੱਲ ਹੈ ਜੋਤ ਕਿਦੋਂ ਜੁੜਦੀ ਨਹੀਂ ਸੱਜ ਖਾਣ ਲਈ ਜੋਤਾਂ ਨਾਲ ਜੁੜੀ ਹੁੰਦੀ ਇੱਕ ਦੋ ਨਾਲ ਜੁੜਦੀ ਹੁੰਦੀ ਚੇਤਨਾ ਦੀ ਜੋਤ ਜੁੜਦੀ ਨਹੀਂ ਚੇਤਨਾ ਦੀ ਜਿਹੜੀ ਜੋਤ ਹੈ ਨਾ ਬੁੱਧੀ ਇਕੱਠੇ ਜਿਵੇਂ ਦੁਨੀਆਂ ਲੈਟਾਂ ਨੇ ਆਪੀ ਬਾਹਰ ਉਹ ਜਮਾ ਹੋ ਜਾਂਦੀ ਹੈ ਉਹ ਬੋਪਤੀ ਦੇ ਕਾਹ ਦੋ ਜਾਲ ਦੋ ਥੋੜਾ ਚੰਨ ਵੱਜੂਗਾ ਚਾਰ ਜਾਲ ਦੋ ਚੰਨ ਹੋਰ ਵੱਜੂਗਾ 10 ਜਾਲ ਦੋ ਚੰਨ ਹੋਰ ਵੱਜੂਗਾ ਕਿ ਥੋੜਾ ਬਦੇ ਪਰ ਇਹ ਕੋ ਦੀ ਜੀ ਅਕਲ ਇਕੱਠੀ ਕਰੀਏ ਉੱਡੀ ਹੋ ਰਹੀਦੀ ਉਸ ਲੈਵਲ ਨੂੰ ਵੱਧਾ ਲਈ ਅਗਲ ਇੱਕੋ ਹੀ ਹੋਵੇ ਸਾਰਿਆਂ ਤੈਨੂੰ ਦਬ ਲੱਗੇ। ਜੇ ਟੀਚਰ ਪੜਾਉਂਦਾ ਸਟੂਡੈਂਟ ਪੜ੍ਹਦੇ ਨੇ। ਜੇ ਸਟੂਡੈਂਟ ਦੀ ਅਕਲ ਜਮਾ ਕਰਕੇ ਟੀਚਰ ਦੀ ਅਕਲ ਨੂੰ ਵੱਡੀ ਨਹੀਂ ਹੋ ਸਕਦੀ। ਉਹ ਵੱਡੀ ਅਕਲ ਵੱਡੀ ਹੋ ਰਹੂਗੀ। ਕਿ ਵਿੱਚ ਬਈ ਜਗੜੇ ਦਰਸ ਘੜੇ ਨੇ ਜਿਹੜਾ ਦਰਸ ਉੱਚਾ ਉੱਚਾਈ ਆ ਹੋਸ। ਬਾਕੀ ਸਭ ਦੀਵੇਂ। ਇਹਨਾਂ ਜਿਹੜੀ ਅਕਲ ਹੈ ਉੱਚੀ ਅਕਲ ਹੈ ਅਕਲ ਜਵਾਨੀ ਹੁੰਦੀ ਹੁੰਦੀ ਦੋ ਜਾਲਾਂ ਦੀ ਅਕਲ ਜਵਾਨੀ ਨਹੀਂ ਹੋ ਸਕਦੀ ਦੋ ਜਾਲਾਂ ਦੀ ਅਕਲ ਜੇ ਆਪਸ ਵਿੱਚ ਚੀਚ ਵਿਚਾਰ ਕਰਦੀ ਰਹੇ ਵੱਧ ਤਾਂ ਜਾਂਦੀ ਹੁੰਦੀ ਹੋਗਾਂ ਲੱਗਾ ਥੋੜੀ ਥੋੜੀ ਕਰਕੇ ਵੱਧ ਵੀ ਸਕਦੀ ਹੈ ਘਟ ਵੀ ਸਕਦੀ ਹੈ ਜੇ ਉਹ ਵਿਚਾਰ ਕਰਨਗੇ ਅਕਲ ਵੱਧਦੀ ਰਹੂਗੀ ਜੇ ਉਹ ਬਹਿਸ ਕਰਕੇ ਇੱਕ ਦੂਸਰ ਦਾ ਵਿਰੋਧ ਕਰਨਗੇ ਅਕਲ ਘਟ ਜੂ ਇਸੇ ਕਰਕੇ ਜਿਹੜੀ ਹੈ ਬਾਦੀ ਦੀ ਅਕਲ ਬਿਰਦਸੀਆਂ ਦੀ ਹੈ ਖੋਜੀ ਉਪਜੇ ਜੇ ਤੋ ਵਿਚਾਰ ਕਰਦੇ ਨੇ ਫਿਰ ਤੋ ਖੋਜੀ ਨੇ ਜੋ ਬਹਿਸ ਕਰਦੇ ਨੇ ਫਿਰ ਉਹ ਬਾਦੀ ਨੇ ਬਾਦੀਆਂ ਦੀ ਅਕਲ ਜਿਹੜੀ ਮਾੜੀ ਮੋਟੀ ਹੁੰਦੀ ਹੈ ਉਹ ਵੀ ਘਟ ਜਾਂਦੀ ਹੁੰਦੀ ਰਾਸ ਹੋ ਜਾਂਦੀ ਹੈ ਵਿਦਵਾਨ ਹੈ ਹੀ ਵਿਦਵਾਨ ਕਿ ਵਿਦਵਾਨ ਹੁੰਦੇ ਹੀ ਬਾਦੀ ਨੇ ਵਿਦਵਾਨ ਬਾਦੀ ਦਾ ਨਾ ਬਾਦੀ ਇਹ ਦੂਜਾ ਨੋ ਵਿਦਵਾਨ ਵਿਦਿਆ ਹੈ ਹੀ ਬਖਾਦ ਦਾ ਕੰਮ ਵਿਦਿਆ ਜੋ ਬੁਖਾਰ ਪੈਦਾ ਹੁੰਦੇ ਸੀ ਉਹ ਬੁਖਾਰ ਤੋਂ ਖਲਾਫ ਹੈ ਜਿਹੜੀ ਗੱਲ ਸਾਰੀ ਜਲਦੀ ਬੁਖਾਰ ਤੋਂ ਵਿਆਦ ਬੁਖਾਰ ਤੋਂ ਖਲਾਫ ਹੈ ਇਹ ਤਤ ਗਿਆਨ ਤਤ ਗਿਆਨ ਤੋਂ ਬਿਜੋਨ ਪੈਦੇ ਹੁੰਦੇ ਨੇ ਵਿਦਵਾਨ ਤਤ ਗਿਆਨ ਦਾ ਵਿਰੋਧੀ ਹੁੰਦਾ ਤਤ ਗਿਆਨ ਦੇ ਉੱਤੇ ਹੀ ਹੁੰਦਾ ਵਿਦਵਾਨ ਤੇ ਵਿਦਵਾਨ ਨਹੀਂ ਜਾਂਦਾ ਵੀਰੇ ਉੱਤੇ ਦੀ ਕੁਝ ਹੋ ਗਈ ਨੂੰ ਜੁੜ ਬੈਦੀ ਉਹਨੂੰ ਵਿਦਵਾਨ ਹੰਕਾਰ ਹੁੰਦਾ ਹੰਕਾਰ ਨੂੰ ਛੱਡ ਕੇ ਖੋਜੀ ਮਿਲਦਾ ਕੋਈ ਜੀ ਤਾਂ ਬੰਦਦਾ ਵੀ ਮੇਰੀ ਅਕਲ ਥੋੜੀ ਹੈ ਥੋੜੀ ਆ ਫਿਰ ਆਪੇ ਹੱਕਾ ਦੀ ਰਹਿਦਾ ਕੋਈ ਜਿਹੜਾ ਉਹ ਆਪਣੇ ਆਪ ਦੀ ਅਕਲ ਨੂੰ ਥੋੜੀ ਵੱਧਉਂਦਾ ਮਦਦਾਨ ਆਪਣੇ ਆਪ ਨੂੰ ਲੂ ਬੜੀ ਇਸੇ ਕਰਕੇ ਵਿਦਵਾਨ ਜਿਹੜਾ ਹੈਗਾ ਪੱਡਰ ਦੇ ਹਿੱਸੇ ਵਿੱਚ ਵਿਦਵਾਨ ਲਫ਼ਜ਼ ਆਇਆ ਹੈ ਮੜਤਰੂ ਹੋਰ ਕੇ ਔਰ ਲਬ ਲਵਕਾਰ ਨੂੰ ਛੱਡਦਾ ਜੀ ਉਹ ਦਾ ਵਿਦਵਾਨ ਲਬ ਲਵਕਾਰ ਛੱਡ ਕੇ ਹੀ ਗੁਰੂ ਬਹਲਦੇ ਹੋ ਕੇ ਨਾ ਜੋਤ ਜੁਤਮ ਜੋਤ ਜੁੜਿਆ ਆ ਨਹੀਂ ਨਾ ਕਿਸੇ ਨਾਲ ਕਿਸੇ ਖਾਸ ਬੰਦੇ ਨਾਲ ਹੀ ਜੁੜਿਆ ਹੋਇਆ ਉਹ ਕਿਸੇ ਤੇ ਖਾਸ ਉਹਦਾ ਆਪਣਾ ਆਪਣਾ ਪਰਾਇਆ ਆ ਜੁੜੇ ਹੋਏ ਨੇ ਆਪਣਾ ਪਰਾਇਆ ਜੀ ਆਪਣਾ ਪਰਿਵਾਰ ਬਣਾ ਦਾ ਮਤਲਬ ਹੈ ਉਹਦੇ ਨਾਲ ਖਾਸ ਜੁੜੇ ਹੋਏ ਆਪਣੇ ਨਾਲ ਆਪਾ ਉਹਦੇ ਨਾਲ ਡੇਢਤਾ ਹੈ ਇਹ ਜੀ ਡੇਢਤਾ ਉਹ ਨਹੀਂ ਰੱਖਦਾ ਕਿਸੇ ਜੀਵ ਨਾਲ ਖਾਸ ਡੇਢਤਾ ਨਹੀਂ ਕਿਸੇ ਨਾਲ ਖਾਸ ਦੂਰੀ ਨਹੀਂ ਜੀਵ ਕੀ ਹੈ ਮਤਲਬ ਹੈ ਜਿਹੜਾ ਆਤਮ ਗਲੀ ਹੋ ਜਾਂਦਾ ਪ੍ਰਵਾਦ ਮਗਰਨੀ ਦੇ ਨਾਲ ਚਲਦੀ ਹੈ ਤੁਹਾਨੂੰ ਅਸ ਪ੍ਰਵਾਦ ਮਗਰਨੀ ਆ ਪ੍ਰਭੂ ਇਹ ਇੱਕਾ ਜਿਹੜਾ ਪ੍ਰਭ ਹੈ ਉਹਦਾ ਸੁਭਾਅ ਉਹ ਸੱਚ ਕਰਨ ਦਾ ਸੁਭਾਅ ਇੱਕੋ ਇੱਕੋ ਉਹ ਵੀ ਕਿਸੇ ਨਾਲ ਜੁੜਿਆ ਹੋਇਆ ਨਹੀਂ ਜਿਹੜਾ ਇੱਕ ਦੀ ਪ੍ਰਾਪਰਟੀ ਆਈ ਹੈ ਗੁਰੂਪ੍ਰਭੂ ਜਿਹੜਾ ਸੁਭਾਅ ਹੈ ਉਹ ਸੱਚ ਦਾ ਸੁਭਾਅ ਇੱਕੋ ਹੀ ਹੈ ਬਸ ਉਹਦਾ ਵੀ ਨਾਂ ਕੋਈ ਬੈਰੀ ਨਾ ਹੈ ਵਗੈਰਾ ਸੁਭ ਸੰਗ ਜੋੜਾ ਬਰ ਸੰਗ ਉਸੈਂ ਤਾਂ ਇਹ ਫਰਕ ਹੈ ਇੱਕ ਇਕੱਲੇ ਨੇ ਉਹਦੇ ਨਾਲ ਜੋੜੀ ਹੋਈ ਹੈ ਸੱਚਖੰਡ ਸਾਰੇ ਨਾਲ ਸੱਚਖੰਡ ਨਾਲ ਇਹ ਸੁਭਾ ਕਰਕੇ ਉਹੀ ਕੁਦਰਤੀ ਤੌਰ ਤੇ ਜੁੜੇ ਹੋਏ ਤਾਂ ਕਰਕੇ ਕੁਦਰਤੀ ਤੌਰ ਤੇ ਉਹਨੂੰ ਸੋਚ ਇੱਕ ਨਾ ਮਾਤ ਨਾ ਭਰਾ ਤੇ ਸੁਤਨ ਉਹਦਾ ਕੋਈ ਨਹੀਂ ਤਾਤ ਹੁੰਦਾ ਭੈਣ ਬਾਪ ਨੂੰ ਵੀ ਤਾਜ ਕਹਿੰਦੇ ਨੇ ਭਾਈ ਨੂੰ ਵੀ ਤਾਜ ਕਹਿੰਦੇ ਨੇ ਬੜੇ ਨੂੰ ਇੱਥੇ ਬਾਪ ਦੀ ਸੰਤਜੋਗੇ ਨਾਲ ਬਾਤ ਆਇਆ ਹੈ ਤਾਤ ਨਾ ਮਾਤਲ ਨਾ ਬਾਪੜਾ ਨਾ ਭਰਾ ਤੇ ਨਾ ਕੋਈ ਭਾਈ ਹੈ ਨਾ ਕੋਈ ਬੇਟਾ ਸੋਤਾ ਜਨਮ ਜੇ ਤਾਂ ਹੋਵੇ ਜੇ ਤਾਂ ਆਵਾਫ ਹੋਵੇ ਜਾਂ ਜਨਮੇ ਨਹੀਂ ਹੁੰਦਾ ਜਿਹੜੀ ਚੀਜ਼ ਦਾ ਜਿਹੜੀ ਚੀਜ਼ ਦਾ ਜਨਮੇ ਨਹੀਂ ਹੁੰਦਾ ਉਹਦਾ ਪ੍ਰਾਤਮਾਤ ਹੋ ਨਹੀਂ ਸਕਦਾ ਪੈਣ ਪਾਈ ਹੋ ਵੀ ਸਕਦਾ ਪੈਣ ਪਾਈ ਉਹਦਾ ਹੀ ਜਨਮ ਹੋਵੇ ਜਿਹੜੇ ਪੈਣ ਪਾਈ ਵੀ ਨੇ ਕਿਸੇ ਦੇ ਬ੍ਰਿਹੂਦੇ ਸੰਸਾਰ ਚ ਬ੍ਰਿਹੂਦੇ ਉਹ ਸਰੀਰ ਕਰਕੇ ਸੀ ਮਾਨ ਲੈਂਦੇ ਆ ਜੋ ਤੁਹਾਡਾ ਦਾ ਹੈ ਕਿੱਥੋਂ ਕਿੱਥੋਂ ਆਉਂਦੀ ਆ ਉਹੀ ਸੰਸਾਰ ਦੇ ਬੰਦੇ ਹੋਏ ਨੇ ਪੈਣ ਪਾਈ ਸੰਸਾਰ ਚ ਬ੍ਰਿਹੂਦੇ ਕਿਤੇ ਵੀ ਨਹੀਂ ਹੁੰਦੇ ਸਰੀਰ ਕਰਕੇ ਬੰਦੇ ਹੋਏ ਨੇ ਜੋਤ ਕਿੱਥੋਂ ਆਉਂਦੀ ਆ ਕਿੱਥੇ ਚਲੀ ਜਾਂਦੀ ਕਿਸੇ ਨੂੰ ਪਤਾ ਹੀ ਨਹੀਂ ਜਾਂਦਾ ਬੋਲਦੀ ਜੋਤ ਹੈ ਰਿਸ਼ਤੇ ਜੋਤ ਨਾਲ ਲੈਨ ਸਰੀਰ ਦੇ ਤਾਂ ਰਿਸ਼ਤੇ ਬਿੱਟੀ ਦੇ ਜਾ ਜੋਤ ਨਾਲ ਸਰੀਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ ਉਹ ਸਰੀਰ ਜਾੜਾ ਹੈ ਜੋ ਚੇਤਨ ਕੋਈ ਕਿਸੇ ਦਾ ਰਿਸ਼ਤਾ ਹੈ ਹੋਰੀਏ ਬੰਦੇ ਹੋਏ ਨੇ ਸਾਡੇ ਇਹ ਮੰਨੀ ਚੀਜ਼ਾਂ ਨੇ ਮੰਨੀ ਹੋਈ ਚੀਜ਼ ਨੂੰ ਮਨਮਤ ਕਰਦੇ ਹਾਂ ਅਸੀਂ ਜੋ ਚੀਜ਼ ਸੱਚ ਹੈ ਰਹੀ ਅਸੀਂ ਉਹਨੂੰ ਸੱਚ ਮੰਨਿਆ ਹੋਇਆ ਹੈ ਉਹ ਹੈ ਅਸੀਂ ਜੀਵਨ ਜਗਦਾ ਸੱਚ ਕਰਕੇ ਮੰਨ ਲਿਆ ਭਰਾ ਹੁੰਦਾ ਹੈ ਭੈਣ ਹੁੰਦੀ ਹੈ ਭਾਈ ਹੁੰਦਾ ਹੈ ਮਾਂ ਹੁੰਦਾ ਹੈ ਉੱਦਾਂ ਹੀ ਨਹੀਂ ਇਹਨੂੰ ਸੱਚ ਮੰਨ ਲਿਆ ਵੀ ਹੁੰਦਾ ਐਵੇਂ ਫਰਜੀ ਨਾਂ ਰੱਖੇ ਰਹੇ ਤੇ ਫਰਜੀ ਨਾਂ ਸਮਝ ਆ ਜਾਂਦਾ ਰਸੀ ਉੱਦੜ ਜਾਂਦੀ ਹੈ ਡੋਰ ਲਿਪਟੀ ਹੋਈ ਹੈ ਡੋਰ ਲਿਪਟੀ ਹੋਈ ਹੈ ਨਾ ਜੜੀ ਉਹਨਾਂ ਜਿਹੜੇ ਲਿਪਟੀ ਹੋਏ ਇਹਨਾਂ ਜਿਹੜੇ ਅਸੀਂ ਸੱਚ ਬਣਿਆ ਹੋਇਆ ਜਦ ਸਾਨੂੰ ਸਮਝ ਆ ਗਈ ਕਿ ਸੱਚ ਹੈ ਜਿਹੜਾ ਪੈ ਉੱਧਰ ਜਾਂਦੀ ਹੈ ਆਪੇ ਘੜਨਾ ਢੱਲੀਆਂ ਭਜ ਜਾਂਦੀ ਹੈ ਜਿਹ ਰੋਗ ਨਾ ਸੋਗ ਨਾ ਭੋਗ ਭਉਣ ਰੋਗ ਬਿਮਾਰੀ ਕੋਈ ਨਹੀਂ ਆ ਬਿਮਾਰੀ ਕੀ ਕੀ ਹਣੀ ਔਗੜ ਆਤਮਾ ਨੂੰ ਔਗੜਾਂ ਦੀ ਬਿਮਾਰੀ ਹੁੰਦੀ ਹੈ ਉਹ ਟੀਵੀ ਦਾਤਵ ਨੂੰ ਹੁੰਦੀ ਨਹੀਂ ਉਹ ਰੋਗਾਂ ਦੀ ਬਿਮਾਰੀਆਂ ਔਗਣ ਦੇ ਨਾਲ ਚਿੱਤ ਵੀ ਹੁੰਦੀ ਜਿੱਥੇ ਔਗਣਾ ਤੇ ਚਿੱਤ ਹੈ ਕੋਈ ਔਗਣਾ ਹੈ ਠੀਕਾ ਕੋਈ ਚਿੱਤ ਵੀ ਹੈ ਨਹੀਂ ਰੋਗ ਨਾ ਸੋਗਨ ਭੋਗ ਭੌਣ ਕਿਉਂਕਿ ਉਹ ਸੰਸਾਰ ਦਾ ਕੋਈ ਵਿਦਾਰਤ ਖਾਦਾ ਹੀ ਨਹੀਂ ਸੰਸਾਰ ਦੇ ਜਿਹੜੇ ਭੋਗ ਨੇ ਉਹ ਰੋਗ ਪੈਦਾ ਕਰਦੇ ਨੇ ਭੋਗਮ ਤੇ ਰੋਗਮ ਆਦੀ ਵੜੀ ਚ ਇਹ ਜਿਹੜੇ ਸੰਸਾਰ ਦੇ ਪਦਾਰਥ ਖਾਣੇ ਨਾਲ ਸਰੀਰ ਦੇ ਰੋਗ ਇਹਦੇ ਨਾਲ ਹੀ ਪੈਦਾ ਹੁੰਦੇ। ਭੋਗ ਨੂੰ ਤੇ ਰੋਗ। ਰੋਗ ਆਤਮਾ ਦੇ ਵੀ ਪੈਦਾ ਹੁੰਦੇ ਨੇ। ਖਾਣ ਲੱਗ ਲੱਭ ਹੋ ਜਾਂਦਾ। ਖਾਣ ਵਾਲੀਆਂ ਚੀਜ਼ਾਂ ਦਾ ਲੋਭ ਹੋ ਜਾਂਦਾ। ਚੀਜ਼ਾਂ ਦਾ ਲੋਭ ਹੋ ਜਾਂਦਾ। ਉਹ ਮਿੱਠਾ ਦਾ ਲੋਭ ਇਹਨਾਂ ਰਹਿਣਾ, ਉਹ ਮਿੱਠਾ ਲਾਇਆ। ਨਾ ਭੋਗ ਪੋਗ ਉਹਨਾਂ ਦਾ ਮਤਲਬ ਉਹ ਸਾਰੇ ਪਦਾਰਥ ਜਿਹੜੇ ਪਥੀ ਤੋਂ ਪੈਦਾ ਹੁੰਦੇ ਧਰਤੀ ਤੋਂ ਪੈਦਾ ਹੋਣ ਵਾਲੇ ਪੋਗ ਉਹਨਾਂ ਦੀ ਗੱਲ ਐਸਾ ਕੋਈ ਪਦਾਰਥ ਨਹੀਂ ਖਾਂਦਾ ਜਿਵੇਂ ਫਲ ਫਰੂਟ ਪੈਦਾ ਹੁੰਦਾ ਧਰਤੀ ਤੋਂ ਪੈਦਾ ਹੁੰਦਾ ਸਾਲ ਸਬਜ਼ੀ ਪੈਦਾ ਹੁੰਦੀ ਹੈ ਧਰਤੀ ਤੋਂ ਪੈਦਾ ਹੁੰਦੀ ਹੈ ਅੰਡ ਵਗੈਰਾ ਪੈਦਾ ਹੁੰਦਾ ਧਰਤੀ ਖਾਦਾ ਇਹ ਗੱਲ ਇਹ ਚੀਜ਼ਾਂ ਦਾ ਸਰੀਰ ਖਾਂਦਾ ਗੱਲ ਇਹ ਸਮਝਾਈ ਆ ਵੀ ਇਹ ਤਾਂ ਸਰੀਰ ਖਾਂਦਾ ਇਹਨਾਂ ਵਾਰ ਤੱਕ ਰੂਹਮ ਗਾਣੀ ਕੋਈ ਖਾਂਦਾ ਹੀ ਨਹੀਂ ਸਰੀਰ ਕਰਕੇ ਸਰੀਰ ਕਰਕੇ ਤਾਂ ਖਾਂਦਾ ਪਰ ਸਰੀਰ ਖਾਂਦਾ ਰਹਾਂ ਆਤਮਾ ਨਹੀਂ ਖਾਂਦੇ ਸਰੀਰ ਤਾਂ ਖਾਂਦਾ ਸਰੀਰ ਤਾਂ ਇੱਥੇ ਹੀ ਬਣਿਆ ਇੱਥੇ ਦੀਆਂ ਚੀਜ਼ਾਂ ਖਾਂਦਾ ਇੱਥੇ ਰਹਿ ਜਾਂਦਾ ਆਤਮਾ ਨੇ ਖਾਦੇ ਉਦੋਂ ਕੁਛ ਆਤਮਾ ਦੇ ਖਰਾ ਕੀ ਜਿਹੇ ਜੰਪਾ ਕੇ ਨਰੋ ਜੱਚ ਜੁਵਨ ਜਿਹਨੂੰ ਜਪਦਾ ਇਹਨਾਂ ਜਪਣ ਦਾ ਹੁੰਦਾ ਸਮਝ ਰਹਿਦੇ ਜਾਣ ਰਹਿਦੇ ਕਿੰਦਰ ਜਿਹੜੇ ਨੇ ਨਾ ਜਿਹੜੇ ਗਾਵਣ ਵਾਲੇ ਨੇ ਗਵਈਏ ਉਹ ਵੀ ਉਹ ਸੁਣਾ ਰਹੇ ਨੇ ਜੋ ਕੁਛ ਕਰਤਾ ਦੇਆਂ ਕਹਾਣੀਆਂ ਸੁਣਾ ਰਹੇ ਨੇ ਆਪਣੀ ਜਿਹੜੇ ਤਾਂ ਉਹਨੂੰ ਜਾਨਵਰ ਦੀ ਸਮਝਣ ਦੀ ਕੋਸ਼ਿਸ਼ ਕਰ ਰਹੇ ਜੋ ਇਕੱਠੇ ਹੋ ਕੇ ਬਲਕੇ ਗਉਦੇ ਨੇ ਅਰ ਉਹ ਵੀ ਦੀ ਕੋਸ਼ਿਸ਼ ਚਰਚਾ ਵੀ ਕਰਦੇ ਕਰਦੇ ਨੇ ਉਹਦੇ ਰੰਗਾਂ ਦੀ ਉਹਦੇ ਖੇਡ ਦੀ ਸਾਲ ਦੀ ਜਾਲਾਂ ਦੀ ਕੋਸ਼ਿਸ਼ ਕਰ ਲੈ ਕੇ ਜੋਗ ਦਾ ਉਹਦਾ ਜੁੜ ਕੇ ਨਾਰ ਨਾਰ ਨਿਪੁਸਕ ਜਾਹੇ ਲਈ ਤੀਜੀ ਕਟਾਗਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਆਈ ਦੀ ਗੱਲ ਚਲਦੀ ਇਹਨਾਂ ਲੇਤੀਜੀ ਕੈਟਾਗਰੀ ਕਿਉਂਕਾ ਹੈ ਰਿਪੁਤਸਕਾਂ ਦੇ ਜਿਹੜੇ ਹੀ ਜਿਹੜੇ ਨੇ ਖੁਦ ਰਿਪੁਤਸਕ ਆਲੇ ਨੇ ਉਹ ਵੀ ਤਾਂ ਬਣਾਏ ਨੇ ਨਾਲ ਨਾਲ ਆਈ ਗਈ ਹੈ ਰਹਿ ਗਈ ਸੀ ਕੈਟਾਗਰੀ ਉੱਤੇ ਪਰ ਇਹ ਤਾਂ ਉਹੀ ਗਲੀ ਵੀ ਚਲੇ ਲੈ ਕੁਝ ਗੱਲਾਂ ਐਸੀਆਂ ਨਹੀਂ ਜਿਹੜੀਆਂ ਆਜ ਇੱਥੇ ਲਈਆਂ ਨੇ ਇਹ ਤਾਂ ਜਿਹੜੇ ਵਿਦਵਾਨ ਨੇ ਨੂੰ ਤਾਂ ਪਤਾ ਹੀ ਨਹੀਂ ਦਿੱਤੀ ਇਹ ਤਾਂ ਅਸਲ 'ਚ ਅਸੀਂ ਇੱਕ ਸਾਖੀ ਸੁਣੀ ਹੋਈ ਹੈ ਇਹ ਜੀ ਪੱਕੀ ਬਾਣੀ ਹੈ ਉਹ ਪੱਕੀ ਬਾਣੀ ਹੁੰਦੀ ਕੀ ਹੈ ਇਹ ਜੀ ਇਹ ਕੋ ਉਹ ਐਂ ਪਾਗਲ ਕਦੇ ਲਾਣ ਲੋ ਜਿਹੜੇ ਇਹ ਰਾਣੇ ਉਹ ਲਕੀਰ ਦੇ ਫਕੀਰ ਨੇ ਅਗਰ ਜਦ ਤੱਕ ਬਾਣੀ ਬਾਹਰ ਪਈ ਸੀ ਪਰਖੋਂ ਨੂੰ ਤਾਂ ਪਰਖ ਸੀਗੀ ਨਾ ਉਹਦੇ ਇਹ ਪਰਖੂ ਸੀ ਉਹਨਾਂ ਨੇ ਪਰਖ ਕਰੀ ਕੀ ਕੋਈ ਪਰਖੂ ਹੁਣ ਫੇਰ ਨਹੀਂ ਪੈਦਾ ਹੋ ਸਕਦਾ ਕੀ ਭੱਟ ਪਰਖੂ ਦੀ ਸੀ ਪਰਖੂ ਵੀ ਪੈਦਾ ਹੋਣ ਕੱਚੀ ਪੱਕੀ ਦਾ ਸਮਝਣ ਜੇ ਕੱਚੀ ਪੱਕੀ ਸਮਝਣੀ ਨਹੀਂ ਸਿੱਖੇ ਨੀ ਬਣ ਸਕਦਾ ਉਹ ਲੋਕ ਇਹਨੂੰ ਕੱਚੀ ਪੱਕੀ ਬਣਦੀ ਸਮਝ ਨਹੀਂ ਉਹ ਗੁਰਬਾਣੀ ਨੂੰ ਵੀ ਨਹੀਂ ਸਮਝ ਸਕਦਾ ਜਿਹਨੂੰ ਸਮਝ ਆ ਗਈ ਉਹ ਉਹ ਜਾਈ ਗਈ ਜਿਲ ਜਾਣਿਆ ਸੋ ਤੁਸੀਂ ਜਿਹਾ ਜਿਹਨੇ ਲਿਖੀ ਆ ਉਹਦੇ ਵਰਗੀਆਂ ਜਿਹਨੂੰ ਸਮਝ ਲਈ ਪਰ ਪੂਰੀ ਸਮਝ ਲਈ ਫਿਰ ਕੁਝ ਜੇ ਜਾਣਿਆ ਸੋ ਤਸੀਹ ਜਿਹਾਂ ਜਿਹਨੇ ਇੱਕ ਨੂੰ ਜਾਣ ਲਿਆ ਇੱਕ ਵਰਗਈ ਆ ਫਿਰ ਉਹ ਪੱਕੀ ਵਾਲੇ ਹੁਣ ਕਿਤੇ ਲਿਖੀ ਦੀ ਜਾ ਸਕਦੀ ਕਿਤੇ ਬੋਲੀ ਦੀ ਜਾ ਸਕਦੀ ਇਹ ਤਾਂ ਹਰ ਜੁਗ ਜੁਗ ਭਗਤੋਂ ਪਾਇਆ ਇਹ ਤਾਂ ਹੁਦਦਾ ਹੀ ਰਹਿਣਾ ਇਹਨੇ ਬੁਰਖਾ ਨਾ ਉਹਨਾਂ ਦੀ ਸਮਝ ਚੌੜੀ ਹੋਦੀ ਗੱਲ ਉਹਨਾਂ ਦੀ ਸਮਝ ਨਹੀਂ ਆਉਂਦੀ ਹੁੰਦੀ ਉਹਨਾਂ ਦੀ ਸਮਝ ਤੇ ਪਰੇ ਰਹਦੀ ਗੱਲ ਰੈਣੀ ਵੀ ਆ ਪਰੇ ਹਮੇਸ਼ਾ ਰਹਦੀ ਹੁੰਦੀ ਨਰ ਨਾਰਨ ਬਾਣੀ ਪੱਕੀ ਬਾਣੀ ਐ ਦਸਾਂ ਸਹੀ ਵੀ ਕਿੱਥੋਂ ਕੱਚੀ ਐ ਜਿਹੜੀ ਬਾਣੀ ਐ ਉਹ ਸ਼ਾਮ ਤਾਂ ਲਿਖਿਆ ਸਾਰੀ ਉਹ ਪੱਕੀ ਨਹੀਂ ਐ ਇਹ ਹਰ ਖਾਨੜ ਰੇਤ ਦੇ ਵਿੱਚ ਲਾ ਕੇ ਰੱਖੀ ਹੋਈ ਹੈ ਤੁਸੀਂ ਚੁਗੜੀ ਹੈ ਇਹ ਉੱਥੇ ਚੁੱਕ ਕੇ ਪਾਸੇ ਰੱਖੀ ਹੋਈ ਹੈ ਹੁਣ ਪੜੋਗੇ ਤੁਸੀਂ ਸਮਝੋਗੇ ਤੁਸੀਂ ਇੱਥੇ ਚੁੱਕ ਕੇ ਦਿਖਾਓ ਨਾ ਹਰ ਇਹ ਖਾਨੜ ਰੇਤ ਵਿੱਚ ਖਰੀ ਇੱਥੇ ਦੱਸੋ ਵੀ ਆਹ ਪੰਕਤੀ ਕੱਚੀ ਹੈ ਪੱਕੀ ਹੈ ਐਸੇ ਕਰਕੇ ਸ਼ਾਮ ਵਾਲਾ ਰਾਮ ਵਰਤੇ ਨੇ ਜਿਹੜੀ ਸ਼ਾਮ ਵਾਲੀ ਪੰਕਤੀ ਹੈ ਖੱਚੀ ਹੋਊਗੀ ਜਿਹੜੀ ਰਾਮ ਵਾਲੀ ਹੈ ਪੱਕੀ ਹੋਊਗੀ ਇਹ ਦੋ ਤਰ੍ਹਾਂ ਦੀ ਗੱਜੇ ਕੱਚੀ ਵੀ ਹੈ ਪੱਕੀ ਵੀ ਸੰਸਾਰੀ ਗੱਲ ਵੀ ਹੈ ਆਹਾ ਨਾਲ ਨਾਲ ਨੂੰ ਪੁੱਛਦਕ ਇਹ ਸੰਸਾਰੀ ਗੱਲ ਹੈ ਦੇਖੀ ਜਿਸ ਸਾਚਾ ਪਰ ਸੰਸਾਰੀ ਗੱਲ ਹੈ ਉੱਥੇ ਵੀ ਹੈ ਸੰਸਾਰੀ ਗੱਲ ਕੱਚੀ ਬਾਣੀ ਉਹ ਚ ਵੀ ਹੈਗੀ ਹੈ ਜਿਵੇਂ ਸੰਗਲ ਬਨਾਸਪਤ ਮੈਂ ਬੈ ਇਹ ਸੰਸਾਈ ਉਹ ਹੈ ऐ दी भक्ति संसारियो सच्चा सगले दूध में किया ਅਗਲੀ संसारियो सच्चा अगली भक्ति है जरा गरी सच तैसे ही हर बसे नाल उथे भी दएगी अदी कच्ची अदी पक्की उथे अगर कच्ची है दी संसारियो सच कच्चाई हुंदा संसार हैयो झूठ संसारियो सच भी झूठ है ਸੰਸਾਰੇ ਸੱਚਾ ਝੂਠ ਹੈ ਸੰਸਾਰੇ ਝੂਠ ਹੈ ਕੋੜ ਰਾਜਾ ਕੋੜ ਪਰਜਾ ਕੋੜ ਸਭ ਸੰਸਾਰ ਸੰਸਾਰੇ ਸੱਚ ਵੀ ਝੂਠ ਹੁੰਦਾ ਜਦ ਜਦੋਂ ਬੋਲਨੇ ਜੋਗੀ जोगी. ਕਰਦਾ ਜੋਗੀ ਬੁੱਧਾ ਝੋਲੀ ਖੇਡਦਾ ਬਾਰਾਂ ਮਾਹੀ ਇੱਕ ਜ਼ਰੇ ਵਖੜਦਾ ਇੱਕ ਪੰਥਾ ਇਹਦਾ ਸਮਝਾਈਏ ਜੋਗੀ ਬਹੁਤ ਸਾਰੀ ਕੱਚੀ ਗੱਲ है। ਅਲ ਕੱਤੀਆ ਉਹਨੇ ਕਹੀ ਜੋਗੀ ਨਾ ਕਹੀ ਹੈ ਪਰ ਉਹਨੂੰ ਕੱਟਿਆ ਫਿਰ ਉਹਦੀ ਗੱਲ ਨੂੰ ਫਿਰ ਕੱਟਿਆ ਹੋਇਆ ਉਹ ਚਾਰ ਜਣੇ ਸ਼ਲੋਕ ਨੇ ਕਬੀਰ ਦੇ ਤਿੰਨ ਕੱਤੇ ਨੇ ਉਹਦੇ ਤਿੰਨੇ ਕੱਟ ਕੇ ਚੌਥਾ ਸੱਚਾ ਦੱਸਿਆ ਰੋੜਾ ਹੋ ਰੋ ਵਾਟ ਕਾ ਤਜਵਾਨ ਹੈ ਗੱਲ ਇਹ ਕੱਤੀ ਕੱਟੀ ਨਾ ਰੋੜਾ ਪਿਆ ਤਾਂ ਕਿਆ ਪਿਆ ਤੁਜੀ ਕੀਤੀ ਖੇਤਾਂ ਦੀ ਵੇਖੇ ਉਹ ਵੀ ਕੱਟੀ ਤੀਜੀ ਕੀਤੀ ਉਹ ਵੀ ਕੱਟੀ ਚੌਥੇ ਦੇ ਜਾ ਕੇ ਸੱਚ ਆਇਆ ਪੂਰਾ ਉਹ ਕੱਚੀ ਪੱਕੀ ਦੀ ਪਛਾਣ ਦੱਸੀ ਹੋਈ ਹੈ ਵਿੱਚ ਕੀ ਬੜਾ ਪਤਾ ਕੱਚੀ ਪੱਕੀ ਕੀ ਹੁੰਦੀ ਪਛਾਣ ਵੀ ਇਹਦੇ ਵਿੱਚ ਹੀ ਪੱਕਾ ਕੀ ਹੁੰਦਾ ਇਹਨਾਂ ਨੂੰ ਕੀ ਪਤਾ ਦਾ ਸਦਾਈ ਨੇ ਤਾਂ ਖੋਜ ਦਾ ਵਿਸ਼ਾ ਸੀ ਨਾ ਨਰਨਾਰ ਨਪੁਸਕ ਜਾਹ ਕੀਏ ਨਰਨਾਰ ਨਪੁਸਕ ਜਾਹ ਕੀਏ ਸੱਚ ਵੀ ਹੈ ਬਣਾਏ ਵੀ ਹੋਏ ਨੇ ਨਰ ਵੀ ਬਣਾਏ ਨੇ ਨਾਰ ਵੀ ਹੈ ਜੁਪਤ ਹੁਣ ਜਿਹੜੇ ਕਹਿੰਦੇ ਨੇ ਤਿੰਨ ਤਿੰਨ ਕਾਟਾ ਕਰ ਜਾਂਦਾ ਦਸਤੀਆਂ ਜਿਹੜੀ ਆਦਿ ਵਾਲੀ ਦੇ ਨਾਲ ਨੂੰ ਆਦਮੀ ਉਹ ਕਹਿੰਦੇ ਨੇ ਕਿਵੇਂ ਕਹਿੰਦੇ ਨੇ ਇਸ ਤਰ੍ਹਾਂ ਲਿਖਦੇ ਤਾਂ ਹੀ ਜਦ ਲਿਖੇ ਨੇ ਦਾਰਾ ਨਾਲ ਨੂੰ ਕੋ ਬਣ ਜਾਂਦੇ ਸੀ ਉਹ ਕਾ ਪਰਖ ਸਬਾਈ ਨਾ ਨਾ ਹਰਤਨ ਵੀ ਨਾਰ ਬਣਾਤਾ ਸੀ ਇਹਨਾਂ ਨੇ ਉਹ ਦਵਾਨਾਂ ਨੇ ਬਣਾਇਆ ਹੈ ਮੂਰਖਾਂ ਦੇ ਦਲੀਲ ਦੱਦ ਰਹੇ ਇਹ ਨਹੀਂ ਬਣਦੇ ਹੁੰਦੇ ਇਹਦਾਂ ਹੀ ਬਣਾਉਂਦੇ ਪਰਖ ਪਰਖੇ ਰਹਿਣਾ ਨਾਲ ਲਾਰੇ ਹਾਂ ਪਰਖ ਮੈਨ ਨਾਲ ਨਾਲ ਮੈਂ ਪਰਖਾ ਬੁਝੇ ਫਿਰ ਕੀ ਲਿਓਗਾ ਲੜਨਗਾ ਉਹ ਤੇ ਠੀਕ ਹੈ ਸੰਸਾਰੀ ਸੱਚ ਵੀ ਹੈ ਹਰ ਤਨ ਆਦਮੀ ਪੈਦਾ ਹੁੰਦੇ ਨੇ ਉਹ ਗੱਲ ਸੋ ਸਾਰੀ ਗੱਲ ਸਰੀਰ ਕਰਕੇ ਵੀ ਗੱਲ ਠੀਕ ਹੈ ਆਤਮਾ ਕਰਕੇ ਵੀ ਠੀਕ ਹੈ ਅਸਲ ਜੀ ਪੁਰਖ ਮੈਨ ਆਰ ਹੈ ਬਲੇ ਹਾਲਾ ਫਜ਼ਲ ਬਲੀ ਪੁਰਖ ਮੈਨ ਆਰ ਦੂਈ ਬਲਟਾ ਨਾਰ ਮੈਨ ਪੁਰਖ ਕਰਤੇ ਪੁਰਖ ਤੋਂ ਪੈਦਾ ਹੋਈ ਹੈ ਬਾਣੀ ਗੁਰਵਾ ਜਿਹੜੀ ਹੈ ਵਤ ਵਤਨਾਰ ਹੈ ਉਹ ਮਤਨਾਰ ਰੂਪ ਹੈ ਤੁਲਕੀ ਬਾਣੀ ਨਾਰ ਰੂਪ ਹੈ ਕਰਤਾ ਪੁਰਖ ਚੋਏ ਪੈਦਾ ਹੋਈ ਜਾਣਾ ਪਾਣੀ ਪੁਰਖੀ ਉਹਦੇ ਵਿੱਚੋਂ ਹੀ ਨਾ ਆ ਹੈ ਨਾ ਪਾਣੀ ਚੋਏ ਲਹਿਰ ਪਾਣੀ ਭਲੇ ਤੇ ਲਹਿਰ ਲਹਿਰ ਪਾਣੀ ਦੇ ਵਿੱਚੋਂ ਪੈਦਾ ਹੋਈ ਹੈ ਨਾ ਪਰ ਲਹਿਰ ਦੇ ਵਿੱਚ ਕੀ ਹੈ ਪਾਣੀ ਲਾਰਮ ਪੁਰਖਾ ਨਾਰਮਾ ਪੁਰਖਾ ਰਾਜਗੀ ਹੈ ਰਾਜਗੀ ਹੈ ਪਾਣੀ ਪੁਰਖ ਮਤ ਨਹੀਂ ਵਰਮ ਗਿਆ ਹਨ ਆਜੇ ਵਿੱਚ ਪ੍ਰਭ ਗੰਦੀ ਰੇਤ ਪੈਦਾ ਕੀਤੀ ਹੈ ਵਿੱਚ ਕੀ ਹੈ ਵਰਗਿਆ ਨੇ ਉਹ ਕੀ ਤੇ ਕਲੀਆਂ ਜੋ ਚੀਜ਼ ਪਾਈ ਹੋਈ ਹੈ ਵਿੱਚੋਂ ਹੋਰ ਕੀ ਨਿਕਲ ਨਾ ਨਾ ਨੂੰ ਪੁੰਸੰਗ ਜਾਹ ਕੀ ਹੈ ਜਾਹ ਕੀ ਹੈ ਗਣ ਕਿੰਨਰ ਜਾਛ ਭੁਜੰਗ ਦੀ ਗਣ ਕਿੱਧਰ ਕਿਤਰਾਂ ਦੇ ਗਣਾਂ ਦੇ ਗਣ ਸੁਭਾਂ ਦੇ ਸਭੂ ਭੁਜੰਗ ਦੀ ਏ ਜੱਛ ਜੱਛ ਕਿਨਰ ਨੇ ਦੇਵਤਿਆਂ ਦੇ ਭੁਜੰਗ ਦੀ ਏ ਉਹ ਯਾਗਰ ਐ ਸ਼ਿਵਦੀ ਦੇ ਚੇਲੇ ਸਾਡੇ ਵੀ ਭਜੰਗੀ ਕਹਿੰਦੇ ਨੇ ਆਪਣੇ ਨੂੰ ਦੱਸ ਦੋ ਜੀ ਜਿਹੜੇ ਹੁੰਦੇ ਨੇ ਨਾ ਛੋਟੇ ਬੱਚੇ ਉਹਨਾਂ ਨੂੰ ਭਜੰਗੀ ਕਹਿੰਦੇ ਭੁਜੰਗ ਦੇ ਇਥੇ ਆਇਆ ਹੈ ਸਾਡੀ ਜਿਹੜੀ ਭਗਤੀ ਐ ਦੇਵਤਿਆਂ ਨਾਲ ਘੱਟ ਮਿਲਦੀ ਐ ਸ਼ਿਵਦੀ ਜਿਆਦਾ ਮਿਲਦੀ ਐ ਇਹ ਤਾਹੇ ਯੋਗਿਆਂ ਨੂੰ ਯੋਗ ਹੈ ਨਾ ਇਹ ਵੀ ਤਾਹੇ ਯੋਗਿਆਂ ਨੂੰ ਕੋਰਾਨ ਕਰਨੇ ਕੀਤਾ ਸੀ ਨਾ ਜਿਆਦਾ ਉਪਦੇਸ਼ ਪੰਡਤਾਂ ਨੇ ਉਪਦੇਸ਼ ਕੀਤਾ ਪੜ੍ਹਣਾ ਤਾਂ ਵਿਦਵਾਨ ਹੁੰਦਾ ਹੈ ਪੜ੍ਹਣਾ ਤਾਂ ਜਾਣਵੁੱਝ ਕੇ ਬਾੜ ਪਾੜੀ ਹੋਈ ਹੈ ਖਰਾਬ ਕੀਤਾ ਹੋਇਆ ਕੰਮ ਉਹਨੂੰ ਕੀ ਕਹਿਣਾ ਪੜਦਾ ਤੂੰ ਜਿਹਦੇ ਦਾ ਜਾਣਵੁੱਝ ਕੇ ਉਲਟਾ ਬਣਾਇਆ ਹੋਇਆ ਉਹਨੂੰ ਕੀ ਸਮਝਾਉਣਾ ਉਹਦਾ ਤਾਂ ਧਰਮ ਹੈ ਰਸਤਾ ਸਿੱਧਾ ਨੂੰ ਉਲਟਾ ਬਣਾਉਣਾ ਜੇ ਬਣ ਜਵੇ ਫਿਰ ਸਿੱਧਾ ਫੇਰ ਵਿਗਾੜਨਾ ਉਹਦਾ ਤਾਂ ਕੰਮ ਇਹ ਹੈ ਵੀਰ ਜਿਹਦੇ ਰਾਸਦਾ ਪਾਇਆ ਬਣ ਵੀ ਗਿਆ ਆਖੇ ਭਗਤਾਂ ਨੇ ਬਣਾਤਾ ਨੇ ਫੇਟ ਆਇਆ ਉਹਨੂੰ ਇਹਨਾਂ ਨੇ ਕਹਾਣੀਆਂ ਬਣਾ ਫੜਾ ਕੇ ਆ ਸਾਰੀਆਂ ਸਾਖੀਆਂ ਡੁਪਲੀਕੇਟ ਸੰਤਾਲੀਆਂ ਬਣਾਈਆਂ ਹੋਈਆਂ ਨੇ ਆ ਪੜਨ ਦੀਆਂ ਬਣਾਈਆਂ ਹੋਈਆਂ ਨੇ ਇਹ ਵਿਸ਼ਨੂੰ ਦੇ ਸਾਰੇ ਯਰਦਾਲੇ ਫਿਰਨ ਵਾਲੇ ਨੇ ਉਹ ਕਿ ਜਿਹੜਾ ਪੈਸੇ ਵਾਲਾ ਦੇਖੋ ਪੈਸੇ ਨਾਲ ਜਿਹੜਾ ਪ੍ਰੇਮ ਕਰਨ ਵਾਲਾ ਸੰਤਾਨ ਪੈਸੇ ਦੀ ਲੋੜ ਨੂੰ ਲੋੜ ਸਮਝਣ ਵਾਲਾ ਉਹ বিষ্ণੂ ਦੇ ਨਾਲ ਅਟੈਚ ਉਹ ਜਿਹਨਾਂ ਸੰਤਾ ਕੋ ਕਾਰਾਂ ਨੂੰ ਸਭ ਸਰਕਾਰੀ ਨੇ ਰਾਜ ਰਾਜ ਰਾਜ ਇਹ ਤੱਕ ਉਹ ਸਰਕਾਰ ਤੋਂ ਛੱਡਾ ਦੂਏ ਬਸ ਇਹਨੂੰ ਕਹਿੰਦੇ ਸੀ ਸਰਕਾਰ ਤੇ ਕੀ ਨੇ ਉਹ ਸਰਕਾਰ ਤੋਂ ਉੱਪਰ ਨੇ ਇਹ ਸਰਕਾਰ ਦੇ ਅਧੀਨ ਜੋ ਸਰਕਾਰ ਕਦਮ ਚੁੱਕਣਾ ਕਰਨਾ ਪੈਂਦਾ ਨਹੀਂ ਦਾਗਲੇ ਇਹਨਾਂ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ ਚਾਕੇ ਜਲੇ ਪਏ ਦੰਦ ਰੇਲੂ ਇਹਨਾਂ ਦੀ ਰੋਟੀ ਪਾਣੀ ਬੰਦ ਕਰ ਦਿੰਦੇ ਨੇ ਇਹਨਾਂ ਨੂੰ ਸਰਕਾਰ ਤੋਂ ਡਰ ਕੇ ਰਹਿਣਾ ਪੈਂਦਾ ਹਰ ਪ੍ਰਕਾਰ ਦੀ ਸਰਕਾਰ ਦੀ ਸੇਵਾ ਕਰਦੇ ਨੇ ਸੀਆਈਡੀ ਵੀ ਕਰਦੇ ਨੇ ਉਹ ਜੋ ਕੁਝ ਕੰਮ ਦੇਣ ਜੋਗੇ ਨੇ ਸਰਕਾਰ ਨੂੰ ਕੰਮ ਦਿੰਦੇ ਨੇ ਸਰਕਾਰ ਤੋਂ ਕੰਮ ਲੈਂਦੇ ਵੀ ਨੇ ਇਹ ਵੀ ਲੈ ਤੇਰੀ ਲੈ ਵੀ ਨਾ ਕੰਮ ਦਿੰਦੇ ਵੀ ਨੇ ਸਰਕਾਰ ਨਾਲ ਰਲ ਕੇ ਰਹਿੰਦੇ ਨੇ ਉਹ ਨਾਲ ਬਾਇਆ ਤੇ ਕੋਈ ਮਤਲਬ ਨਹੀਂ ਹੈ ਉਹ ਸਰਕਾਰ ਦੇ ਮਾਲਕ ਖੁਦ ਨਹੀਂ ਦਿੰਦੇ ਇਹਦਾ ਘਰ ਦਿੰਦੇ ਨੇ ਤੇ ਬੜੀ ਦਾ ਗੁਰੂ ਨਾਨਕ ਨੇ ਕਿਸੇ ਵੀ ਰਾਜੇ ਦੀ ਉਸਤਤੀ ਨਹੀਂ ਕੀਤੀ ਦਿੱਤੀ ਕੀਤੀ ਗੁਰਬਾਨ ਨੇ ਕਿਸੇ ਰਾਜੇ ਦੀ ਉਸਤਤੀ ਕੀਤੀ ਹੋਵੇ ਦੱਸੋ ਕਿੱਥੇ ਕੀਤੀ ਸਾਡਾ ਤਰੋ ਕਿਸੇ ਰਾਜੇ ਦੀ ਉਸਤਤੀ ਨਹੀਂ ਕਰ ਸਕਦਾ ਜਿਹੜੇ ਸੰਤੁਸ਼ਟੀ ਕਰਦੇ ਨੇ ਹੁਣ ਕਿਰਪਾਨਾ پا ਕੇ ਉਹ ਸਿੱਖ ਲਿਆਣ ਅਸੀਂ ਰਾਜ ਪ੍ਰਬੰਧ ਦੀ ਵਿਦਿਆ ਹੀ ਗਾੜੀ ਉਤਤੀ ਕਰੇਦਾ ਹੋਰ ਵਿਗੜ ਜਾਊਗਾ ਉਹ ਉਸਦੀ ਲੈਕ ਵੀ ਹੋਵੇ ਚੁੱਪ ਕਰ ਰਹੋ ਕੋਈ ਵੀ ਕਰਦਾ ਰਹਿੰਦਾ ਕੋਈ ਕੱਦਾ ਕੰਮ ਜੇ 4-4 ਕੰਮ ਕਰਦੇ ਹਜ਼ਾਰ ਮਾੜੇ ਕੀਤੇ ਨੇ ਉਹ ਉਹ ਜੋ ਇੱਕ ਦੋ ਕੰਮ ਚੰਗੇ ਕਰਦੇ ਉਹਦੀ ਹਲਾਗਾ ਨਹੀਂ ਕਰਿੰਦੀ ਜਿਹੜੇ ਹੋਰ ਹਜ਼ਾਰ ਮਾੜੇ ਕੀਤੇ ਨੇ ਉਹ ਵੀ ਦੱਸਣੇ ਪੈਣਗੇ ਫੇਰ ਨਾਲ ਜਦੋਂ ਕੋਈ ਬਹੁਤ ਜ਼ਿਆਦਾ ਮਾੜਾ ਕੰਮ ਕਰਦਾ ਨਾ ਸਰਕਾਰ ਉਹ ਤੇ ਟਿੱਪਣੀ ਜ਼ਰੂਰ ਕੀਤੀ ਹੋਈ ਜੀ ਰਾਜੇ ਸੀਲ ਪਕਦਮ ਕੋਤੇ ਜੇ ਜ਼ਿਆਦਾ ਨਰਸ ਕਰਦਾ ਉਹ ਤੇ ਟਿੱਪਣੀ ਕੀਤੀ ਹੋਈ ਹੈ ਛੋਟੀਆਂ ਹਰ ਗੱਲ ਛੋਟੀ ਮੋੜੀ ਦੇ ਟਿੱਪੜੀ ਬੜੀ ਕੀਤੀ ਕੋਈ ਮਜਬੂਰੀ ਹੁੰਦੀ ਹੈ ਸਰਕਾਰਾਂ ਦੀ ਛੋਟੀਆਂ ਮੋਡੀਆਂ ਗੱਲਾਂ ਦੇ ਟਿੱਪੜੀ ਵੀ ਨਹੀਂ ਕੀਤੀ ਹੋਈ ਬਹੁਤ ਆਨਰਥ ਕੋਈ ਕਰੇ ਫਿੱਟਪੜੀ ਕਰਦੀ ਗੁਰਵਤ ਉਸਤਤੀ ਨਹੀਂ ਕਰਦੀ ਦਿੱਧਿਆ ਵੀ ਨਹੀਂ ਕਰਦੀ ਦਿੱਧਿਆ ਵੀ ਨਹੀਂ ਕਰਦੀ ਉਸਤਤੀ ਵੀ ਨਹੀਂ ਕਰਦੀ ਸੱਚ ਬੋਲਦੀ ਉਸਤ ਦੋ ਬਰਜੇ ਤਨੇ ਸਾਲੂ ਰੋ ਆਦਮੀ ਦੀ ਅਸੀਂ ਹਸਤਕਾ ਥਾ ਤੇ ਨਾ ਨਾ ਦੇ ਅਗਰ ਸੋਧੇ ਸੰਤਾ ਦੇ ਵੀ ਟਿਪਨੇ ਕੀ ਕਰਦੇ ਕੀ ਇਹਨਾਂ ਨੂੰ ਰਾਏ ਦੱਸਦੇ ਅਸੀਂ ਇਹਨਾਂ ਤੇ ਜਿਵੇਂ ਖਬੀਰ ਕਹਿੰਦਾ ਜੇ ਦੀਵਾ ਹੱਥ ਲਾਇਆ ਕੋ ਖੂ ਤੋ ਕੋਣ ਸਮਝਾਈਏ ਤੋ ਇਹ ਤਾਂ ਲੋਕਾਂ ਨੂੰ ਸੋ ਮੈਂ ਉਹਦੇ ਨਾਲ ਗੁੱਸੇ ਡਿਗਦੇ ਗੱਲ ਤਾਂ ਹੀ ਹੋਈ ਹੈ ਤੁਸੀਂ ਲੋਕਾਂ ਨੂੰ ਸਮਝਾਉਣ ਵਾਲੇ ਹੋ ਤੁਸੀਂ ਤਾਂ ਕੰਮ ਕਮ ਗਲਤੀ ਕਰਨ ਦੇ ਗਜ ਅੰਤਿ ਬਾਜ ਘੋੜੇ ਰਥ ਆਦਕ ਵਿਨੋਦ ਕਿੰਨਾ ਬਣਾਏ ਨੇ ਸਭੂ ਆ ਸਾਰਾ ਕੁਝ ਕੀ ਫੌਜਾਂ ਦੇ ਵਿੱਚ ਕੀ ਬਣਦਾ ਇਹਦੀ ਫੌਜਾਂ ਬਣਦੀਆਂ ਨੇ ਜੇ ਪਰਮੇਸ਼ਰ ਨੇ ਬਣਾਏ ਨੇ ਤਾਂ ਹੀ ਫੌਜਾਂ ਬਣਨਗੀਆਂ ਅਜਿਹੇ ਲਈ ਫਰਦੇ ਨੇ ਨਾ ਇਹ ਕੈਕਲ ਹੋਗੇ ਨੇ ਬਣਾਇਆ ਜੇ ਤੇ ਸਿਗਾ ਲੋਹ ਤਾਂ ਟਾਂਕ ਬਣਾ ਇਹ ਡੇਟ ਆਉਂਦਾ ਉਹ ਡੇਟ ਆ ਬਈ ਕਿਹਦੇ ਚੈ ਕਥਵਣਾ ਨੇ ਸਭ ਕੁਝ ਹੈਗਾ ਉਹਦਾ ਬਣਾਇਆ ਹੋਇਆ ਪਟੋਲ ਹੈਗਾ ਅਸੀਂ ਤਾਂ ਚਲਾ ਲਿਆ ਤੁਸੀਂ ਇਹ ਲੱਭ ਕੇ ਹੀ ਖੇਰ ਹੋ ਜਾਂਦਾ ਅਸੀਂ ਲੱਭ ਲਿਆ ਯਾਨੀ ਕੋਈ ਜੀ ਇਹ ਲੱਭ ਲਈ ਇਹ ਰੂਹ ਬੜੇ ਬੜੇ ਸੇਰੇ ਬਣ ਲੈਂਦੇ ਆਪਣੇ ਹਿੱਸੇ ਇਹ ਤਾਂ ਥੋੜੋ ਪਹਿਲੇ ਇਹਨੂੰ ਕਿਉਂ ਨਹੀਂ ਲੱਭਿਆ ਬਈ ਉਹ ਤਾਂ ਬਸ ਐਸੇ ਹੀ ਹੋ ਗਿਆ ਨਾ ਉਹ ਆਪੇ ਦਿੰਦਾ ਹੈ ਸੋ ਜੀ ਬੱਚਿਆਂ ਨੂੰ ਜੰਗਲਾਂ ਨੂੰ ਕੀ ਪਤਾ ਦੁੱਧ ਕਿੱਥੇ ਆਏ ਜਿਹੜੇ ਜੰਗਲ 'ਚ ਪੈਦਾ ਹੁੰਦੇ ਨੇ ਜਾਨਵਰ ਉਹ ਹੀ ਦੱਸਦਾ ਹੈ ਇਹਨਾਂ ਨੂੰ ਐਵਰੀ ਬਦਾ ਬਿਓ ਨੇ ਦੱਸੇ ਸੋ ਜੀ ਭਵ ਭੂਤ ਭਵਿੱਖ ਭਵਾਨ ਤਿੰਨ ਕਾਲ ਨੇ ਭਵ ਭੂਤ ਕਹਿੰਦੇ ਹੁੰਦਾ ਲੋ ਫਰਿਆਦ ਨੋ ਬਾਵ ਗਾ ਜੀ ਜੇ ਚੱਕਰ ਚੱਲ ਰਿਹਾ ਹੈ ਭਾਵੇਂ ਇਹੋ ਜੇ ਸਪਨੇ ਚੱਲ ਰਿਹਾ ਹੈ ਚੱਕਰ ਕਾਲ ਦਾ ਉਹ ਭਾਵਾ ਹੈ ਪੂਤ ਭਵਿਕ ਭਵਾਨ ਪੂਤ ਹੈ ਜਿਹੜਾ ਬੀਤ ਗਿਆ ਭਵਿਕ ਆਉਣ ਵਾਲਾ ਇਹ ਤੁਸੀਂ ਹੈ ਤਿੰਨਾਂ ਗੱਲਾਂ ਇਨਾਂ ਤਿੰਨਾਂ ਗੱਲਾਂ ਚ ਤੇਰਾ ਹੀ ਸਭ ਕੁਝ ਕੀਤਾ ਹੋਇਆ ਹੋਇਆ ਜਿਹੜੇ ਉੱਤੇ ਗਏ ਆਏ ਨੇ ਨਾ ਹੱਥੀ ਘੋੜੇ আর ਸਾਰੇ ਇਹ ਤਿੰਨਾਂ ਗੱਲਾਂ ਜਿਹੜੇ ਬਣਦੇ ਚਲੇ ਆਏ ਨੇ ਤੇਰੇ ਹੀ ਕਾਰਖਾਨੇ ਚ ਬਣਦੇ ਨੇ ਹੈ ਤੇ ਤੇਰੀ ਫਤਰੀ ਜਲਦੀਆਂ ਨੇ ਸਾਨੂੰ ਦੇਦੀ ਹਰੀ ਹਲ ਬੜਾ ਹੀ ਹੋਈਆ ਤੇਾਰੇ ਇੰਤਜ਼ਾਮ ਤੇਰੇ ਕੀਤੇ ਹੋਏ ਨੇ ਚਾਹੇ ਪਹਿਲਾ ਹੋਵੇ ਚਾਹੇ ਹੁਣ ਨੇ ਚਾਹੇ ਕਹਾਂ ਨੂੰ ਹੋਣਗੇ ਇਹ ਸਭ ਤੇਰਾ ਕੀਤਾ ਸਭ ਕੁਝ ਹੋਵੇ ਨਹੀਂ ਕੁਝ ਅਸਾੜਾ ਜੀਓ ਤੇਰਾ ਕੀਆ ਸਭ ਕੁਝ ਹੋਵੇ ਨਹੀਂ ਕੁਝ ਅਸਾੜਾ ਜੀਓ ਜਹੇ ਅੰਡਜ ਸੇਤਜ ਜਿਦੇ ਨਾਲ ਅੰਡੇ ਪੈਦਾ ਹੁੰਦੇ ਅੰਡੇ ਪੈਦਾ ਹੁੰਦੇ ਜੀ ਪੈਦਾ ਹੁੰਦੇ ਨੇ ਜੀਰ ਤੋਂ ਜੀ ਪੈਦਾ ਹੁੰਦੇ ਨੇ ਸੈਤ ਪਸੀਦਾ ਤੋਂ ਜੀ ਪੈਦਾ ਹੁੰਦੇ ਨੇ ਰਾਜ ਧਰਤੀ ਚੋਂ ਜੀ ਪੈਦਾ ਧਰਤੀ ਦੇ ਚੋਂ ਉਤਪਜ ਧਰਤੀ ਵੀ ਦੇ ਜਪਦਾ ਚਾਰੇ ਖਾਲੀਏ ਜੇ ਪੈਦਾ ਹੋ ਰਹੀ ਹੈ ਚਾਰੇ ਖਾਲੀਏ ਦੇ ਜੀ ਪੈਦਾ ਹੋ ਰਿਹਾ ਸਭ ਕੁਝ ਇਹ ਤੇਰੀ ਵਜ੍ਹਾ ਨਾਲ ਤੇਰਾ ਕੀਤਾ ਹੈ ਖਰ ਤੈਨਾਂ ਕਿਨੇ ਪੂਰਬ ਕਾਸ਼ਰ ਪਤਾਲ ਜਲਨ ਅਰ ਜਲਰੋਗ ਜਲਨ ਅੱਛਾ ਜਲਨ ਜਾਲਪ ਪਾਣੀ ਪੂਰਬ ਕਾਸ਼ ਤੇ ਪਾਣੀ ਇਹ ਪੈਦਾ ਕਿਤੇ ਲੱਤੇ ਆਪਾ ਪਾਣੀ ਹੋਊ ਤਾਂ ਹੀ ਉਹਦੇ ਚ ਧਰਤੀ ਚ ਕੁਝ ਪੈਦਾ ਹੋਣਾ ਧਰਤੀ ਚ ਤਾਂ ਪੈਦਾ ਪਾਣੀ ਦੇ ਬਿਨੂ ਹੋ ਨਹੀਂ ਸਕਦਾ ਸਰੀਰ ਤਾਂ ਚਲੋ ਤਾਂ ਬਿਨਾਂ ਪਾਣੀ ਤੇ ਹੁਦ ਨਹੀਂ ਔਲਿ ਦੇ ਬਣਾ ਕੋਈ ਸਰੀਰ ਹੁੰਦਾ ਹੀ ਨਹੀਂ ਪੌਦਾ ਬਲੀ ਹੁੰਦਾ ਪੇੜ ਬਰੀ ਹੁੰਦਾ ਅੰਡਜ ਜੇ ਵੀ ਪਾਣੀ ਤੇ ਪਾਣੀ ਦਾ ਹਰ ਇੱਕ ਜਾਨਾ ਚਾਹੀਦਾ ਨਾ ਹ ਰਚ ਪਾਵਕ ਪਾਉਣ ਪ੍ਰਚੰਡ ਬਲੀ ਪਾਉਣ ਪ੍ਰਚੰਡ ਬਲੀ ਆਗਰ ਜੀ ਇਹਤ ਅਗ ਕੀਤੀ ਹੈ ਪਾਉਣ ਪ੍ਰਚੰਡ ਬਲੀ ਪੌੜ ਪੌੜ ਵੀ ਬਹੁਤ ਪ੍ਰਚੰਡ ਬਲ ਹੈ ਪੌੜ ਦਾ ਬਹੁਤ ਤੇਜ਼ ਹਵਾ ਚੱਲਦੀ ਓਥਲ ਪੁਥਲ ਕਰ ਦਿੰਦੀ ਹੈ ਪਰ ਚੰਡ ਵਾਲਾ ਹੈ ਦਾ ਹਵਾ ਦਾ ਹਵਾ ਦੇ ਵਿੱਚ ਬੜੀ ਸ਼ਕਤੀ ਹੈ ਹਵਾ ਦੀ ਜਗਤੀ ਨਾਲੇ ਸਮੁੰਦਰ ਚ ਲਹਿਰਾਂ ਉੱਠਦੀਆਂ ਨੇ ਉਹ ਲਹਿਰਾਂ ਕਿੱਥੋਂ ਉੱਠਦੀਆਂ ਸਮੁੰਦਰ ਚ ਤੋਂ ਲਹਿਰਾਂ ਕਿੱਥੋਂ ਉੱਠਣੀਆਂ ਨੇ ਸੁਨਾ ਲਹਿਰਾਂ ਕਿਵੇਂ ਚੱਲਦੀਆਂ ਨੇ ਹਵਾ ਨਾਲ ਚੱਲਦੀਆਂ ਹਵਾ ਸਭ ਤੋਂ ਪਹਿਲੀ ਸ਼ਕਤੀ ਹੈ ਜਿਹੜੀ ਪ੍ਰਗਟ ਕੀਤੀ ਹੈ ਪਰਮੇਸ਼ਰ ਨੇ ਵਾਇਦੀ ਇਹ ਹੀ ਪ੍ਰਚੰਡ ਸ਼ਕਤੀ ਹੈ ਸਭ ਤੋਂ ਜੇ ਜੰਗਲ ਨੂੰ ਅਗ ਲੱਗੀ ਹੋਈ ਹਵਾ ਪੁੱਠੀ ਚੱਲ ਪਵੇ ਆ ਗੋ ਬੁਝਾ ਦਿੰਦੀ ਐ ਜੇ ਹਵਾ ਦੂੇ ਪਾਸੇ ਚੱਲੇ ਜਾਵੇ ਬੱਦੀ ਖਲੀ ਜਦੀ ਆ ਗੋ ਉਠੀ ਵੀ ਚੱਲ ਸਕਦੀ ਐ ਜਿੱਦ ਨੂੰ ਅਗ ਵਧਰੇ ਇਹ ਉਧਰ ਹਵਾ ਜ਼ੋਰ ਨਾਲ ਚੱਲ ਪਵੇ ਸਾਰੀ ਅਗ ਬੁਝਾ ਦੂ ਕਾਹਲ ਜਾਣੇ ਨਹੀਂ ਦਿੰਦੀ ਜੇ ਦੂੇ ਪਾਸੇ ਚੱਲ ਪਵੇ ਚੱਕ ਕਿਤੇ ਕਿਤੇ ਲੈ ਜੂ ਪਰ ਬਹੁਤ ਤਕੜੀ ਐ ਜੀ ਪਰ ਬਲੀ ਬੜਨ ਜਹਾਜ਼ ਕੀ ਉਹ ਫਲ ਫੂਲ ਕਲੀ ਜਿਹਨਾਂ ਜੰਗਲ ਬਣਾਏ ਨੇ ਬੜ ਫਲ ਵੀ ਬਣਾਏ ਨੇ ਫੁੱਲ ਵੀ ਬਣਾਏ ਨੇ ਕਲੀਆਂ ਵੀ ਬਣਾਈਆਂ ਨੇ ਜੰਗਲ ਚ ਪਹਿਲਾਂ ਕਲੀ ਬਣੂਫੇ ਫੁੱਲ ਖੜੂ ਫਿਰ ਜਾਨਵਰ ਖਦੇ ਰਹੇ ਉਹਨਾਂ ਨੂੰ ਉਹ ਆਕਾਸ਼ ਨਿਵਾਜ਼ ਜਿਸ ਤੋਂ ਅਸੋ ਸਾਰੇ ਜਗਾਂ ਨਿਵਾਸ ਹੈ ਉਸ ਹੁਕਮ ਦਾ ਸਾਰੀ ਜਗਾਂ ਨਿਵਾਸ ਵੀ ਹੈ ਹਰ ਜਗ੍ਹਾ ਹੈ ਉਹ ਕਿਉਂਕਿ ਹੁਕਮ ਨੇ ਰਚੇ ਦਿਉ ਨਾ ਹੈ ਰਚਨਾ ਸਾਰੀ ਹੁਕਮ ਦੀ ਹੈ ਹੁਕਮ ਹਰ ਜਗ੍ਹਾ ਮੌਜੂਦ ਵੀ ਹੈ ਅਕਾਂ ਪਹਾੜਾਂ ਤੇ ਕਰਤੀ ਤੇ ਸਭ ਜਗ੍ਹਾ ਹੁਕਮ ਨਿਵਾਸ ਵੀ ਰੱਖਦਾ ਹਰ ਜਗ੍ਹਾ ਰੋਜੀ ਰੋਜ ਕਾਦਰ ਸਚੰਦਰ ਬ੍ਰਤੰ ਰੋਜੀ ਸਾਰੇ ਲੋਜੀ ਲੋਜੀ ਰੋਜ਼ ਇਕਾਦਸ਼ ਚੰਦਰ ਵਰਤਨ ਲੋਜੀ ਸਾਰੇ ਰੋਜੀ ਬਿਲਦੀ ਨਾ ਖਾਲ ਨੂੰ ਕੁਲਦਾ ਇਕਾਦਸ਼ ਚੰਦਰ ਵਰਤ ਇਕਾਦਸ਼ ਨਹੀਂ ਦਿੱਤੀ ਹੈ ਕਾਸ਼ਤੀ ਸ਼ੁਰੂ ਕਰ ਨਾਲ ਸੰਬੰਧਿਤ ਹੈ ਇਹਦੇ ਵਰਤ ਬਣਾਏ ਨੇ ਸਾਰੇ ਦੂਤੀ ਚੰਦ ਦਿਨੀ ਸਹਿਦੀਪ ਲੋਕੇ ਦੁੱਧ ਦੀ ਚੰਦ ਦਿਨੀ ਸਹਿ ਦੀਪ ਦਈ ਦੋ ਦੀਵੇ ਦਿੱਤੇ ਇੱਕ ਚੰਦਰਮਾ ਦਾ ਦੀਵਾ ਇੱਕ ਸੂਰਜ ਦਾ ਦਿਲ ਦੋ ਦੀਵੇ ਦਿੱਤੇ ਨੂੰ ਸੁਤਸਾਲ ਨੂੰ ਜਹ ਪਾਵਕ ਪ੍ਰਾਉਣ ਪ੍ਰਚੰਡਮਈ ਪਾਵਕ ਪਾਉਣ ਪਾਵਕ ਪਾਉਣ ਪ੍ਰਚੰਡਮਈ ਹਾਂ ਜਿਹਨੇ ਪਾਵਕ ਅੱਗ ਹਵਾਦਤੀ ਇਹ ਬਹੁਤ ਪ੍ਰਚੰਡੂ ਭਈ ਉਹ ਅਸਲ ਵਿੱਚ ਪਿੱਛੇ ਜਿਹੜਾ ਸੂਰਜ ਕੇ ਹੈ ਨਾ ਉਹਦੇ ਨਾਲ ਇਹਦਾ ਲਿੰਕ ਹੈ ਪਹਿਲਾਂ ਵੀ ਪ੍ਰਚੰਡਤਾ ਦਾ ਸਬੰਧ ਸੂਰਜ ਨਾਲ ਦੱਸ ਰਹੇ ਨੇ ਹਵਾ ਦੀ ਤੇਜ਼ੀ ਜਿਹੜੀ ਚੱਲਣ ਦਾ ਕਾਰਨ ਸੂਰਜ ਹੈ ਪਾਵਕ ਪੌਣ ਪ੍ਰਚੰਡ ਹਾਂ ਐਵੇਂ ਚੱਲਦੀ ਕਰ ਕਿਸੇ ਪਾਸੇ ਸੂਰਜ ਦੀ ਗਰਮੀ ਤੇਜ ਹੋ ਜਾਂਦੀ ਹੈ ਉੱਥੇ ਦੀ ਹਵਾ ਉੱਤਰ ਚੱਲ ਜਾਂਦੀ ਹੈ ਦੂਜੇ ਪਾਸੇ ਤੇਜ਼ੀ ਨਾਲ ਹਵਾ ਆਉਂਦੀ ਹੈ ਦਿਗਾਂ ਲਹਿਣ ਹਵਾ ਲੈ ਚਲਣ ਦਾ ਕਾਰਨ ਦੱਸਦੇ ਨੇ ਕੀ ਹੈ ਹਵਾ ਨੂੰ ਪਰਚਾਣਤਾ ਦਿੰਦਾ ਸੂਰਜ ਐ ਨਹੀਂ ਜਲਦੀ ਆਪ ਆਪਣੇ ਆਪ ਹਵਾ ਦੇ ਚੱਲਣ ਦਾ ਵੀ ਕਾਰਨ ਕੋਈ ਜੇ ਇਹ ਜਲਾ ਪਰ ਰੋਕਦੀ ਏ ਫਿਰ ਨਹੀਂ ਤੇਲ ਖੈਦਾ। ਜਾਂ ਚੱਲ ਪੈਂਦਾ ਟਾਂਕੀ ਚੋਂ ਆਪੇ ਖਿੱਚੀ ਜਾਂਦਾ ਤੇਲ। ਫਿਰ ਕਹਦੇ ਕਹਿੰਦਾ ਕੋਡ ਐਕਸ਼ਨ ਐ ਇਸ ਤਰੀਕਰ ਖਿਚੂ ਤਾਂ ਲੈ ਚੱਲੂ ਜੇ ਗਾਲ ਕੂਕੂ। ਇਹ ਕਹਾਣੀ ਭੁਗਦਾ ਤਾਂ ਖਿਚੂਗਾ ਤੇ। ਜਿਵੇਂ ਸੂਰਜ ਜੇ ਹੈ ਤਾਂ ਹਵਾ ਤੇਜ ਹੌਲੀ ਤਾਂ ਚੱਲਦੀ ਹੈ ਹਵਾ। ਤੋਂ ਪਉਦੀ ਆ ਨਾ ਬੱਦਲ ਜਾਂਦੇ ਰਹੇ ਤਾਂ ਉਹ ਵੀ ਸੂਰਜ ਦੀ ਗਰਮੀ ਨਾਲ ਜਾਂਦੇ ਨੇ। ਜਿੱਥੇ ਸੂਰਜ ਦੀ ਜ਼ਿਆਦਾ ਗਰਮੀ ਹੁੰਦੀ ਹੈ ਨਾ ਉੱਥੇ ਵੈਕੂਮ ਪੈਦਾ ਹੋ ਜਾਂਦਾ ਹੈ ਕਹਿੰਦੇ ਨੇ ਨਾ ਸੂਰਜ ਦਾ ਚੱਕਰਵਾਤ ਪੈਦਾ ਹੋ ਗਿਆ ਚੱਕਰਵਾਤ ਪੈਦਾ ਸੂਰਜ ਕਰਦਾ ਅਗਲਾ ਤਾਂ ਹਵਾ ਹੁੰਦੀ ਹੈ ਫਿਰ ਕੋਈ ਜਗ੍ਹਾ ਲੈਣ ਵਾਸਤੇ ਹਵਾ ਖਿੱਚਣ ਜਾਂਦੀ ਉੱਤਰ ਉੱਡ ਜਾਂਦੀ ਹਵਾ ਗਰਮ ਹੋ ਕੇ ਉੱਤਰ ਹਵਾ ਗਰਮ ਹੋ ਕੇ ਉੱਤੇ ਉੱਡਦੀ ਹੈ ਉਹ ਵਿਚਾਰੇ ਪਾਸੇ ਤਾਂ ਹਵਾ ਭਜਦੀ ਉਹਦੀ ਜਗ੍ਹਾ ਲੈਣ ਲਈ ਉਹ ਗੱਲ ਕਹਿ ਰਹੇ ਨੇ ਸਾਇੰਸ ਦੀ ਗੱਲ ਕਹਿ ਰਹੇ ਨੇ ਵਿੱਚ ਕੇ ਇੱਥੇ ਪਹਿਲੀ ਪੰਕਤੀ ਕਹੇਗੇ ਦੁਬਾਰਾ ਫੇਰ ਕਹੀ ਇਹ ਸੂਰਜ ਦੀ ਕਾਰਨ ਹੁੰਦਾ ਪ੍ਰਚੰਡਤਾ ਹਵਾ ਨੂੰ ਬਣਦੀ ਨਹੀਂ ਤਾਂ ਕਮਰੇ ਜਾਂ ਮੈਂ ਇਹ ਕਦੇ ਨਹੀਂ ਪ੍ਰਚੰਡ ਹੈ ਦਾ ਆਪਣੀ ਮਰਜ਼ੀ ਨਾਲ ਪ੍ਰਚੰਡ ਹੁੰਦੀ ਹੈ ਇਹ ਮਕੈਨਿਜ਼ਮ ਹੈ ਵੀ ਇਹਦੇ ਵਿੱਚੋਂ ਭੂਗਣਿ ਵਾਰਦਾ ਵੀ ਕਦੇ ਜੋਰ ਨਾਲ ਵਾਰਦਾ ਤਾਂ ਕਦੇ ਹੌਲੀ ਕਰ ਦਿੰਦਾ। ਕਾਰਨ ਕੀ ਹੈ? ਕਾਰਨ ਦਾ ਸੂਰਜ। જય ਖੰਡ ਅਖੰਡ ਪ੍ਰਚੰਡ ਕੀਏ, ਜੈ ਖੰਡ ਅਖੰਡ ਪ੍ਰਚੰਡ ਕੀਏ। ਖੰਡਾ ਖੱਡ ਕੀਏ ਚੇਤਰਮਾਨ। ਮਾਨ ਖੱਡਾ ਖੱਡਾ ਨਾਲ ਅਣਸਹਿਬਾਨ। ਬਹੁਤ ਵੀਰ ਤੋਂ ਰਾਮ ਕੀ ਅਣਸ। ਉਵੇਂ ਇਹਦੇ ਝੂਠਾ ਖੰਡਨ ਕਰਨ ਵਾਲੀ ਚੀਜ਼ ਇਹ ਹੈ ਐਸੇ ਲੁਕਸਣੇ ਬਿਮਾਰੀਆਂ ਨੇ ਉਹ ਦੂਰ ਕਰ ਦਿੱਤੇ ਅਖੰਡ ਪ੍ਰਚੰਡ ਕੀਏ ਅਖੰਡ ਹੈਗਾ ਜਿਤ ਜੋ ਸ਼ੁੱਧਾ ਸ਼ੁੱਧੀ ਚੀਜ਼ ਦਾ ਕੀ ਕਰਨਾ ਕਰਨਾ ਪ੍ਰਚੰਡ ਕੀਏ ਪ੍ਰਚੰਡ ਪ੍ਰਚੰਡ ਤਾਂ ਇਹ ਨਾਲ ਲੜਾਈਏ ਦੋਲ ਦੀ ਦੋਵੇਂ ਨੇ ਦੋਵੇਂ ਜੋਤ ਸਰੂਪ ਨੇ ਖੰਡ ਅਖੰਡ ਪ੍ਰਚੰਡ ਕੀਏ ਜੇ ਛਤਰ ਉਪਾਏ ਛਪਾਏ دیے ਜੇ ਛਤਰੀ ਉਪਾਏ ਛਪਾਏ دیے 76 ਠੀਕ ਹੈ ਜੇ ਛਤਰ ਉਪਾਏ ਛਤਰੀ ਪੈਦਾ ਕੀਤੇ ਸੀ ਬਹੁਤ ਕਿਸੇ ਵੇਲੇ ਛਤਰੀਆਂ ਦਾ ਬੜਾ ਜ਼ੋਰ ਸੀ ਸੰਸਾਰ ਦੇ ਵਿੱਚ ਛਪਾਏ دیے ਛਪਾਤੇ ਪਰਸਲਾਮ ਭੇਜਤਾ ਕਹਿੰਦੇ ਪਰਸਲਾਮ ਨੂੰ ਭੇਜਣਾ ਕਹਿੰਦੇ ਛਤਰੀਆਂ ਨੂੰ ਪੈਦਾ ਕਰ ਦਿੰਦੇ ਹੁਣ ਛਤਰੀਆਂ ਨੂੰ ਕੋਈ ਪੁੱਛਦਾ ਨਹੀਂ ਕਿ ਜੇ ਰੇਖਾ ਚਤਰੀਆ ਚਤਰੀ ਉਦੀ ਸੀ ਰਾਜ ਇਦਾਂ ਹੀ ਹੁੰਦਾ ਰਹਿੰਦਾ ਇਥੇ ਜੇ ਲੋਕ ਚਤੁਰ ਦਸ ਚਾਰ ਰਚੇ ਜਿਨੇ 14 ਲੋਕ ਰਚੇ ਨੇ ਅ ਚਾਰ ਪ੍ਰਕਾਰ ਦੇ ਉੱਥੇ ਲੋਕ ਰਚੇ ਨੇ ਚਾਰ ਚਾਰ ਪ੍ਰਕਾਰ ਦੇ ਲੋਕਾਂ ਦੇ ਸਵਾਰ ਇਹਨਾਂ ਨੇ ਬਣਾਤੇ ਹੋਰੇ ਕੁਸ ਉਹ ਇਹ ਕਿੰਨੜਾ ਧਰਮ ਜਿਹੜੇ ਨੇ ਉਹ ਹੋਰ ਤਰ੍ਹਾਂ ਦੀ ਗੱਲ ਸੀ ਹੋਰ ਤਰ੍ਹਾਂ ਦੀ ਬਣਾਤੀ ਉਹਨਾਂ ਨੇ ਕਹੇ ਵੀ ਜਿਹੜੇ ਲੋਕ ਵਾਂਡੇ ਨੇ ਉਹ ਸੁਭਾਅ ਤੌਰ ਤੇ ਉਹਨਾਂ ਦੀ ਘੜਾ ਕਰੀ ਅਲੱਗ ਬਣਦੀ ਗੱਲ ਤਾਂ ਸੀ ਆਹ ਉਹ ਚਾਹੇ ਉੱਚੀ ਦੀ ਵੀ ਜਾਂਦਾ ਉੱਥੇ ਕੋਈ ਰੌਣਾ ਨਹੀਂ ਸੀ ਕਿਸੇ ਦਾ ਵੀ ਭਾਈ ਹੋਵੇ ਕਿਸੇ ਦਾ ਵੀ ਪੁੱਤ ਹੋਵੇ ਕਿਸੇ ਦਾ ਵੀ ਪਿਓ ਹੋਵੇ ਜਿਹੜੇ ਆਦਮੀ ਦੂਜੇ ਦਾ ਹੱਕ ਖੋਲਣ ਵਾਲੇ ਸੀ ਤੇ ਪ੍ਰਤੀਵਾਦੀ ਵਾਲੇ ਉਹਨਾਂ ਨੂੰ ਐਡ ਕਰਕੇ ਵੀ ਇਹਨਾਂ ਦੇ ਹੱਥੇ 'ਚ ਕਦੇ ਪਾਵਰ ਨਹੀਂ ਆਜੀ ਇਹਨਾਂ ਦੇ ਅੱਥੀ ਪਾਵਰ ਆ ਗਈ ਇਹ ਦੁਖੀ ਕਰ ਦਿੰਦੇ ਸਾਰਿਆਂ ਨੂੰ ਜਿਹੜਾ ਉਹ ਜੇ ਸੁਆਦ ਆਦੀ ਬੁੱਤਾਂ ਤੋਂ ਉਹਦੀ ਕੈਟਾਗਰੀ ਹੱਟ ਬਣਾ ਦਿੰਦੇ ਉਹ ਫਿਰ ਆ ਉਹ ਡਿਜੀਟਲ ਦਾ ਇਸ ਕਰਕੇ ਸੀ ਨਾ ਉਹਨਾਂ ਦੀ ਵਰਤੀ ਨਹੀਂ ਸੀ ਫਿਰ ਉਹ ਕੈਟਾਗਰੀ ਬਣਾਤਾ ਸਾਰੇ ਰੀਚ ਨੇ ਉਹਨਾਂ ਦੇ ਰੀਚ ਪੈਦਾ ਹੁੰਦੇ ਤੇ ਉਹ ਉਹ ਹੂਜੇ ਰੰਦੇ ਤੇ ਇਹਨਾਂ ਦੇ ਹੂਜ ਪੈਦਾ ਹੋ ਜਾਂਦੇ ਤੇ ਡੀਜੇ ਰੰਦੇ ਸੀ ਫਿਰ ਐ ਬਣਾਤੇ ਨਾ ਬਾਅਦ ਚੱਕ ਆਪਣਾ ਤਾਂ ਦੇਚ ਵੀ ਉਹ ਚ ਉਹਨਾਂ ਦਾ ਹੋਸ਼ ਵੀ ਨਹੀਂ ਸੀ ਪਿਛੋ ਹੈ ਹੋ ਗਿਆ ਉੱਥੇ ਤੱਕ ਠੀਕ ਸੀ ਵੀ ਬੁਰੇ ਆਦਮੀ ਦੇ ਹੱਥੇ ਚ ਪਾਵਾਂ ਨਾ ਜੀ ਜਿਹੜਾ ਆਦਮੀ ਗਲਤ ਆਦਮੀ ਉਹਦੇ ਹੱਥੇ ਪਾਵਾਂ ਨਾ ਜੀ ਉੱਥੇ ਤੱਕ ਤਾਂ ਗੱਲ ਠੀਕ ਸੀ ਉੱਥੇ ਤੱਕ ਤਾਂ ਠੀਕ ਸੀ ਜਿਹੜਾ ਆਦਮੀ ਲੜਨ ਵਾਲਾ ਫੌਜ ਵਾਲਾ ਵਰਸ਼ਲ ਰੱਖਿਆ ਕਰਦਾ ਵੀ ਬਹੁਤ ਦਾਰੀ ਦੀ ਨਾ ਰੱਖਿਆ ਕਰਦਾ ਉਹਨੂੰ ਉਸ ਛਤਰੀਆਂ ਦੀ ਕੈਟਾਗਰੀ ਜਿਵੇਂ ਲੋ ਜਿਹੜਾ ਉੱਥੇ ਜਾ ਕੇ ਦੁਸ਼ਮਣਾਂ ਵੱਲ ਜੇ ਉਹ ਤੇ ਬਚ ਕੇ ਰੋ ਉਹਦੇ ਜੇ ਉਲਵਾਡ ਕੱਢ ਦਿਓ ਕਿਤੇ ਬਣਾਉ ਨੂੰ ਉਲ ਦੋ ਇਹ ਜਾਂ ਸੀ ਉਹ ਸਿਸਟਮ ਹੁਣ ਵੀ ਐਵੇਂ ਸੇ ਵੀ ਕਰਦੀ ਹੈ ਸਰਕਾਰ ਸੀਆਈਡੀ ਦਾ ਰੱਖਦੀ ਹੈ ਜਿਹੜੇ ਆਪਣੇ ਆਦਮੀ ਖਰਾਬ ਕਰਦੇ ਸੋ ਗਾਨ ਗੰਧਰਵ ਦੇਵ ਅਦੇਵ ਸਚੇ ਗਣਧਰਵ ਦੇਵ ਅਦੇਵ ਸਚੇ ਸਾਜਨ ਦੇਵਤੇ ਰਾਕਸ਼ਸ ਗਣਧਰਵ ਇਤੈ ਸਚੇਨ ਅਨਤੂਤ ਅਪੂਤ ਅਚੂਤ ਮਤੰ ਅਣਪੂਤ ਅਨਤੂਤ ਅਨਤੂਤ ਅਪੂਤ ਅਪੂਤ ਅਚੂਤ ਮਤੰ ਅਚੂਤ ਮਤੰ ਪੱਤਾ ਵੀ ਉਹਨਾਂ ਦੀ ਅਡਡ ਅਡ ਬਣਾ ਜੇ ਪੱਤਾ ਵੀ ਅਡਡ ਅਡ ਸੁਭਾਵੀ ਅਡਡ ਬਣਾ ਰਹੇ ਉਹਨਾਂ ਦੇ ਮਲਪੂਤ ਨੇ ਮਾਇਆ ਤੋਂ ਮਾਇਆ ਤੋਂ ਪਰੇ ਦੀ ਬੰਤਾ ਕਿਸੇ ਦੀ ਮਾਇਆ ਤੋਂ ਪਰੇ ਹੀ ਮਾਇਆ ਦਾ ਕੋਈ ਸਮੁੰਦਰੀ ਅਨਗਾਦ ਅਬਿਆਦ ਅਨਾਦ ਗਤੰ ਅਨਦਾਦ ਜਿਹੜਾ ਅਗਾਦ ਹੋਵੇ ਅਗਾਦ ਵੀ ਕਹਿੰਦੇ ਨੇ ਨਾ ਬੁੱਧੀ ਤੋਂ ਪਰੇ ਹੋਵੇ ਅਵਿਆਦ ਅਵਿਆਦ ਵਿਆਦੀ ਨੋ ਖਵਜੀ ਦੇ ਅੰਦਰ ਵਿਆਦੀ ਹੁੰਦੀ ਹੈ ਜਿਹਦਾ ਨਾ ਔਗਣ ਬਦਲ ਔਗਣ ਤੇ ਬਦਲ ਨੂੰ ਵਿਆਦ ਕਹਿੰਦੇ ਨੇ ਅਨਾਦ ਦੀ ਗਤਨ ਅਨਾਦੀ ਗਤਨ ਨਾ ਹੋਵੇ ਉਹ ਅਨਾਦ ਹੈ ਜਿਹਦਾ ਆਦ ਨਹੀਂ ਹੈ ਨੋ ਅਨਾਦ ਹੈ ਅਨਾਦ ਗਤ ਅਨਾਦ ਗਤ ਹੋ ਉਹਨੇ ਅਨਹਾਦ ਨਾਲ ਜਾ ਲੜ ਲਿਆ ਅਨਹਾਦ ਵਰਗਾ ਸਭਾ ਗੱਤਾਂ ਸੁਹਾੜੂ ਇਹ ਕਹਿੰਦੇ ਨੇ ਗੱਤਾਂ ਸੁਹਾੜੀ ਉਹ ਗੱਲ ਹੈਗਾ ਤੋਰ ਕੀ ਤੇਮਰੀ ਗੱਤ ਮੈਂ ਤਬੀ ਜਾਣੀ ਅਨਹਾਦ ਦੇ ਕਥਨ ਅਜਿਹੀ ਅਨਹਾਦੀ ਹਾਲਤ ਹੈ ਜਾਂ ਜੀ ਅਨਹਾਦ ਦੀ ਵਿਰਤੀ ਹੈ ਉਹ ਜੀ ਨੂੰ ਦੀ ਵਿਰਤੀ ਸੁਭਾਅ ਅਨਹਾਦ ਜਿਹਦਾ ਆਦ ਨਹੀਂ ਉਹ ਆਪ ਅਨਾਦ ਹੈ ਜਿਹੜਾ ਅਨਾਦ ਹੈ ਉਹ ਨਾ ਵਾਧਾ ਨਾ ਘਟਦਾ ਜਿਹੜਾ ਵਾਧਾ ਘਟਦਾ ਉਹ ਉਹ ਅਨਾਦ ਨਹੀਂ ਹੋ ਸਕਦਾ ਇਹਦਾ ਮਤਲਬ ਉਹਦਾ ਆਦ ਹੈ ਜਿਹੜੀ ਹੈ ਆਤਮਾ ਗਿਆਨ ਲੈ ਰਹੀ ਹੈ ਨਾ ਉਹ ਅਨਾਦ ਨਹੀਂ ਹੋਈ ਅਜੇ ਤੇ ਟੋਟਾ ਆ ਅਨ੍ਖੇਦ ਜਦ ਹੋ ਗਿਆ ਜਦ ਹੋ ਪੂਰਾ ਹੋ ਗਿਆ ਅਨਖੇਦ ਪੂਰਾ ਹੋ ਕੇ ਅਨ੍ਹਾਦ ਹੈ ਅਧੂਰਾ ਨਾ ਹਾਲ ਨਹੀਂ ਹੈ ਅਨਖੇਦ ਅਭੇਦ ਅਛੇਦ ਨਰੰਗ ਅਨਪੇਦ ਅਖੇਦ ਅਛੇਦਦਰਗ ਅਨਪੇਦ ਪੇਦ ਤੋਂ ਪਰੇ ਜਿਹਦਾ ਕੋ ਨਾ ਹੋਵੇ ਅਛੇਦ ਅਛੇਦ ਜਿਹੜਾ ਛੇਦਿਆ ਨਹੀਂ ਜਾ ਸਕਦਾ ਨਰੰਗ ਤੂੰ ਐਸਾ ਨਾ ਰਹੇ ਤੇਰਾ ਕਿਹਜੇ ਰੂਪ ਹੋ ਤਰੀ ਐਨੇ ਸਮਝ ਉਹਦੀ ਵੀ ਕਿਉਂ ਕਰਦਾ ਕਿਤੇ ਫਾਇਦਾ ਕਰਦਾ ਕਿਤੇ ਨਾਸ ਕਰੀ ਜਾਂਦਾ ਇਹ ਸੁਭਜੇ ਦੀ ਉਹ ਨਾਸ ਕਰਦਾ ਕਰਦਾ ਪੈਦਾ ਕਰਤੀ ਸੀ ਚੀਜ਼ ਉਹ ਰਾਹ ਹੁੰਦੈ ਰਿਹਾ ਕਦੇ ਕਰਦਾ ਕਦੇ ਉਹ ਵੀ ਕੋਈ ਗੱਲ ਹੋਊ ਏ ਸਾਲੂ ਪਤਾ ਇਸ ਕਰਕੇ ਆਦਮੀ ਸਾਡੀ ਸਮਝ ਨਹੀਂ ਆ ਰਹੀ ਗੱਲ ਕੱਲ ਤਾਂ ਠੀਕੇ ਐ ਪੱਜ ਪਤਾ ਲੱਗਦਾ ਵੀ ਠੀਕੇ ਸੀ ਪਹਿਲਾਂ ਪਹਿਲਾਂ ਐ ਲੱਗਦਾ ਵੀ ਆਹ ਕੰਮ ਹੋ ਗਿਆ ਐ ਬੋਲ ਰਿਹਾ ਹੋ ਗਿਆ ਪੱਜ ਪਤਾ ਲੱਗਦਾ ਨਹੀਂ ਐ ਠੀਕੇ ਹੋਏ ਪਿੱਛੋਂ ਤਾਂ ਪਤਾ ਲੱਗ ਜਾਂਦਾ ਵੀ ਠੀਕੇ ਸੀ ਉਦੋਂ ਐ ਲੱਗਦਾ ਵੀ ਠੀਕ ਨਹੀਂ ਹੈਗਾ ਇਹਦਾ ਬੰਦਾ ਭੇਜਿਆ ਹੀ ਨਹੀਂ ਸੀ ਪੇਹਦ ਹੋਵੇ ਤਾਂ ਪਹਿਲਾਂ ਹੀ ਦੱਸ ਦੋ ਕੋਈ ਨਹੀਂ ਬਈ ਠੀਕੇ ਐ ਇਦਾਂ ਹੀ ਹੋਣਾ ਚਾਹੀਦਾ ਸੀ ਆਦਮੇ ਦੀ ਬੁੱਧੀ ਤਾਂ ਬੜੀ ਦੀਗਲ ਐ ਜੇ ਚਾਰ ਚਤੁਰਦਸ ਚੱਕਰ ਫਿਰੰ ਜਿਹਦਾ ਚੱਕਰ ਚੱਕਰਕਾਲ ਹੁਕਮ ਦਾ ਜਿਹਦਾ ਹੁਕਮ ਚੌਦਹ ਲੋਕਾਂ ਦੇ ਫਿਰਦਾ ਹੁਕਮ ਆਇਆ ਕਾਲ ਚੱਕਰ ਕੋਲ ਉਹ ਕਾਲ ਚੱਕਰ ਕਹਿੰਦੇ ਨੇ ਅਸਾਂ ਅਸੀਂ ਹੁਕਮ ਕਹਿੰਦੇ ਹਾਂ ਹੁਕਮ ਕਹ ਲੋ ਚਾਹ ਕਾਲ ਚੱਕਰ ਕਹ ਦੋ ਕੋਈ ਗੱਲ ਉਹ ਇੱਥੇ ਵਿਦਵਾਨਾਂ ਨੂੰ ਨਹੀਂ ਪਤਾ ਜਿਨ੍ਹਾਂ ਦੇ ਸਿਰਫ ਕੁਝ ਕਿਤਾਬਾਂ ਪੜ੍ਹੀਆਂ ਨੇ ਸਾਡੇ ਵਿਦਵਾਨਾਂ ਦੀ ਯੂਨੀਵਰਸਿਟੀ ਦੇ ਲਿਖੀ ਹੋਈਆਂ ਇਹ ਪੰਡਤਾਲੇ ਟੀਕੇ ਪੜ੍ਹੇ ਵੀ ਪੰਡਤਾਲੇ ਉਹਨਾਂ ਨੇ ਕਾਲ ਚੱਕਰ ਪੜ੍ਹਿਆ ਕਾਲ ਚੱਕਰ ਉਹਨੂੰ ਇਹ ਨਹੀਂ ਪਤਾ ਵੀ ਹੋਊਗਾ ਵੀ ਇਹ ਉਸ ਨੇ ਲੜਾਈ ਜਾਂਦੇ ਨੇ ਵੀ ਹੁਕਮ ਕਾਲ ਲਈ ਜਾਂਦਾ ਜੇ ਤਾ ਉਹ ਗੁਰਬਾਣੀ ਪੜ੍ਹ ਇਹਨਾਂ ਜੁੜਨ ਫੇਰ ਤਾਂ ਉਹਨੂੰ ਸਮਝ ਆਵੇ ਵੀ ਕਾਲ ਚੱਕਰ ਹੁਕਮ ਹੁੰਦਾ ਉਜਮੜਾ ਨਾ ਹੁਕਮ ਹੈ ਕਾਲ ਚੱਕਰ ਹੈ ਯਾਰ ਕਾਲ ਹੀ ਕਹਿਦਾ ਦਿੰਦਾ ਤੂੰ ਤੇ ਨਾ ਕਾਲਾਂ ਚ ਬੈਨਾ ਤਦਕਾਲ ਬਲਕੇ ਤੇ ਨਾ ਕਾਲਾਂ ਚ ਤਿੰਨੇ ਕਾਲ ਤੂੰ ਹੀ ਹੈ ਤੂੰ ਤੇ ਕਾਇ ਹੈ ਇਹ ਪਹਿਲਾਂ ਅਮੇ ਤਿੰਨ ਕਾਲ ਜਿਹੜੇ ਨੇ ਬਣਾਏ ਹੋਏ ਭੂਤ ਵਰਤਮਾਨ ਤੂੰ ਹੀ ਹੈ ਹੁਕਮ ਹੈ ਤੇ ਕਾਲ ਹੋਰ ਕੁਛ ਨਹੀਂ ਹੈ ਕਾਲ ਕੋਈ ਨਹੀਂ ਤੇ ਨਾ ਕਾਲਾਂ ਸਭ ਦਾ ਅਕਾਲ ਤੂੰ ਹੀ ਬਣਾਉਣਾ ਤੂੰ ਹੀ ਬਾਰਤ ਤੂੰ ਹੀ ਬਣਾ ਕਰਦਾ ਇਹ ਕਾਲ ਨੇ ਹੋਰ ਕਾਲ ਕੀ ਨੇ ਉਹਦਾ ਲੰਘਿਆ ਸਮਾਂ ਉਹ ਭੂਤਕਾਲ ਹੋ ਗਿਆ ਆਉਣ ਵਾਲਾ ਭਵਿੱਖ ਤਾਂ ਹੋਣਾ ਵਰਤਮਾਨ ਸਮਾਂ ਤੇ ਕੋਈ ਉਹ ਲੱਜ ਲਾ ਕੇ ਚੱਲਿਆ ਸੀ ਖੂਜ ਭਰਾਤੀ ਜਿੱਦੀ ਕਿ ਤੱਕ ਖੁੱਤੱਕ ਗਈ ਹੈ ਉਹਦੀ ਗੁੱਦਲ ਕੇ ਬਾਕੀ ਜੋ ਪਈ ਹੈ ਓਏ ਸਾਰੀ ਉਹ ਥੜੀ ਉੱਦਣ ਗਈ ਕੋਈ ਰੇੜੇ ਤੇ ਹੈ ਕੋਈ ਗਾਂ ਚਲੀ ਗਈ ਥੱਲੇ ਖੂਜ ਉਹ ਰੇੜੇ ਤੇ ਜਣੀ ਉਹਦਾ ਪ੍ਰੈਜੈਂਟ ਹੈ ਤੇ ਜਿਹੜੇ ਰੇੜੇ ਤੇ ਹੱਥ ਚ ਆਪਣੇ ਉਹਦਾ ਪ੍ਰੈਜੈਂਟ ਹੈ ਉਹ ਜਿਹੜੀ ਖੋਜ ਨੂੰ ਚਲੀ ਗਈ ਉਥੇ ਲੱਜ ਕੱਠੀ ਪਈ ਲੰਬੀ ਹੈ ਆਈ ਹੋਰੀ ਉਹ ਉਹ ਵੇਖ ਤਾਂ ਉਸ ਲੱਜ ਦਾ ਤੇ ਟੁੱਟੇ ਨਾ ਲੱਜ ਦਾ ਇੱਕੋ ਹੀ ਹੈ ਜੇ ਉਹ ਹੀ ਜੇ ਕੇ ਫੇਰ ਆ ਜਵੇ ਚੇਨ ਵੀ ਤਾਂ ਹੁਲਦੀ ਆਪਣੇ ਹੌਲ ਜੇ ਨਾ ਜਲਦੀਆਂ ਨੇ ਉਹੀ ਮੁੜ ਕੇ ਫੇਰ ਆ ਜਾਂਦੀ ਐ ਭਾਜਣੀ ਡੰਗੀ ਕੁਝ ਹੱਥੇ ਚਾਹੇ ਕੁਝ ਡੰਗੀ ਕੁਝ ਜੋੜ ਨਾਲ ਹੀ ਐ ਇਹ ਕੋਈ ਆਸਲ ਦੇ ਵਿੱਚ ਕਦੇ ਸਾਨੂੰ ਲੱਗਦੇ ਨੇ ਉਹ ਜੇ ਨੇ ਕੋਈ ਹੁੰਦੀ ਆਪਣੇ ਮੋਟਰਸਾਈਕਲਾਂ ਤੇ ਹਰ ਹੋਰ ਉਹੀ ਘੁਮ ਘੁਮਾਈ ਜਾਂਦੀ ਐ ਐਸੇ ਕਾਲ ਦਾ ਚੱਕਰ ਐ ਚੱਕਰ ਤਾਂ ਹੀ ਲਿਖਿਆ ਚੱਕਰ ਹੁੰਦਾ ਹੀ ਕ ਚੱਕਰ ਕੋ ਹੁੰਦਾ ਕਾਲ ਦਾ ਤਾਂ ਹੀ ਚੱਕਰ ਲਿਖਿਆ ਉਹੀ ਚੱਕਰ ਫੇਰ ਗੁੜ ਗਿਆ ਜਾਂਦਾ ਗੱਡੇ ਦਾ ਪਹੀਆ ਹੁੰਦਾ ਆਪਣਾ ਕਾਰ ਦਾ ਚੱਕਰ ਤੈਰ ਹੁੰਦਾ ਚੱਕਾ ਹੁੰਦਾ ਉਹੀ ਘੁਮ ਘੁਮਾਈ ਜਾਂਦਾ ਉਹਨਾਂ ਕੇ ਰਹਿਣਾ ਕਰੋੜਾ ਮਿਲਨ ਦੀ ਸਵਰ ਘਟ ਹੋਈ ਜਾਂਦਾ ਐ ਇਹਦਾ ਜੇ ਰਗ ਨਾ ਰੰਗ ਨਾ ਰੇਖ ਰੁਗੰ ਦੀਦਾ ਕੋਈ ਨਾ ਰਾਗ ਹੈ ਨਾ ਰੰਗ ਹੈ ਨਾ ਰੇਖ ਹੈ ਮਰੁਗਮ ਨਾ ਕੋਈ ਉਹ ਨੂਰ ਹੋਗਾ ਰੋਗ ਨਹੀਂ ਕੋਈ ਰੋਗ ਮਤਲਬ ਹੈ ਸਰੀਰ ਦਾ ਰੋਗ ਤੇਰੀ ਗੱਲ ਹੁੰਦੀ ਸਰੀਰ ਦੇ ਦੀ ਗੱਲ ਆਤਮਾ ਦੀ ਗੱਲ ਆਤਮਾ ਜੇ ਕਿਸੇ ਹੋਰ ਰੰਗ ਦੇ ਵਿੱਚ ਨਹੀਂ ਤਾਂ ਰੋਗ ਤੇ ਵਿੱਚ ਵੀ ਨਹੀਂ ਉਹ ਗੋਣੇ ਕੋਈ ਆਗਣ ਬਦਲ ਰੰਗ ਬਦਲ ਜਾਲ ਔਗਣ ਰਾਂ ਬੁਈ ਬਦਲ ਜਣਾ ਜੇ ਔਗਣ ਹੋ ਉਤਰਾ ਬਦਲ ਜਾਣਾ ਤਾਂ ਜੈ ਸੋਗ ਨਾ ਭੋਗ ਨਾ ਸੋਗ ਨਹੀਂ ਭੋਗ ਦੀ ਕੋਈ ਸੋਗ ਭੋਗਾ ਕਰਕੇ ਉਦ ਤਾਕੂ ਜੋਗ ਹੈ ਨਾ ਜੋਗ ਜੁਗੰ ਨਾ ਕਿਸੇ ਨਾਲ ਜੋਗ ਵਾਸਤੇ ਜੋੜਨ ਦੀ ਲੋੜ ਹੈ ਉਹਨੂੰ ਹੋਰਾਂ ਉਹਨੂੰ ਜਦ ਸੁਖ ਹੈ ਜੋ ਜੁੜੀਦਾ ਹੁੰਦਾ ਕਿਸੇ ਦੇ ਸਹਾਰੇ ਆਸਰੇ ਵਾਸਤੇ ਉਹਨੂੰ ਜੁੜਨ ਦੀ ਲੋੜ ਨਹੀਂ ਕਿਸੇ ਨਾਲ ਜੇ ਵੀ ਜੋਗੀ ਹੈ ਨਾ ਜੋਗੀ ਕਹਿੰਦੇ ਨੇ ਅਸੀਂ ਬਰਾਤ ਹੈਗੇ ਅਸੀਂ ਜੋਗੀ ਪਰ ਜੁੜਨਾ ਕਿਸੇ ਹੋਰ ਨਾਲ ਤੁਸੀਂ ਕਹਦੇ ਜੋਗੀ ਹੋਏ ਫਿਰ ਜੁੜਨਾ ਜੋਗੀ ਤਾਂ ਹੋਈ ਇਹ ਨਾ ਤੁਸੀਂ ਜੁੜਨਾ ਜੋਗੀ ਹੁੰਦਾ ਜੁੜਿਆ ਹੋਇਆ ਅਸਲ ਦੇ ਵਿੱਚ ਜੁੜਨ ਵਾਲਾ ਜੋਗੀ ਨਹੀਂ ਜਿਹਨੇ ਜੋੜਨਾ ਜੋਗੀ ਕਿਥੋਂ ਦਾ ਬਿਯੋਗੀ ਐ ਬਿਯੋਗੀ ਜੋਗੀ ਕਹੀ ਜਾਂਦੇ ਨੇ ਆਪਣੇ ਆਪ ਨੂੰ ਉਹ ਜਿਹਨੇ ਜੋੜਨਾ ਜੋੜਨਾ ਕਿਉਂ ਐ ਬਿਯੋਗੀ ਐ ਉਹ ਕਹਿੰਦਾ ਨਹੀਂ ਜੋਗੀਆਂ ਐ ਕਿ ਬਿਯੋਗੀ ਉਹ ਜਿਹੜਾ ਜੁੜਿਆ ਹੋਇਆ ਤਾਂ ਜੋਗੀ ਐ ਉਹ ਜਗ ਜੋਗੀ ਤਾਂ ਆਪ ਉਹ ਜਗ ਜਿਹੜਾ ਜੁੜਿਆ ਹੋਇਆ ਹੈ ਕੇਸੋ ਜਗ ਜੋਗੀ ਐ ਕਈ ਕਬੀਰ ਕੇਸੋ ਜਗ ਜੋਗੀ ਕੇਸੋ ਹੈ ਜਗ ਜੋਗੀ ਸਾਰੇ ਜਗ ਨਾਲ ਜਿਹੜੇ ਜੁੜੇ ਹੋਏ ਜੋਗੀ ਤਾਂ ਉਹ ਹੈ ਜਿਹੜੇ ਜੁੜਿਆ ਹੀ ਨਹੀਂ ਹੋਇਆ ਉਹ ਤਾਂ ਬਿਯੋਗੀ ਹੈ ਜੇ ਜੋਗੀ ਕਿੱਥੇ ਉਹ ਬਿਯੋਗੀ ਜੋਗੀ ਉਹ ਰੋਜ਼ ਤਾਂ ਤੁਸੀਂ ਸਮਾਧੀ ਲਾਉਣੇ ਕਾਹਦੇ ਵਾਸਤੇ ਜੋਗ ਵਾਸਤੇ ਜੁੜਨ ਵਾਸਤੇ ਕਹਿੰਦੇ ਸੀ ਜੋਗੀ ਉਹ ਬਿਯੋਗੀ ਹੈ ਜੋਗੀ ਕਾਨੂੰ ਨੇ ਇਹ ਜੋਗੀਆਂ ਬਸ ਸਮਾਧੀ ਲਾਉਣ ਦੀ ਕੀ ਲੋੜ ਹੈ ਇਹਵੇਂ ਸੰਤ ਨੇ ਇਹ ਤੁਹਾਨੂੰ ਸ਼ਾਂਤੀਆਂ ਵਾਲਾ ਕਿਹਦੀ ਫਿਰਦੇ ਆ ਫਿਰ ਅਸ਼ਾਂਤ ਅਸ਼ਾਂਤ ਅਸੰਤ ਤੋਂ ਤੁਸੀਂ ਇਹ ਜੋ ਸੰਤਰੀਓ ਸੰਤ ਹੋਣ ਵਾਸਤੇ ਹੀ ਵਾਲਾ ਫਿਰਦੇ ਹੋ ਕਹਿੰਦੇ ਅਸੀਂ ਸੁਖਤਾ ਹੈਗੇ ਨੇ ਅਸੰਤ ਅਸ਼ਾਂਤੀਆਂ ਤੁਹਾਡੇ ਅੰਦਰ ਤਾਂ ਵਾਲਾ ਫਿਰਦੇ ਹੋ ਜਦੋਂ ਸ਼ਾਂਤੀਆਂ ਹੀ ਵਾਲਾ ਪਰੇਵਾਰੋਂ ਗੇ ਵਗਾ ਕੇ ਬਾਲਾ ਤੇ ਫਿਰ ਕੀ ਲੈਣਾ ਪੌੜੀ ਜਣੀ ਜਨੇ ਕਹਿੰਦੇ ਅਸੀਂ ਖੜੇ ਖੜੇ ਪੌੜੀ ਦੇ ਖੜੇ ਨੇ ਪੌੜੀ ਦੇ ਖੜੇ ਡੱਡੇ ਤਾਂ ਚੜਦਾ ਆ ਥੱਲੇ ਉਤਰਦਾ ਫੇ ਫੌੜੀ ਦੇ ਕਿਹੜਾ ਉਹ ਸਰੇ ਪਹੁੰਚੇ ਤੁਸੀਂ ਬਹਾਲਾ ਤਾਂ ਥੋੜੀ ਪੌਣੀ ਹੈ ਜੇ ਉਹ ਚੈਨ ਚਲਦੀ ਹੈ ਉਹ ਨਾਲ ਜਿਹੜੇ ਚਲਦੀ ਹੈ ਚੱਕਾ ਕੁਮਲੇ ਜੇ ਨજર ਬੱਜ ਲੀ ਆਈ ਜੇ ਬੱਜ ਲਾਗੀ ਚੱਕਾ ਕਾਤੇ ਕੁਮਦਾ ਵਾਲਾ ਕਾਤੇ ਕੁਮਦੀਆ ਥੋੜੀ ਉਹ ਜੇ ਸਰੇ ਪਹੁੰਚਦੇ ਵਾਲਾ ਦਾ ਛੜਦੇ ਹੋ ਫਿਰ ਗੱਡੀ ਫੇਰ ਵੀ ਚੱਲੀ ਜਾਂਦੀ ਹੈ ਚੱਕਾ ਫੇਰ ਵੀ ਚੱਲਦਾ ਸਰੇ ਪਹੁੰਚ ਵੀ ਗਏ ਇਹ ਤਾਂ ਮੂਰਖ ਨੇ ਹੈ ਲੋਕ ਤਾਂ ਵਿਚਾਰਿਆਂ ਦਾ ਕੋਈ ਰੌਲਾ ਹੀ ਨਹੀਂ ਉਹ ਤਾਂ ਮੂਰ ਖੈ ਗਈ ਨੇ ਜਿਹੜੇ ਸ਼ਰਧਾ ਰੱਖਦੇ ਨੇ ਨਾ ਤੇ ਉਹਨਾਂ ਦਾ ਸਮਝ ਨਹੀਂ ਪਰ ਇਹਨੂੰ ਪੁੱਛੋ ਵੀ ਤੁਸੀਂ ਮੂਰ ਖੂ ਕੋਈ ਸਾਲਾ ਬੰਦਾ ਦੇਖ ਲੂ ਜਾਂ ਫਿਰ ਗੱਡੀ ਜੱਕ ਲਾ ਕੇ ਤੁਸੀਂ ਸਟੇਅਰ ਘੁਮਾਏ ਹੋਏ ਗੱਡੀ ਦੇ ਜੱਕ ਲੱਗਿਆ ਹੋਇਆ ਇੰਜਰ ਚੱਲਦਾ ਟਾਇਰ ਵੀ ਪਿਛਲੇ ਚੱਲਦੇ ਨੇ ਕਿਉਂਕਿ ਉਹ ਕੰਦੇ ਚਲਾਇਆ ਉਹ ਜਲਦੀ ਤਾਂ ਬੈਠੇ ਹੋ ਬੈਠੇ ਹੋਤੀ ਨੇ ਤਾਂ ਉਹ ਗੱਲਾ ਵੀ ਜੱਕ ਲਾਤਾ ਟਾਇਰ ਚਲੀ ਜਾਂਦਾ ਜਾਣਾ ਜੁਣਾ ਇਹਨਾਂ ਨੇ ਕਿ ਤੇਰੀ ਬਾਲਾ ਚਲਦੀ ਹੈ ਜੈਕ ਲਾ ਕੇ ਤੇ ਪੈਰ ਚੱਲਦਾ ਉੱਥੇ ਬੈਠਾ ਨਹੀਂ ਨਾ ਕਹਾਂ ਗਏ ਨੇ ਨਾ ਪਛਾਲ ਬਾਲਾ ਤਾਂ ਲਾ ਦੇ ਫਿਰ ਇਹ ਜੀ ਗੱਲ ਹੈ ਨਾ ਦੀ ਉਹ ਜਦੋਂ ਹੋਲੀਆਂ ਦੀ ਕਹਾਣੀ ਸੁਣੁੰਦੇ ਨੇ ਹੋਟਲ ਤੇ ਜੈਕ ਲਾਇਆ ਸੀ ਪੈਰ ਬਦਲ ਨੂੰ ਗੱਡੀ ਸਟਾਰਟ ਕਰਦੀ ਜੈਕ ਲਾਇਆ ਦੀ ਸਟੀਅਰਿੰਗ ਦੇ ਬੈ ਕੇ ਸਟਾਰਟ ਕਰਕੇ ਸੌ ਗਿਆ ਫਾਇਦਾ ਦੀ ਗੱਡੀ ਚਲੀ ਕਹਿੰਦਾ ਕਥੀਆਂ ਕਹਿੰਦਾ ਹੋਟਲ ਤਾਂ ਹੋਈ ਅਜੇ ਬਿਠਾਖ ਨਹੀਂ ਕਰਦੇ ਫੋਸਦਿਆਂ ਨੂੰ ਫਿਰ ਉਹ ਆ ਜਨਾਂ ਤੇ ਫਿਰ ਤਾਂ ਹੈ ਉੱਥੇ ਦੇ ਗੱਡੀ ਵੀ ਚਲੀ ਜਾਂਦੀ ਹੈ ਟਾਇਰ ਵੀ ਖਮਾਈ ਜਾਂਦੇ ਨੇ ਪਰ ਖੜੇ ਉੱਥੇ ਹੀ ਨੇ ਜੋ ਉੱਥੇ ਨਾਉਂਦੇ ਕੋ ਦੱਸ ਦੇ ਸੰਸਾਰ ਨੂੰ ਕੋ ਦੱਸਦੇ ਗੱਲਾਂ ਨਵੀਆਂ ਜੇ ਕਿਤੇ ਪਹੁੰਚਦੇ ਕਿ ਹੋਰ ਦੇਖ ਦੀ ਗੱਲ ਦੱਸਦੇ ਫਿਰ ਇਹਨਾਂ ਨੇ ਖਟਿਆ ਕੀ ਆਪਣੀ ਸਾਰੀ ਜਿੰਦਗੀ ਜਿਹੜਾ ਕੋ ਦੇਖਿਆ ਕਮਾਇਆ ਉਹ ਦੱਸਣ ਕੀ ਦੇਖਿਆ ਕੀ ਕੀਤਾ ਜੋ ਕਹਿ ਰਹੇ ਨੇ ਪ੍ਰਾਲੀਆਂ ਗੱਲਾਂ ਨੇ ਸਾਰੀਆਂ ਕਿਤਾਬੀ ਲਿਖਤਾ ਜਿਹੜੀਆਂ ਕਹਿ ਰਹੇ ਨੇ ਇਹ ਦੱਸਣਾ ਅਸੀਂ ਨਵਾ ਕੀ ਦੇਖਿਆ ਉਹ ਤੇ ਖੂਲ ਜੋ ਨਵਾ ਕੀ ਅਸੀਂ ਖਟਿਆ ਸਮਝਿਆ ਉਹੀ ਦੱਸ ਦੇ ਬੱਖ ਪੱਲੇ ਤੁਹਾਡੇ ਹੈ ਨਹੀਂ ਹੋਡਲ ਤੇ ਜੈਕ ਲਾ ਕੇ ਮਾਲਾ ਫੇਰ ਜੰਦੇ ਹੋ ਗੱਡੀ ਨੂੰ ਤੇਲ ਹੋਣੀ ਫੋਦਾ ਪੂਪਜਨ ਗੰਜਨ ਆਦ ਸਰੰ ਪੂਪਜਨ ਗੰਜਨ ਆਦ ਸਰੰ ਪੂਪਜਨ ਢੜੀ ਚੀਜ਼ ਬਣਾਈ ਆ ਤਾਂ ਉਹਨੂੰ ਢਾਵੀ ਤੇ ਲਟਾਉਣ ਵਾਲਾ ਵੀ ਆਪੇ ਗੰજન ਆਦ ਸਰੰਗ ਗੰજન ਆਦ ਸਰੰਗ ਜਿਹੜੇ ਹਿਰਦੇ ਬਣਾਉਣਾ ਤੂੰ ਟੱਪਦਾ ਵੀ ਤੂੰ ਹੀ ਹੋਰ ਪੰਜਨਵੀ ਹੈ ਆਦ ਸਰੰਗ ਸਾਰੇ ਦੇ ਸਰਦੇ ਉੱਤੇ ਆ ਸਾਡਾ ਜਿਹੜਾ ਹਿਰਦੇ ਦਾ ਦਰਬਾਰ ਹੁੰਦਾ ਨਾ ਤੇ ਜੋਤ ਬਾਹਰ ਨਿਕਲਦੀ ਹੈ ਉਹਦੇ ਹੁਕਮ ਨਾਲ ਰਹਿੰਦੀ ਹੈ ਜੋਤ ਜਿੱਨੇ ਏਰੀਆ ਦੇ ਵਿੱਚ ਸਾਡੀ ਜੋਤ ਫੈਲਦੀ ਹੈ ਕਿਸੇ ਆਤਮਾ ਦੀ ਉਹਦਾ ਹਿਰਦਾ ਹੁੰਦਾ ਯਾਰੋ ਟਾਈਮ ਖਾਦੋ ਹੋ ਜਾਂਦਾ ਆ ਜੋ ਫਟ ਜਾਂਦੀ ਐ ਸਸ ਕਲੈਬ ਹੋ ਜਾਂਦੀ ਆ ਉਹ ਆਪਾਂ ਬੱਤੀ ਆਫ ਕਰਦੀ ਐ ਕੋਈ ਕਹੇ ਸੈਂ ਜਲਦੀ ਐ ਜਲਦੀ ਐ ਤੇ ਉਹ ਸੁਚਾਉਣ ਕਰਦੇ ਆ ਜਾਲਦੇ ਤੀਲੀ ਲਾ ਕੇ ਤੁਝਾਉਣ ਵੇਲੇ ਤਾਂ ਦਿੱਲੀ ਦੀ ਲੋੜ ਨਹੀਂ ਆਫ ਕਰ ਦੇਣੀ ਐ ਸੁਚੇ ਆਫ ਕਰਦੀ ਬਸ ਸੁਚਾਫ ਕਰਦੀ ਖਿੰਚ ਤੇਜ ਜਦ ਨੀ ਤੇਜ ਬਾਹਰ ਹੀ ਜਾਂਦਾ ਆਫ ਹੋ ਗਈ ਇਹ ਗੰਜਨ ਭਜਰ ਜਿਵੇਂ ਭਗਵਾਨ ਦੇ ਨਾਲੇ ਸਾਡੀ ਜੋਤ ਬਾਹਰ ਨਿਕਲਦੀ ਹੈ ਜਿਨਾ ਚਰਬਾਲ ਨਿਕਲਦੀ ਹੈ ਸਰੀਰ ਹੁੰਦਾ ਸਰੀਰ ਤੇ ਬਿਨਾ ਬਾਹਰ ਨਹੀਂ ਨਿਕਲਦੀ ਕਮਾਈ ਵਾਸਤੇ ਨਿਕਲਦੀ ਹੈ ਇਹ ਤਾਂ ਕੁਛ ਹੋਣਾ ਚਾਹੀ ਚ ਕਮਾਲ ਵੇ ਲਾਹ ਲੈਣ ਆਈਏ ਸੰਸਾਰ ਚ ਆਇਓ ਲਾਹ ਲੈਣ ਜੇ ਲਾਹ ਲੈ ਲਵੇ ਅੱਖਾਂ ਜਿਹਨਾਂ ਚਰ ਕੰਮ ਕਰਦੀਆਂ ਨੇ ਕੱਲ ਕੰਮ ਕਰਦੇ ਰਹਿਣ ਸਰੀਰ ਕੰਮ ਕਰਦਾ ਕੁਝ ਲਾਖ ਕਮਾਲ ਵਿੱਚ ਕੀ ਗੱਲ ਹੈ ਜੇ ਦੇਖ ਲੋ ਹੋਰ ਰਗਤ ਮਾਸਿਆਂ ਚ ਪੈ ਗਿਆ ਫਿਰ ਉਹ ਟਾਈਮ ਤਾਉ ਦਈਏ ਟਾਈਮ ਤਾ ਬਦਲਾ ਕਰਨਾ ਹੈ ਜੀ ਤਾਂ ਹੋ ਜਣਾ ਉਹਨਾ ਟਾਈਮ ਚ ਤੈਂ ਕੀ ਖਟ ਲਿਆ ਕੀ ਗੋਲਿਆ ਇਹ ਤੇਰਾ ਹਸਾਬਾ ਚ ਹੋ ਕੀ ਖਟ ਲਿਆ ਕੀ ਗੋਲਿਆ ਤੇਲ ਤਾਂ ਉਹ ਨਹੀਂ ਹੋ ਗਿਆ ਤਾਂ ਬੜਿਆ ਕਈ ਰਾਤ ਬਿੱਲੀ ਦੌੜੀ ਉਹ ਭੁਗੀ ਤੇ ਪੜਿਆ ਸਨਾ ਕਦੀ ਵਜਾਲ ਕੇ ਸੋ ਗਿਆ ਇਹ ਕੁਝ ਹੋ ਕਰੀ ਗਿਆ ਪੜਨ ਦੀ ਵਜਾਇ ਜਏ ਬੰਦਾ ਦੇਵ ਅਦੇਵ ਨਰੰ ਜਿਹਨੂੰ ਬੰਦਨਾ ਕਰਦੇ ਨੇ ਜਏ ਬੰਦਤ ਦੇਵ ਅਦੇਵ ਨਰੰ ਜਿਹਨੂੰ ਨਮਸਕਾਰਾਂ ਕਰਦੇ ਨੇ ਦੇਵ ਤੇਵੀ ਰਾਖਸ਼ ਵੀ ਨਰ ਵੀ ਦੇਖੋ ਰਾਸ਼ੀ ਵੀ ਮੰਨਦੇ ਰਹੇ ਨੂੰ ਕਿਸੇ ਨਾ ਕਿਸੇ ਰੂਪ ਚ ਇਹ ਬੰਦਤ ਦੇਵ ਅਦੇਵ ਨਰਗ ਦਰ ਵਿਚਾਲੇ ਆ ਜਾਂਦੇ ਨੇ ਦੁਹਦੇ ਨਰਾਮ ਤਾਂ ਜਿਹੜਾ ਮਰਜੀ ਲੈ ਜਾਓ ਭਰਤੀ ਕਰਕੇ ਅਤਵਾਦੀ ਵੀ ਲੈ ਜਾਂਦੇ ਆਦਮੀ ਇਹਨੂੰ ਭਰਤੀ ਕਰਕੇ ਪਬਲਿਕ ਕਿਉਂ ਲੈ ਕੇ ਜਾਂਦੇ ਨੇ ਅਤਵਾਦੀ ਵੀ ਲੈ ਜਾਂਦੇ ਨੇ ਸਰਕਾਰਾਂ ਵੀ ਲੈ ਜਾਂਦੀਆਂ ਨੇ ਤਾਂ ਵਿਚਾਲੇ ਨੇ ਕੱਚਾ ਮਾਲ ਹੈ ਨਰੰਗ ਤਾਂ ਕੱਚਾ ਮਾਲ ਹੈ ਕੋਈ ਲੈ ਜਾਓ ਫਾਟੇ ਵੀ ਚਲੇ ਨੇ ਤੇਰੇ ਅਤਵਾਦੀ ਵੀ ਲੈ ਜਾਂਦੇ ਨੇ ਉਹ ਰਾਜੇ ਜਤਵਾਦੀਆਂ ਲਈ ਉਹ ਗੱਲ ਹੈ ਹੋਰ ਕੀ ਹੈ ਉਸ ਵੇਲੇ ਦੀ ਸਰਕਾਰ ਤੋਂ ਵਿਰੋਧੀ ਕਈ ਵਾਰ ਸਰਕਾਰ ਵੀ ਅਤਵਾਦੀਆਂ ਦੀ ਵਿਰੋਧੀ ਅਤਵਾਦੀਆਂ ਵਰਗੀ ਹੋਦੀ ਖੁਦ ਸਰਕਾਰ ਅਤਵਾਦ ਵਰਗੀ ਬਣ ਜਾਂਦੀ ਹੈ ਕਈ ਵਾਰ ਇਹ ਤਾਂ ਕੁਝ ਨਹੀਂ ਪਤਾ ਲੱਗਦਾ ਬਿੱਟਾ ਜੇ ਰੰਗਤ ਬਦਲ ਜਾਂਦੀ ਆਦਮੀ ਦੀ ਆਦਮੀ ਦਾ ਕੀ ਹੈ ਕਰੋਚਾ ਗਿਆ ਹਤਵਦੀ ਬਣ ਗਿਆ ਪੁਲਿਸ ਵਾਲੇ ਵੀ ਬਣ ਜਾਂਦੇ ਨੇ ਕਈ ਵਾਰ ਫੌਜ ਵਾਲੇ ਵੀ ਬਣ ਜਾਂਦੇ ਨੇ ਫੌਜ ਵਾਲਿਆਂ ਤੇ ਕਿਤੇ ਕੇਸੜੀ ਚੱਲਦੇ ਫਿਰ ਗੁੱਸੇ 'ਚ ਜਾ ਕੇ ਆਦਮੀ ਦਾ ਸੁਭਾਅ ਹੈ ਜਾਤੀ ਦਿੰਦਾ ਗੁੱਸੇ ਜਾ ਕੇ ਜਾਤੀ ਹੋ ਜਾਂਦੀ ਉਹ ਤੇ ਜਾਤੀ ਹੋ ਜਾਂਦੇ ਪਿੱਛੋਂ ਫਿਰ ਰੋਣਾ ਪੈਂਦਾ ਉਹੀ ਆਦਮੀਆਂ ਆਦਮੀਆਂ ਨੇ ਅਖਲੂ ਸਾਰੇ ਹੀ ਰੋਧ ਕੇ ਜਦ ਵੀ ਬਤ ਮਾਰ ਦਿੰਦਾ ਜਾਤੀ ਹੋਏ ਜਦ ਹੀ ਆਦਮੀ ਤੇ ਫਿਰ ਪਾਵਰ ਕੋਲ ਹੁੰਦੀ ਹੈ ਬੜੀ ਮੁਸ਼ਕਲ ਗੱਲ ਹੈ ਕਿ ਪਾਵਰ ਕੋਲ ਹੋਵੇ ਜਾਤੀ ਨਾ ਹੋਵੇ ਔਖੀ ਗੱਲ ਹੈ ਬੁੱਧੀ ਉਹਦੀ ਕਾਬੂ ਰੱਖੇ ਜ਼ਬਤ ਵਿੱਚ ਰਹਿ ਕੇ ਕੰਮ ਕਰੇ ਔਖਾ ਹੈ ਇਹ ਕਰਦੇ ਨੇ ਚੰਗੇ ਨੇ ਸਨੇ ਗਣ ਕਿੰਨਰ ਜੱਛ ਭੁਜੰਗ ਰਚੇ ਗਣ ਕਿੰਨਰ ਜੱਛ ਪੁਚੰਦਰ ਸੇ ਰਚੇ ਅਕਈ ਗਾਣ ਜੱਛ ਪੰਜਾਬ ਸਾਰੇ ਰਚੇ ਨੇ ਸ਼ਿਵਜੀ ਦੇ ਜਿਹੜੇ ਭਗਤ ਲਿਓ ਵੀ ਐ ਜਿਹੜੇ ਦੇਵਤਿਆਂ ਵਾਲੀ ਕੈਟਾਗਰੀ ਦੇ ਨੇ ਕੋਈ ਤਰ੍ਹਾਂ ਉਹ ਵੀ ਉਹਨੇ ਰਚੇ ਨੇ ਸਾਰੇ ਇਹ ਨਹੀਂ ਐ ਵੱਖਰੀ ਵੀ ਸ਼ਿਵਜੀ ਨੇ ਬਣਾਏ ਨੇ ਉਹ ਕਿਸੇ ਵਿਸ਼ਨੂ ਨੇ ਬਣਾਏ ਨੇ ਉਹ ਕਹਿੰਦੇ ਨੇ ਨਾ ਉਹ ਕਹਿੰਦੇ ਨੇ ਸਾਰੀ ਸ੍ਰੀ ਸ੍ਰੀ ਵਿਸ਼ਨੂ ਨੇ ਬਣਾਈ ਹੋਗਾ ਨਾ ਸ਼ਿਵਜੀ ਨੇ ਬਣਾਈ ਹੈ ਉਹ ਦੁਆ ਨੂੰ ਕੱਟੀ ਜਾਂਦੇ ਨੇ ਦੁਆ ਦੇ ਹੀ ਪਰਮੇਸ਼ਰ ਨੇ ਬਣਾਏ ਪਿਛਲੀ ਫਿਲਾਸਫੀ ਇਹ ਹੈ ਉਹ ਕਹਿੰਦੇ ਨੇ ਸ੍ਰੀ ਬੜੀਆਂ ਵਿਸ਼ਨੂ ਤੋਂ ਉਹ ਕਹਿੰਦੇ ਨੇ ਬੜੀਆਂ ਸ਼ਿਵਜੀ ਤੋਂ ਉਹਨਾਂ ਦੀ ਲੜਾਈ ਹੈ ਉਹ ਕਹਿੰਦੇ ਨੇ ਵਿੱਚ ਹੈ ਸ਼ਿਵਜੀ ਦੇ ਨਾਲ ਚਾਹੇ ਦੇਵਤੇ ਨੇ ਦੋਏ ਪਰਮੇਸ਼ਰ ਦੇ ਬਣਾਏ ਨੇ ਆ ਗੱਲ ਹੈ ਅਸਲ ਦੇ ਵਿੱਚ ਜਿਹੜੀ ਚੱਲਦੀ ਹੈ ਆਮ ਆਦਮ ਨੂੰ ਆਉੜੀ ਲੱਗਦੀ ਉਹ ਇੱਕੋ ਹੀ ਗੱਲ ਫੇਰ ਬੜਬੜ ਕੇ ਹੀ ਜਾਂਦੇ ਕੋਈ ਗੱਲ ਬੜਬੜ ਕੇ ਹੀ ਜਾਂਦੇ ਬੜਾ ਭਾਰੀ ਝਗੜਾ ਹੈ ਸ੍ਰੀ ਪ੍ਰਾਨ ਅਰ ਵਿਸ਼ਨੂ ਪ੍ਰਾਨ ਦਾ ਉਹਨਾਂ ਝਗੜਾ ਲੋਕਾਂ ਦੇ ਦਿਮਾਗ 'ਚ ਫਸਿਆ ਹੋਇਆ ਹੈ ਨਾ ਸਾਡੇ ਤਾਂ ਹੈ ਨਹੀਂ ਸਿੱਖਾਂ ਦੇ ਅਸੀਂ ਕਿਹੜਾ ਪ੍ਰਾਣ ਸੁਣੇ ਨੇ ਜੀਹਾਨ ਨੇ ਉਦੋਂ ਸੁਣਿਆ ਹੈ ਤਾਂ ਖੜੇ ਤੇ ਨਾ ਇੱਥੇ ਉਹਨਾਂ ਦਾ ਰੰਗ ਰਹਿਨੇ ਰੰਗ ਹੈ ਸਾਨੂੰ ਆਇ ਲੱਗਦਾ ਵੀ ਉਹੀ ਗੱਲ ਕਹੀ ਜਾਂਦੇ ਨੇ ਕੀ ਮਤਲਬ ਹੈ ਇਹਦਾ ਸਾਡੇ ਤੋਂ ਰੰਗ ਹੈ ਨਹੀਂ ਚੜਿਆ ਹੋਇਆ ਹਾਂ ਜੇ ਤੁਹਾਡੇ ਨਾਲ ਕੋਈ ਚਰਚਾ ਕਰੂ ਬਾਹਰੋਂ ਸੇ ਪ੍ਰਾਣ ਵਾਲਾ ਬਿਸ਼ੂਰਾਨ ਵਾਲਾ ਫੇ ਤੁਹਾਡੇ ਹਥਿਆਰ ਦੇ ਫੇ ਸਾਡੇ ਕੋਲੇ ਹਥਿਆਰ ਦੇ ਜੇ ਕੋਈ ਕਹੇ ਵਿਸ਼ਨੂੰ ਦਾ ਅਵਤਾਰ ਸੀ ਜੀ ਦਸਮ ਪਾਸ਼ਾ ਤੋਂ ਇਹ ਕੋ ਨਾਨਕ ਦਾ ਵਿਸ਼ਨੂੰ ਦਾ ਅਵਤਾਰ ਸੀ ਫਿਰ ਅਸੀਂ ਕਹਿ ਸਕਦੇ ਹਾਂ ਬਿਲਕੁਲ ਗਲਤ ਹੈ ਵਿਸ਼ਨੂੰ ਤੋਂ ਖਲਾਫ ਹੈ ਜੇ ਕੋਈ ਬ੍ਰਹਮਾ ਦਾ ਅਵਤਾਰ ਕਹੇ ਨਾਨਕ ਗੁਰੂ ਬਿਲਕੁਲ ਗਲਤ ਹੈ ਆ ਦੇਖੋ ਅਲਗ ਰਹੇ ਉਹ ਐਗਨ ਐਸਲਤੇ ਉਹ ਆਪਣਾ ਰੰਗ ਚੜ੍ਹਣ ਦੀ ਕੋਸ਼ਿਸ਼ ਕਰਦੂ ਆਪਣੀ ਸਾਈਡ ਨੂੰ ਖਿੱਚਣ ਕੋਈ ਕਹੇ ਜੀ ਉਹ ਤਾਂ ਸ਼ਿਵਜੀ ਦਾ ਅਵਤਾਰ ਸੀ ਜਦੋਂ ਦੇ ਭਗਤਾਂ ਨਾਲੇ ਚਰਚਾ ਹੋਈ ਗੁਰੂ ਨਾਨਕ ਨੇ ਪੰਡਤ ਨੂੰ ਤਾਂ ਘਾਸੜੀ ਗੇਰੀ ਹੈ ਪੜਣਾ ਤਾਂ ਇਹ ਦੀ ਗੱਲ ਸੀ ਵਾਰ-ਵਾਰ ਕਰ ਬੁਰਖ ਝਗੜੇ ਵਾਲੀ ਉਹ ਗੱਲ ਹੈ ਜ਼ਿਆਦਾ ਤਾਂ ਹੋਈ ਉਹ ਦੀ ਗੱਲ ਫਿਰ ਅਸੀਂ ਕਹਾਂਗੇ ਨਾ ਇਹ ਵੀ ਗੱਲ ਗਲਤ ਹੈ ਸ਼ਿਵ ਜੀ ਦਾ ਵੀ ਉਤਾਰ ਨਹੀਂ ਉਹ ਕਿਸੇ ਦਾ ਵੀ ਅਵਤਾਰ ਨਹੀਂ ਸਮਝੇ ਦੀ ਸੰਸਾਰੀ ਅਵਤਾਰ ਨਹੀਂ ਹੈ ਕਿਸੇ ਦਾ ਇਹ ਉਤਾਰ ਉਹ ਨਰਸਿੰਘ ਦਾ ਉਤਾਰ ਹੋਇਆ ਰਿਹਾ ਆਦਮੀ ਸਰੀਰ ਆਦਮੀ ਦਾ ਆਤਮਾ ਸ਼ੇਰ ਦੀ ਦਰਬਾਹ ਹੋ ਕੇ ਗੱਲ ਕਰਦੇ ਸੀ ਜਿਹੜਾ ਦਰਬਾਹ ਹੋ ਕੇ ਗੱਲ ਕਰੇ ਨਰਸਿੰਘ ਦਾ ਹੈ ਆਦਮੀ ਗੱਲ ਕਰਨ ਦੀ ਦਲੇਰੀ ਸ਼ੇਰ ਵਾਲੀ ਹੈ ਤੇ ਸ਼ਿਵ ਜੀ ਦਾ ਨਬੀ ਸ਼ਰੂਧਰ ਦਾ ਦੇ ਵੀ ਤੇ ਬਤਨ ਦੀ ਪੈ ਤੋਂ ਬੁਖਤੋ ਕੇ ਜਿਹੜਾ ਗੱਲ ਕਰਦਾ ਉਹ ਸ਼ਿਵਜੀ ਦਾ ਅਵਤਾਰ ਨਹੀਂ ਐ ਨਾ ਪਿਛਲੂ ਦਾ ਅਵਤਾਰ ਹੈ ਸ਼ਿਵਜੀ ਦਾ ਅਵਤਾਰ ਹੋ ਗਿਆ ਸ਼ਿਵ ਤੇ ਡਰੂਗਾ ਸ਼ਿਵ ਦਾ ਅਵਤਾਰ ਹੁੰਦਾ ਸ਼ਿਵ ਤੋਂ ਦੂਏ ਨੂੰ ਤੇ ਹੋਊਗਾ ਅਵਤਾਰ ਦੂਏ ਨੂੰ ਪਰਦਾ ਹੁੰਦਾ ਸ਼ਿਵ ਤਾਂ ਹੋਇਆ ਉਹਦਾ ਅਵਤਾਰ ਹੁਣ ਉਹਦਾ ਚੇਲਾ ਹੁਣ ਉਹਦੇ ਵਾਲੀ ਗੱਲ ਹੈ ਕਹਿਣੀ ਉਹ ਵਾਲੀ ਗੱਲ ਨੂੰ ਸੱਚ ਬਣਾਉਣਾ ਆ ਕੇ ਉਹ ਅਵਤਾਰ ਹੁੰਦਾ ਇਹ ਇਹਦਰ ਸਿੱਧਾ ਅਵਤਾਰ ਹੈ ਸਿੰਘ ਤਾਂ ਹੀ ਲਾਇਆ ਨਾਲ ਤਸਮ ਪਾਸ਼ਾਨ ਉਹ ਧਾਰੇ ਆਦਮੀ ਹੈ ਗੱਲ ਕਰਦਾ ਜੱਗੜੇ ਡਰ ਪੈ ਹੋ ਕੇ ਗੱਲ ਕਰਦਾ ਸੱਚ ਦੀ ਸੱਚ ਬਗਾਇ ਡਰ ਹੋਏ ਤੇ ਬੋਲਦਾ ਨਹੀਂ ਜਸੂਰ ਰਹਿਦ ਕੇ ਜਿਹਦੀ ਸੱਚ ਗੱਲ ਤਰਫਦਾਰੀ ਕਿਸੇ ਦੀ ਸੱਚ ਘਣਾ ਇਮਾਨਦਾਰੀ ਨਾਲ ਕਹਿਣਾ ਸੱਚ ਹਾਂ ਗਲਤੀ ਲੱਗ ਸਕਦੀ ਐ ਉਹ ਕੋਈ ਗੱਲ ਕੱਚੀ ਨਿਕਲ ਸਕਦੀ ਐ ਕਿਸੇ ਵੇਲੇ ਭਲੇਖੇ ਨਾਲ ਉਹਨੂੰ ਕਹੇ ਬਾਹਰੋਂ ਬੁੱਲ ਚੋਕ ਬੋਲ ਦੇ ਵੀ ਘਰੇ ਖਰੇ ਹਰਪਣ ਕੋਈ ਬੋਲਣ ਲੱਗਿਆ ਸੀ ਕੁਝ ਕਹਿਤਾ ਕੁਛ ਨਿਕਲਿਆ ਕੁਛ ਉਹ ਬਾਹਰੋਂ ਬੁੱਲ ਚੋਕ ਬੋਲਿਓ ਕਹਿੰਦੇ ਮੈਂ ਮੇਰਾ ਕਹਿਣਾ ਤਾਂ ਆ ਮਤਲਬ ਸੀ ਗਾਦੀ ਸੀ ਉਹ ਤਾਂ ਗੱਲ ਨਿਕਲ ਗਈ ਆ ਤੇ ਵੀ ਜबान ਸਿਰ ਪਕੜ ਜਾਂਦੀ ਔਰ ਉਹ ਬਾਹਰੋਂ ਬੁੱਲ ਚੋਕ ਬੋਲ ਬੂਦੇ ਬਿਜੇ ਜਿਵਾਨ ਸਿਰਪਖਰੀ ਅੰਦਰ ਉਹ ਨਹੀਂ ਸੋਇਆ ਅੰਦਰ ਉਹ ਭਾਵਨਾ ਗੱਲ ਕਰਨ ਦੀ ਨਹੀਂ ਸੀ ਮਣੀ ਮਾਨਕ ਮੋਤੀ ਲਾਲ ਸੁੱਚੇ ਆ ਉਹ ਕੌਲ ਨੇ ਬੜੀ ਬਾਣਕ ਮੋਤੀ ਲਾਲ ਜੇ ਮਨ ਬੋਤੀ ਹੈ ਮਨ ਮਾਨ ਕਹ ਤਾ ਉਹ ਚਿਤ ਲਾਲ ਹੈ ਫਿਰ ਸੁੱਚੇ ਨੇ ਧੋਏ ਸੁੱਚੇ ਜੋ ਰਹੀ ਰਹੀ ਅਨ ਪੰਜ ਪ੍ਰਵਾਹ ਅਨ ਬਸ ਪੈਰਾਂ ਅਨ ਪੰਜ ਪ੍ਰਵਾਹ ਹੁੰਦੇ ਜਦੋਂ ਮਨ ਬਾਣ ਖੋਜਵੇਂ ਨਾ ਸੱਚਾ ਹੋ ਜਵੇਂ ਮੋਤੀ ਅਰਚਿਤ ਹੋਵੇ ਲਾਲ ਮੇਰੇ ਲਾਲ ਜੀਓ ਤੇਰਾ ਅੰਤ ਜਣ ਫਿਰ ਉਹਨਾਂ ਦੀ ਪ੍ਰਵਾਹ ਜਿਹੜੀ ਅਨ ਹੋ ਜਾਂਦੀ ਹੈ ਫਿਰ ਉਹਨਾਂ ਦੀ ਜਿਹੜੀ ਹੈ ਨਾ ਗਿਆਨ ਉਹ ਤੇ ਪ੍ਰਵਾਹ ਨਹੀਂ ਕਿਸੇ ਦਾ ਪੈਂਦਾ ਕਿਸੇ ਵੀ ਗ੍ਰੰਥ ਦਾ ਪ੍ਰਵਾਹ ਪੈਂਦਾ ਹੀ ਨਹੀਂ ਸੰਸਾਰੀ ਬੁੱਧੀ ਦੇ ਉੱਤੇ ਪ੍ਰਵਾਹ ਪੈਂਦਾ ਹੀ ਨਹੀਂ ਸੰਸਾਰੀ ਦੇਵੀ ਦੇਵਤਿਆਂ ਦਾ ਪ੍ਰਵਾਹ ਉੱਤੇ ਪੈਂਦਾ ਹੀ ਨਹੀਂ ਆਨ ਗੰਜ ਭ੍ਰਤੰ ਉਹਦੀ ਵਰਤੀ ਹੁੰਦੀ ਹੈ ਵਰਤੀ ਜਿਹੜੀ ਐਡ ਹੋਲ ਹੋ ਜਾਂਦੀ ਹੈ ਨਾ ਅਨ ਗੰਜ ਗੰਜ ਤੋੜਨ ਵਾਲੀ ਨਹੀਂ ਰਹਿੰਦੀ ਵਰਤੀ ਨੂੰ ਕੋਈ ਤੋੜ ਨਹੀਂ ਸਕਦਾ ਤੋੜ ਦਿੰਦੀ ਹੈ ਸਹਿਬ ਦੀ ਵਰਤੀ ਕਿਉਂ ਨਹੀਂ ਟੁੱਟੀ ਬਦਤਵਤ ਭੈ ਮੌਤ ਦਾ ਹੋਰ ਕਹ ਲਓ ਘਰ ਤਾਂ ਪਹਿਲਾਂ ਹੀ ਛੱਡਿਆ ਸੀ ਉਹ ਘਰਬਾਰ ਤਾਂ ਪਹਿਲਾਂ ਹੀ ਛੱਡਿਆ ਸੀ ਆ ਕਿਨਾਂ ਕੀ ਮਾਇਆ ਦੀ ਖਚਰ ਉਹ ਪਹਿਲੇ ਜਿਹੇ 30 ਰੁਪਏ ਤੂੰ ਮਾਇਆ ਦੇ ਖਾਤੇ ਤੋ ਹੀ ਰੱਖ ਲੈਦਾ ਇੱਥੇ ਆ ਕੇ ਕੀ ਰਹਿ ਗਿਆ ਸੀ ਇੱਥੇ ਆ ਰਹਿ ਗਿਆ ਸੀ ਅਸੂਲ ਔਰ ਸ਼ਰੀਰ ਅਸੂਲ ਔਰ ਸ਼ਰੀਰ ਰਹਿ ਗਿਆ ਸੀ ਫਤਿਹਗੰਡ ਤਾਂ ਹੋਰ ਕੀ ਰਹਿ ਗਿਆ ਸੀ ਇੱਕ ਬ੍ਰਤੀ ਇੱਕ ਸ਼ਰੀਰ ਬ੍ਰਤੀ ਰੱਖਣੀ ਐ ਔਰ ਉਹ ਕਿਸ਼ੀ ਰੱਖਣਾ ਕੋਚਰ ਬਾਤ ਹੈ ਬਸ ਵਾਲ ਇੱਥੇ ਖੜਾ ਸੀ ਲਾਈਨ ਰੱਖਣੀ ਹੈ ਸੱਚ ਆਲੀਆ ਸ਼ਰੀਰ ਬਚਾਉਣਾ ਝੂਠ ਵਾਲਾ ਸ਼ਰੀਰ ਜਿਹੜਾ ਨਾਂ ਰਹਿਣ ਵਾਲਾ ਥੋੜੇ ਦਿਨ ਵਾਸਤੇ ਪਤਾ ਨਹੀਂ ਦੂਆ ਸਾਹ ਹੋਣਾ ਇੱਕਤੀ ਆਉਣਾ ਨਹੀਂ ਹੋਣਾ ਇਹ ਰੱਖਣਾ ਹੈ ਤਾਂ ਸੱਚ ਰੱਖਣਾ ਹੈ ਕਦੇ ਸੱਚ ਰੱਖਣੇ ਦੀ ਲੋੜ ਨਹੀਂ ਵਸੇ ਥੀ ਬਦਲਾ ਸੀ ਔਰ ਪੈਸਾ ਖੜੀ ਗੱਲ ਤੇ ਖੜਾ ਸੀ ਕੌਡੀ ਚਾਹੀਦੀ ਹੈ ਹੀਰਾ ਚਾਹੀਦਾ ਹੀਰਾ ਚਾਹੀਦਾ ਕੌਡੀ ਚਾਹੀਦੀ ਹੈ ਜਿਹੜੇ ਦੀ ਜਿਹਨੂੰ ਪਛਾਣਨਾ ਹੀ ਰਿਹਾ ਕਦੋਂ ਛੱਡਦਾ ਕੌਡੀ ਬਦਲੇ ਉਹ ਜਿਹਨੂੰ ਨਹੀਂ ਪਛਾਣਨ ਲੋ ਚਾਹੇ ਛੱਡੇ ਜਿਹਨੂੰ ਪਛਾਣਨਾ ਕੋਦੋਂ ਛੱਡਦਾ ਉਹਨੂੰ ਪਛਾਣ ਸੀਗੀ ਉਹਨਾਂ ਦਾ ਫੈਸਲਾ ਤਾਂ ਫਿਰ ਉਹੀ ਹੋਣਾ ਸੀ ਜਿਹਨੂੰ ਪਛਾਣਨਾ ਉਹਦਾ ਫੈਸਲਾ ਉਹੀ ਹੋਣਾ ਜੀ ਹੋਰ ਜੈ ਪਾਰ ਪੂਰੀਆਂ ਮੱਤਵਾਲੇ ਵੀ ਜਿਹਨੂੰ ਇਹ ਕਹਿੰਦੇ ਨੇ ਵੀ ਇਹਦਾ ਪਾਰ ਨਹੀਂ ਪਾਇਆ ਜਾ ਸਕਦਾ ਪਹਿਲਾ ਕਿਨਾਰਾ ਨਹੀਂ ਦੀਦਾ ਇਹਦਾ ਕਦੋਂ ਇਹਨੇ ਵਰਨਾ ਜੋਤਨ 14 ਪੱਲਾ ਪਸਾ ਬਤੁਬ ਹੁਣ ਰਵੇ ਇਹੀ ਕੇ ਪੂਰੀ ਮੱਤਵਾਲੇ ਨੇ ਵੀ ਇਹੀ ਕੇ ਅਧੂਰੇ ਮੱਤਾਲਿਆਂ ਨੇ ਸੁਣੀ ਸੁਣਾਈ ਗੱਲ ਕਹੀ ਉਹਨਾਂ ਦੀ ਅਧੂਰੀ ਮੱਤਾਲਿਆਂ ਨੇ ਦੇਖ ਕੇ ਨਹੀਂ ਕੁਝ ਕਿਹਾ ਸੋੜੇ ਸੁਣਾਇਆ ਕਹਤੇ ਆ ਸੁਣੀ ਇਹ ਸੁਣਦੇ ਆ ਨਾ ਲੋਕਾ ਹੋ ਜਾਂ ਦੂਜੇ ਬਤਾਂਣਾਂ ਤੇ ਕਹਿੰਦੇ ਨੇ ਆਤਮਾ ਅਵਰ ਸਾਰੇ ਕਹਿੰਦੇ ਨੇ ਉਹ ਸੁਣੇ ਸੁਣਾਈ ਗੱਲ ਕਹੀ ਜਾਂਦੇ ਸਾਰੇ ਦੇਖਿਆ ਨਾ ਨੇ ਜੇ ਦੇਖਿਆ ਦਰਸ਼ਨ ਗਰਾਊਂਡ ਨਾਲ ਕੋ ਗਰਮਕਾ ਤੇ ਖਾਏ ਦੇਖੀ ਦੀ ਗੱਲ ਕਰੋ ਸੁਣੇ ਦੀ ਗੱਲ ਨਾ ਕਰੋ ਗੁਰਬਾਨੀ ਕੀ ਸੋ ਬੋਲਣਾ ਜੋ ਪੇਖੇ ਅੱਖੀ ਫਰਕ ਉਹ ਐ ਜਿਹੜਾ ਅੱਖੀ ਦੇਖ ਕੇ ਗੱਲ ਕਰੇ ਅੱਖੀ ਦੇਖੂਗਾ ਫਰਕ ਪਾਊਗਾ ਉਹ ਸਮੇਂ ਗੱਲ ਹੋਰ ਸੀ ਅੱਜ ਸਮੇਂ ਗੱਲ ਹੋਰ ਹੈ ਗੱਲ ਨੂੰ ਹੁਣ ਦੇ ਸੰਦਰਭ ਦੇ ਵਿਚਾਰ ਥਾ ਕੇ ਦਿਖਾਵੇ ਅੱਜ ਦੇ ਸੰਦਰਭ ਵਿੱਚ ਪ੍ਰਮਾਣ ਦੇ ਦਵੇ ਉਹ ਦਿੱਤੇ ਹੋਏ ਨੇ ਉਹ ਉਦੋਂ ਸੀ ਉਹਨਾਂ ਨੂੰ ਦੀਂਦੇ ਕੀ ਦੀਦਾ ਅੱਜ ਉਹਨੋਂ ਕੁਝ ਹੋਰ ਦਿੰਦਾ ਸੀ ਸਵੇਰ ਨੂੰ ਕੁਝ ਹੋਰ ਦਿੰਦਾ ਦੁਪਹਿਰ ਨੂੰ ਕੁਝ ਹੋਰ ਦਿੰਦਾ ਸ਼ਾਮ ਨੂੰ ਕੁਝ ਹੋਰ ਦਿੰਦਾ ਦੂਏ ਦਿਨ ਕੋਈ ਹੋਰ ਦੇਖਣਾ ਅੱਜ ਦੇਖ ਤੈਨੂੰ ਕੀ ਦਿੰਦਾ ਉਹ ਦੱਸ ਅਨਖੰਡ ਸਰੂਪ ਅਡੰਡ ਪ੍ਰਭਾ ਅਨਖੰਡ ਸਰੂਪ ਸਰੂਪ ਗਿਆਨ ਖੰਡ ਹੈ ਖੰਡਾ ਨਹੀਂ ਕੀਤਾ ਜਾ ਸਕਦਾ ਪੈ ਨਾਲ ਖੰਡਾ ਨਹੀਂ ਹੋ ਸਕਦਾ ਹੈ ਜਬਾਨ ਨਹੀਂ ਤਲ ਤਲਮਲਉ ਦੀ ਬਹੁਤ ਦਾ ਫੇਸ ਕਰਕੇ ਵੀ ਜਵਾਨ ਉਹੀ ਹੈ ਜੋ ਪਹਿਲਾਂ ਜਲਦੀ ਸੀ ਜਲਦੀ ਸੀ ਨਾ ਤਰੋ ਦੀ ਪੱਲਾਦੀ ਉਹ ਵੀ ਜਲਦੀ ਸੀ ਸਾਹਿਬ ਜਾਨਦਾ ਸੀ ਉਹ ਵੀ ਜਲਦੀ ਸੀ ਕੋਈ ਪ੍ਰਭਾਵ ਨਹੀਂ ਉਹਦੇ ਤੇ ਹਾਂ ਪ੍ਰਭਾ ਪ੍ਰਭਾ ਅੰਡਣੇ ਜੇ ਦੀ ਜੋਤ ਹੈ ਉਹ ਕੋਈ ਅਫੈਕਟ ਨਹੀਂ ਹੋਇਆ ਯਾਰ ਬਦਬਲੀ ਹੋਈ ਜੋਤ ਪਰੇਸ਼ਾਨ ਜੀ ਨਹੀਂ ਆਇਆ ਪਰੇਸ਼ਾਨ ਜੀ ਆ ਜਾਣਾ ਹਾਂ ਡਾਲਣ ਦਾ ਪ੍ਰਭਾ ਪ੍ਰੈਸ਼ਰ ਜਾ ਜਾਣਾ ਪ੍ਰੈਸ਼ਰਾਈਜ਼ ਨਹੀਂ ਹੋ ਸਕੇ ਬਿਲਕੁਲ ਵੀ ਸਾਹਿਬ ਜਾਦੇ ਚਲੋ ਬੜਿਆ ਨੇ ਤਾਂ ਕੀ ਹੋਣਾ ਇਹ ਵੀ ਨਹੀਂ ਹੋਏ ਕੋਣੇ ਕੋਣ ਤਾਂ ਫੌਜਾਂ ਸੀ ਘੋੜੇ ਤੇ ਹਥਿਆਰ ਤੇ ਲੜਦੇ ਤੇ ਇਹਨਾਂ ਕੋਣ ਤਾਂ ਕੁਝ ਹੋਣੀ ਨਹੀਂ ਹੋਏ ਪ੍ਰੈਸ਼ਰਾਈਜ਼ ਨਹੀਂ ਹੋ ਸਕਦੇ ਖੋਪਰੀਆਂ ਹਾਲੀਆਂ ਪ੍ਰੈਸ਼ਰਾਈਜ਼ ਨਹੀਂ ਹੋਏ ਵਨ ਵਨ ਕਟਾਲੇ ਪ੍ਰੈਸ਼ਰਾਈਜ਼ ਨਹੀਂ ਹੋਇਆ ਕੋਈ ਵੀ ਉਹ ਅਨੰਦ ਪ੍ਰਭ ਜੈ ਜੰਪਤ ਬੇਦਪੁਰਾਣ ਸਭਾ ਸਾਰੇ ਜਪਦੇ ਨੇ ਬੇਦਪੁਰਾਣ ਜੈ ਜੈਕਾਰ ਕਰਦੇ ਨੇ ਉਹ ਬੇਦਪੁਰਾਣ ਜਿਹੜੇ ਜਪਦੇ ਨੇ ਨਾ ਪ੍ਰੋਲ ਉਹ ਥੁੜੀ ਸੁਣਾਈ ਜਪਦੇ ਨੇ ਸੁਣੀ ਸੁਣੀ ਸੁਣਾਈ ਗੱਲ ਕਹੀ ਜਾਂਦਾ ਨੇ ਜਪਰ ਇਹ ਜੋ ਸਭ ਦੀ ਕੋਸ਼ਿਸ਼ ਕਰ ਰਹੇ ਨੇ ਜੰਪਤ ਜੈ ਜੰਪਤ ਵੇਦ ਪ੍ਰਾਨ ਸਮਾ ਉਹ ਵੀ ਜੈ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਵਿੱਚ ਬੰਦਦੇ ਨੇ ਉਹ ਸੁਪਰੀਮ ਸੁਪਰੀਮ ਪਾਵਰ ਵਾਲੇ ਜੈ ਜੈਕਾਰ ਉਹ ਵੀ ਕਰ ਦੋ ਸੁਣੀ ਸੁਣਾਈ ਹੋਈ ਗੱਲ ਦੀ ਜੈ ਕਤੇਬ ਅਨੰਤ ਕਹ ਹਾਂ ਜੀ ਵੇਦ ਔਰ ਕਤੇਬ ਨੇ ਜਿਹਨੂੰ ਅਨੰਤ ਕਿਹਾ ਵੀ ਉਹ ਅੰਤ ਕਦੇ ਨਹੀਂ ਹੈ ਵਰਦਾ ਹੀ ਨਹੀਂ ਆਨੰਦ ਦਾ ਉਹਨੇ ਵਰਦਾ ਹੀ ਨਹੀਂ ਹੈ ਸੁੱਤ ਸਿੰਧ ਅਦੋ ਮੁਖ ਤਾਪ ਮੁਖ ਤਾਪ ਤਪੈ ਤਾਪ ਤਪੈ ਸਿੰਧ ਅਦੋ ਮੁਖ ਸੁੱਤ ਸਿੰਧ ਸੁੱਤ ਸਿੰਧ ਅਦੋ ਮੁਖ ਤਾਪ ਤਪੈ ਤਾਪ ਤਪੈ ਜੀ ਜੀ ਤਪਸਿਆ ਕਰ ਰਹੇ ਚੰਦਰਮਾ ਸੁੱਤ ਸਿੰਧ ਨੂੰ ਚੰਦਰਮੇ ਨੂੰ ਕਾਇਉਂਦੇ ਰਹੇ ਅਸਲ ਦੇ ਵਿੱਚ ਸਿੱਧ ਸਾਗਰ ਰੁਕਾਇ ਦਿੰਦ ਸੂਰਜ ਵੀ ਕਰਦਾ ਤੇ ਜਿਹੜਾ ਸੁਖ ਸਾਗਰ ਹੈ ਨਾ ਇਹਦਾ ਨਾ ਇੱਕ ਸੁਖ ਸਾਗਰ ਵੀ ਹੈ ਬ੍ਰਹਮ ਗਿਆਨ ਦਾ ਨੋ ਸੁਖ ਸਾਗਰ ਕਹੈ ਨਾ ਪਪ ਸਾਗਰ ਸੁਖ ਸਾਗਰ ਹੋਇ ਇਹ ਤੋਂ ਪੈਦਾ ਕੀ ਹੁੰਦਾ ਜਿਤਨੇ ਵਲਣਾ ਸੁਖ ਸਾਗਰ ਤਾਂ ਨਾ ਸਤਗੁਰ ਨੇ ਬਣ ਉਹਦਾ ਸੁੱਤ ਹੁੰਦਾ ਚੰਦਰਮੋਦ ਮਨ ਚੰਦਰਮਾ ਸੂਰਜ ਤੋਂ ਰੋਸ਼ਨੀ ਲੈਂਦਾ ਨਾ ਜਿਹੜਾ ਇਹ ਤਾਂ ਰੋਸ਼ਨੀ ਲੈਣ ਵਾਲਾ ਸੁੱਤ ਉਹ ਸੋਤ ਸਿੰਧ ਅਦੋ ਮੁਖਤਾਪ ਤਪੈ ਅਦੋ ਮੁਖਤਾਪ ਤੈ ਇਹ ਜਿਹੜੇ ਭਗਤੀ ਕਰਨ ਵਾਲੇ ਲੋਕ ਨੇ ਨਾ ਇਬਾਦਤਾਰੀ ਲੋਣ ਸ਼ਾਂਤਮਈ ਤਰੀਕੇ ਨਾਲ ਇਹ ਚੰਦਰਮੇ ਦਾ ਅਵਤਾਰ ਨੇ ਕੋਈ 14 ਕਲਾ ਕੋਈ 12 ਕਲਾ ਕਹਿੰਦੇ ਨੇ ਸਪੂਰ ਉਹ ਚੰਦਰਮੇ ਨਾਮ ਲਈ ਹੁੰਦੀ ਹੈ ਇਹ ਕਲਾ ਜਿਹੜੇ ਲੋਕ ਸ਼ਾਂਤੀ ਨਾਲ ਭਗਤੀ ਕਰਨ ਵਾਲੇ ਨੇ ਜੋ ਪਹੁੰਚੇ ਨਹੀਂ ਕਿਤੇ ਉਹ ਉਹ ਸੰਸਾਰੀ ਨੇ ਜੋ ਜੀਵ ਸਭ ਜਿਹੜੇ ਰਹੇ ਜਿਹਦੇ ਸਿੱਖ ਲੈ ਜਿਹਦੇ ਇਹ ਚੰਦਰਵੇਂ ਦਾ ਸਰੂਪ ਹੈ ਜਿਹਦੀ ਕਿਸੇ ਨੇ ਰੋਸ਼ਨੀ ਪ੍ਰਾਪਤ ਕਰ ਲਈ ਉਹਦੀ ਉਹ ਸ਼ਾਂਤੀ ਉਹਦੇ ਉੱਤੇ ਹੈ ਸੂਰਜ ਦੀ ਗਰਮੀ ਹੋ ਜਾਂਦੀ ਹੁੰਦੀ ਹੈ ਸੂਰ ਚਾਹੇ ਛਾਉਂਦਾ ਹੋਵੇ ਗਰਮੀ ਹੁੰਦੀ ਉਹ ਚਿੱਤ ਜਿਹੜੇ ਤਾਪ ਚ ਤਾਪ ਚ ਗਰਮੀ ਹੈ ਨਾ ਜਿਹੜੇ ਗਾਂਹ ਚ ਗਰਮੀ ਹੈ ਉਹ ਕਰ ਉਹ ਜਿਹੜਾ ਗਾਂ ਠੰਡਾ ਉਹ ਗੱਲ صحیح ਆਪਣੇ ਆਪ ਨੂੰ <div> ਬਣ ਕੇ ਚੱਲੇ <div> ਬਣ ਕੇ ਚੱਲਣਾ ਨਿਵੇਸਾ ਕੋਰਾ ਹੋਇਆ ਨਾ ਉਹਦੇ ਨਾਲ ਸ਼ਾਂਤੀ ਮਿਲਦੀ ਹੈ ਜਿਹੜਾ ਗਿਆਨ ਦੇ ਨਾਲ ਹੰਕਾਰ ਹੋਈ ਜਾਵੇ ਉਹਦੇ ਨਾਲ ਹੋਵੇ ਵੱਧਦੀ ਹੈ ਮੈਂ ਵੱਧਦੀ ਹੈ ਉਹ ਕਾਲੇ ਬਗਾਨੇ ਦੀ ਅਭਿਵਦੀ ਹੁੰਦੀ ਔਰ ਕੀ ਸੀ ਕਦੇ ਜਿਹੜਾ ਗੱਲ ਵੀ ਕਰਦਾ ਉਹਦਾ ਗਾਲਾ ਕੱਢਣਾ ਹੀ ਜਾਂਦਾ ਸੀ ਉਹਨੂੰ ਲੋਡੀ ਗੱਲ ਕੱਟਣ ਕੱਟਣ ਵਾਲੀ ਉਹਦੇ ਕੋਲ ਥਾ ਬਿਜਾਰੇ ਕੋ ਕੀ ਹੈ ਕੀ ਉਹਦੇ ਕੋ ਕੋਸ਼ੂ ਨਹੀਂ ਉਹਦਾ ਉਹਨੂੰ ਪਤਾ ਨਹੀਂ ਕਿਵੇਂ ਗੱਦੜ ਉਹ ਕਾਗੇ ਥਾ ਗਿਆ ਗੱਦੜ ਕਹਿੰਦਾ ਮੈਨੂੰ ਕਾਗੇ ਹੋਈ ਪਿੰਡ ਦੀ ਉਹਦਾ ਉਹ ਕੀਤਾ ਉਹ ਬਾਰਾਂ ਸਾਲ ਕਹਿੰਦਾ ਮੈਂ ਪੜਦਾ ਮੈਨੂੰ ਉਹ ਬਾਰਾਂ ਸਾਲ ਤੈਨੂੰ ਕੀ ਪਤਾ ਲੱਗ ਜੂ ਸਾਰੀ ਜ਼ਿੰਦਗੀ ਜਿਗੜੀ ਬੰਦਿਆਂ ਦੀ ਪੜਦੇ ਹਦੀ ਪਤਾ ਨਹੀਂ ਲੱਗਿਆ ਉਹਨੂੰ ਕੁਛ ਵੀ ਨਾਲੇ ਜਿਹੜਾ ਤੈਡੀ ਕਾ ਬੜੇ ਉਹਦਾ ਠੀਕਾ ਕਾਰ ਡੋਣੀ ਪਤਾ ਲੱਗਿਆ ਕਾ ਕਸੇ ਦਾ ਸਾਹ ਸਾਨੂੰ ਖੁਦ ਨਹੀਂ ਪਤਾ ਕੀ ਗੱਲ ਹੈ ਪਹਿਲੀ ਗੱਲ ਤਾਂ ਸਾਹ ਸਾਨੂੰ ਲਖਲੇ ਕੀਤੀ ਹੈ ਠੀਕਾ ਕੀਤਾ ਜੀ ਸਾਹ ਸਾਨੂੰ ਨੇ ਠੀਕਾ ਕੇ ਮੈਨੂੰ ਕੋਈ ਸਬਦ ਕਰ ਦਵੇ ਵੀ ਇਹਦੇ ਬੁਰਖਿਆ ਦੀ ਕੋਈ ਗੱਲ ਹੈ ਸਾਹ ਨੂੰ ਤਾਂ ਠੀਕਾ ਹੀ ਸਾਰਾ ਇਸ ਤੋਂ ਪਤਾ ਠੀਕਾ ਹੀ ਕਰ ਮਤੋਂ ਖਿਲਾਫ ਹੈ ਸਾਰੇ ਉਹ ਕਹਿੰਦਾ ਮੈਨੂੰ ਪਤਾ ਲੱਗਿਆ ਬੜਾ ਝੂਠਾ ਸੀ ਅਦੋਂ ਸਾਜਸ ਜੀ ਸਾਜਦੇ ਦੀਨ ਕਰ ਰਿਹਾ ਸੀ ਉਹ ਕੁਝ ਸਭ ਕੁਝ ਕਈ ਕਲਪਨ ਲੋ ਤਪਤਾਪ ਕਰਾਂ ਕੋਈ ਕਲਪਨ ਲੋ ਤਪਤਾਪ ਕਰਾਂ ਤਪਤਾਪ ਕਰਾਂ ਕਲਪਨ ਹੁੰਦਾ ਕੋਈ ਹਜ਼ਾਰ ਕਰੋੜ ਵਰਸਦਾ ਇੱਕ ਦਿਨ ਹੁੰਦਾ ਕਹਿੰਦੇ ਪ੍ਰਭੂ ਦਾ ਉਰਕਾਲਪ ਕਾਇਨਦਨ ਉਰਕਾਲਪ ਕਾਇਨਦਨ ਸ਼ਾਇਦ 240 ਹਜ਼ਾਰ ਕਰੋੜ ਹੈ ਸਾਲ ਦਾ ਇੱਕ ਤਿਰ ਉਰਕਾਲਪ ਕਾਇਨਦਨ ਕਈ ਕਾਲਪਾਂ ਦਾ ਕਨੇ ਤਾ ਹਫਤਾਫ ਕਰਦੇ ਰਹੇ ਲਾਲੋ ਸਾਹਿਬ ਗਣਤੀ ਤੋਂ ਪਰੇ ਪ੍ਰਬੰਧਿਤ ਦੰਤਾ ਮਤਰਾ ਜਿੰਨਾ ਚਿਰ ਜਿੰਨਾ ਚਿਰ ਜ਼ਿੰਦਗੀ ਦੇ ਵਿੱਚ ਸਾਰਾ ਜਿੰਨਾ ਅਸੀਂ ਚੱਲ ਗਏ ਨੇ ਨਾ ਚੱਲੂ ਜਿੱਦੇ ਚੱਲ ਬਲੇ ਨੇ ਜਦੋਂ ਦੀ ਵੀ ਸ੍ਰੀ ਸਾਚੀ ਹੈ ਇੱਕ ਰਾਤ ਹੈ ਜਦੋਂ ਤੋਂ ਰਾਮ ਗਰਭ ਚਾਇਆ ਇਹਦੇ ਵਾਸਤੇ ਇੱਕ ਰਾਤ ਹੈ ਇਹ ਰਾਤ ਹੈ ਸੁਤਿਆ ਰਹਿਣ ਵਿਹਾੜੀ ਹਰ ਜੀਵਨ ਰਾਤ ਚ ਲੁਕ ਜੇ ਤੁ ਜਮਾਹਤ ਰਾਦਰ ਜਿਹਨਾਂ ਹੈ ਤਾਂ ਰਾਤ ਇਹ ਐ ਰਾਤ ਉਹ ਵੀ ਹੁੰਦੀ ਹੁੰਦੀ ਕਈ ਕਲਪਨ ਨੂੰ ਤਪਤਾਪ ਕਰ ਕਈ ਕਲਪਨ ਨੂੰ ਤਪਤਾਪ ਕਰ ਜਿਹੜੇ ਇਤਕੀ ਜਗਗੇ ਅਗਲੇ ਜਦ ਬਾਦ ਸ੍ਰਿਸ਼ਟੀ ਪੈਦਾ ਹੋਊ ਜਾਗਣਾ ਫੇਰ ਵੀ ਉਹਨਾਂ ਨੇ ਕਈ ਅਜ਼ਲ ਕੋਈ ਜਾਗ ਪੇ ਸਹਿਜ ਅਵਸਥਾ ਚ ਹੋ ਹੋਏ ਦੀ ਤੇ ਸੋਦਾ ਸਵਾਲ ਲਗਾਉਂਦਾ ਸੀ ਨਾ ਜਿਹੜੇ ਜਾਗ ਪੇ ਉਹ ਤੇ ਜਾਗ ਪੇ ਦੋਇਆ ਨੂੰ ਜਗਾਉਣ ਲੱਗੇ ਨੇ ਆਹ ਲੈ ਚਲੋ ਤਾਰਾ ਜੀ ਜਿਹੜੇ ਜਾਗ ਬਣਗੇ ਜਾਗ ਬਣਗੇ ਜੇ ਫਿਰ ਸੋਣ ਸੁਬਾਤ ਹੋ ਗਏ ਫਿਰ ਗਾਹ ਨੂੰ ਸ਼ੁਰੂ ਹੋਊਗਾ ਕਬ ਐਸਰੀ ਕਰਨ ਕਈ ਕਲਪੜਸੂ ਕੈਦੜੇ ਕਈਆਂ ਨੇ ਜਾਗੜਾਈ ਨਹੀਂ ਹੈ ਦੁਬਾਰਾ ਸੋਣ ਸੁਬਾਤ ਦੁਬਾਰਾ ਸਾਰਾ ਦਿਨ ਸੁੱਤੇ ਰਹਿਣ ਦਿਨ ਸੱਜ ਖਾਣ ਵਾਸਤੇ ਦਿਨ ਦਿਨ ਹੋ ਗਿਆ ਇਹਨਾਂ ਵਾਂ ਤੇ ਰਾਤ ਹੋ ਗਈ ਉਹ ਦਿਨਾਂ ਵਾਲੇ ਜਗਾ ਰਹੇ ਨੇ ਜਿਨ੍ਹਾਂ ਦੇ ਅੰਦਰ ਰਾਤ ਤੇ ਸੁੱਤੇ ਸਾਰਾ ਜਾਗੇ ਦੀ ਤਪ ਕਰਦੇ ਨੇ ਜਰੂਰ ਜਾਗੇ ਹੈ ਦੀ ਤਪ ਤਪ ਕਰਦੇ ਨੇ ਜਾਗੇ ਹੈ ਦੀ ਭੜਾ ਜਾਂਦੇ ਨੇ ਹੈ ਦੀ ਸਮੱਧੀ ਲਾਈ ਜਾਂਦੇ ਨੇ ਜਾਗੇ ਹੈ ਦੀ ਬਾਕੀ ਜੁਨੀਆ ਚ ਆਦਮੀ ਨੂੰ ਛੱਡ ਕੇ ਬਾਕੀ ਜੁਨੀਆ ਸਭ ਜਾ ਕੇ ਰਹਿ ਨੇ ਦੋ। ਜਾਗਰਦੀ ਬਾਲੂ ਜਾ ਰਹੇ ਨੇ। ਜਿਹੜੇ ਜਾਗੇ ਹੈ ਜਿਹੇ ਫੇਰ ਕਿਤੇ ਸੁਬਾ ਹੋ ਗਿਆ ਨਾ ਉਹ ਸੁਬਾ ਆ ਗਿਆ। ਵਾਹ ਪਰਲੇ ਦਾ। ਫੇਰ ਤਾਂ ਕਿਸੇ ਨੇ ਵੀ ਜਾਗਣਾ ਸਾਰ ਨਹੀਂ ਸੋਚ ਲਿਆ ਤਾਂ ਅਨੰਤ ਜੀ ਨੇ ਡਿਸਟਰਬ ਵੀ ਕਰ ਲੋ ਕੇ ਸਨ। ਫੇਰ ਕੋਈ ਡਿਸਟਰਬ ਕਰਦਾ। ਫੇਰ ਹੀ ਕਿਸੇ ਨੇ ਸਵੇਰੇ ਉੱਠ ਕੇ ਸਪੀਕਰ ਵਜਾਉਣੇ ਵੀ ਜਾਗੋ। ਫੇਰ ਅਨੰਤ ਜੀ ਰਹਣਗੇ ਉਲਾ ਚਰ ਹੋਰ। ਅਗਲੀ ਰਵੇ ਰੁੱਟ ਕੇ ਕੰਮਤ ਕਮ ਇਹਨਾਂ ਨੇ ਜ਼ਰੂਰ ਉੱਠਣਾ ਕਿ ਹੋ ਜਾਗੂਪੇ ਤਾਂ ਇਹ ਨਹੀਂ ਜਾਗਦੇ ਨਾ ਜੋ ਕੋਈ ਜਾਗਦਾ ਉਹਨਾਂ ਚ ਸੁੱਤੇ ਹੋਰ ਰਹਿ ਜਣਾ ਲਾ ਗੱਲ ਹੈ ਇਹਨਾਂ ਚੋ ਨਹੀਂ ਕੋਈ ਜਾਗਦਾ ਫੇਰ ਇਹਨਾਂ ਨੂੰ ਫੇਜੇ ਕੋਲ ਲੱਗ ਜਾਂਦੇ ਆ ਐਸ ਨੂੰ ਕਹਿੰਦੇ ਕਈ ਕਰ ਨਹੀਂ ਨਾਇਕ ਕਿਰਪਾ ਨਦੀਪਾਨ ਕਪਰ ਉਹ ਤਾਂ ਕਹਿੰਦੇ ਨੇ ਹਿੰਦੂ ਵਸਦੀ ਬਾਰੇ ਗੱਲ ਕਰਾਈਏ ਜਿਹੜੇ ਉਹ ਕਹਿੰਦੇ ਨੇ ਕਲਪ ਸਾਡੀ ਗੁਰਮਤ ਦੀ ਅਰਥ ਕੀ ਨੇ ਉਹ ਇਹ ਦੁਬਾਰਾ ਅਰਥ ਨਹੀਂ ਜਿਹੜੇ ਦੱਸੇਦੇ ਪਹਿਲਾਂ ਕਲਪ ਦੇ ਸਾਡੇ ਕੀ ਨੇ ਕਈ ਕਲਪ ਕਈ ਕਲਪਣਾ ਲੋ ਤਪ ਤਾਪ ਕਰਨ ਆ ਜਿਹੜੇ ਤਪ ਤਾਪ ਕਰਨੇ ਕਲਪੀ ਹੋਈਓ ਬਤਾਲੇ ਸਾਡੀਆਂ ਆਪਣੀ ਆਪਣੀ ਵਾਤਾ ਕਲਪੀ ਹੋਈ ਲੋ ਕਾਲੇ ਕਲਪਨਿਕ ਮੱਤਾਂ ਦੇ ਤਪ ਤਾਪ ਕਰਦੇ ਨੇ ਕਈ ਕਰਦੇ ਨਹੀਂ ਬਰਬਤਾਂ ਦੇ ਕਲਪਨਿਕ ਮੱਤਾਂ ਨੇ ਹੋਈ ਬਤ ਕਹਿਦੇ ਨੇ ਕਲਪਨਿਕ ਮੱਤਾਂ ਦੇ ਤਪ ਤਾਪ ਕਰਦੇ ਨੇ ਕਈ ਨਹੀਂ ਕਿਰਪਾ ਨਦੀ ਪਾਣ ਪਰ ਪਰ ਕਿਰਪਾ ਨਦੀ ਦੀ ਜਿਹੜੀ ਹੈ ਨਾ ਪਰਮੇਸ਼ਰ ਦੀ ਥੋੜੀ ਜੀ ਵੀ ਇਹਨਾਂ ਤੇ ਕਿਰਪਾ ਨਹੀਂ ਪ੍ਰਾਪਤ ਹੋ ਕਰ ਸਕੇ ਕੋ ਮਤ ਕਾਲਪਣਾ ਕਰ ਪਰਮੇਸ਼ਰ ਦੀ ਥੋੜੀ ਜੀ ਵੀ ਕਿਰਪਾ ਹਾਸਲ ਨਹੀਂ ਕਰ ਸਕਦੇ ਹੋ ਕਾਲਪਨਕ ਮਤਾਂ ਵਾਲੇ ਤਪ ਕਰੀ ਜਾਣ ਇਹਨਾਂ ਨੇ ਟਾਇਰ ਪਜਕ ਲਾ ਕੇ ਚੱਕ ਕੇ ਨਾ ਉਹ ਕਰਿਆ ਹੋਇਆ ਵਾੜਾ ਫੇਰਦੇ ਨੇ ਉਹਨਾਂ ਤੇ ਕੋਹੋਰਾ ਕਿਰਪਾ ਨਹੀਂ ਹੋਣੀ ਨਕਸਤ ਹੋਈ ਅਜ ਤੱਕ ਜੇ ਹੋਈਆ ਦੱਸ ਦਣ ਕੀ ਕੀਤੇ ਹੋਰ ਕਿਰਪਾ ਕਿਰਪਾ ਨਾਲ ਬਾਣੀ ਰਹਿਦਾ ਹੁੰਦਾ ਇਹ ਤੇ ਹੋ ਜਾਂਦੀ ਉਰੋਂਬਰ ਦਾ ਤੇ ਕਿਰਪਾ ਹੋਈਆ ਮਹਾਰਾ ਦੇ ਕਬੀਰ ਤੇ ਹੋਈਆ ਉਹਨਾਂ ਨੇ ਕੋਈ ਦੱਸਿਆ ਤੁਸੀਂ ਦੱਸੋ ਕੀ ਹੈ ਤੁਸੀਂ ਇਹ ਬਾਣੀ ਦਾ ਅਰਥ ਕਰ ਦੋ ਨਵੀਂ ਲਖਣ ਦੀ ਛੱਡੋ ਗੱਲ ਹਾਂ ਥੋੜੇ ਤੇ ਕਿਰਪਾ ਹੀ ਹੋਈਆ ਜਿਹੜੀ ਮਾਇਆ ਵਰਤੀ ਹੈ ਤੁਹਾਨੂੰ ਇਹ ਕਿਰਪਾ ਇਹ ਕਿਰਪਾ ਨਹੀਂ ਹੈ ਸਰਾਫ ਹੈ ਇਹ ਮਾਇਆ ਆ ਜਾਣੀ ਦਾ ਸਰਾਫ ਹੈ ਕਿਰਪਾ ਦੀ ਹੈਗੀ ਜੇ ਤੁਸੀਂ ਵਿਖਿਆ ਦੀ ਵਰਖਾ ਨੂੰ ਕਿਰਪਾ ਸਮਝਦੇ ਹੋ ਇਹ ਵਿਖਿਆ ਦੀ ਵਰਖਾ ਹੈ ਅਬਰ ਦੀ ਵਰਖਾ ਨਹੀਂ ਹੈ ਵਾਇਆ ਹੁਣੀ ਕਿਨੇ ਲੋਕ ਤੁਹਾਨੂੰ ਪੁੱਛਦੇ ਨੇ ਕਿੰਨੀ ਵਾਇਆ ਇਹ ਵਿਖਿਆ ਦੀ ਵਰਖਾ ਹੈ ਵਿਖਾਦੇ ਥਲੇ ਡਬਗੇ ਤੁਸੀਂ ਇਹਨਾਂ ਨੂੰ ਤੁਸ ਬਹੁਤ ਦੇਰ ਦੇ ਵਿੱਚ ਵਿਖਿਆ ਤਾਂ ਹੋਊਗੀ ਇਹ ਉਹ ਥੱਲੇ ਚਲੇ ਗਏ ਸਭ ਇਹ ਤਾਂ ਵਿਖਿਆ ਦੀ ਵਰਖਾ ਹੈ ਨਾ ਦੇ ਦੇ ਜੇ ਫੋਕੜ ਧਰਮ ਸਬੇ ਤਜ ਹੈ ਜਿਹੜੇ ਸਾਰੇ ਫੋਕੜ ਧਰਮ ਤਜ ਦਿੰਦੇ ਨੇ ਸੰਸਾਰ ਦੇ ਇਹ ਸਾਰੇ ਫੋੜ ਧਰਮ ਨੇ ਵਿਖਿਆ ਦੀ ਬਰਖਾ ਲੇ ਜਿਹੜੇ ਮਹਾਪੁਰਖ ਨੂੰ ਆ ਦੇਖ ਆ ਗਈ ਫੋਕੜ ਇਹ ਫੋਕੜ ਧਰਮ ਨੇ ਸਾਰੇ ਜਿਹੜਾ ਇਹ ਤਜ ਦਿੰਦਾ ਇੱਕ ਚਿਤ ਕਿਰਪਾ ਨੇ ਹੋ ਕੇ ਕਿਰਪਾ ਨੂੰ ਜਪਦਾ ਹੈ ਜੇ ਦਊਗਾ ਜੋ ਦੇਵੇਂ ਸੋ ਖਾਏ ਜਿਹੜਾ ਉਹ ਦੇ ਦੇਗਾ ਉਹ ਖਾ ਲਾਂਗੇ ਕਬੀਰ ਕਹਿੰਦੇ ਜੋਗੀ ਭੂਸੀ ਖਾਏ ਮੈਨੂੰ ਜਵਾਂ ਦਾ ਆਟਾ ਬਣਾ ਮਿਲਿਆ ਨਾ ਮੈਂ ਜਵਾਂ ਦਾ ਛਾਣ ਜਿਹੜਾ ਹੁੰਦਾ ਪੂਰਾ ਉਹ ਖਾ ਕੇ ਗੁਜ਼ਾਰਾ ਕਰ ਲੂੰ ਪਰ ਭਗਤ ਰਾਮ ਦੀ ਨਹੀਂ ਛੱਡਦਾ ਤੇਰਾ ਪੱਲਾ ਨਹੀਂ ਛੱਡਦਾ ਆਟਾ ਬਣਾ ਮਿਲਿਆ ਜੀ ਜਵਾਂ ਦਾ ਜਵਾਂ ਦਾ ਪੂਰਾ ਤਾਂ ਹੁੰਦਾ ਨਾ ਉਹ ਤਾਂ ਸਸਤਾ ਹੁੰਦਾ ਨਾ ਕਹਿੰਦਾ ਉਹ ਖਾ ਕੇ ਜਰਾ ਕਰ ਲੋ। ਝੋਕੀ ਭੂਸੀ ਖਾਏ। ਸਾਖਤ ਸੰਗਣਾ ਜੋ। ਸਾਖਤ ਸੁਭਦੀ ਜਦੋਂ। ਭਗਤੀ ਨਹੀਂ ਛੱਡਦਾ। ਜਿਹੜੀ ਮੈਂ ਅੰਗੇ ਮਾਲਾ ਫੇਰੇ ਦਾ ਸੀ ਨਾ ਕਹਿੰਦਾ ਮੈਂ ਰਿੱਧੀ ਸਿੱਧੀ ਬਲਜੂਗੀ। ਉਧਰ ਨਹੀਂ ਜਾਂਦਾ। ਸਮਝਿਆ? ਜੇ ਫੋਕਟ ਧਰਮ ਸਵੇ ਤਜ ਹੈ। ਇਕ ਜਿਤ ਕਿਰਪਾ ਨੇ ਤਕੋ ਜਪ ਹੈ ਔਰ ਇਕ ਜਿਤ ਹੋ ਕੇ ਕਿਰਪਾ ਨੇ ਦਾ ਜਾਪ ਕਰਦੇ ਨੇ ਤੂੰ ਗੱਲ ਕਰਦੇ ਤੇ ਇਕ ਜਿਤ ਹੋ ਕੇ ਕਿਰਪਾ ਨੇਦ ਨੂੰ ਵੱਧਦੇ ਨੇ ਤੇ ਉਹ ਹੋਰ ਇਸ ਭਵ ਸਾਗਰ ਨੂੰ ਕੋਈ ਨਹੀਂ ਤਰ ਸਕਦਾ ਭਵ ਸਾਗਰ ਤਰਨ ਲਈ ਸਾਰਾ ਧਿਆਨ ਹੋਣਾ ਦਾ ਬਾਆ ਬਲ ਖਾਣ ਪੀਣ ਵਾਲ ਹੋਰ ਕਿਸੇ ਸਾਡੂ ਸਾਡੀ ਗੱਲ ਨੂੰ ਕੌਣ ਮੰਨਦਾ ਕੌਣ ਨਹੀਂ ਮੰਨਦਾ कौन ਸੁਣਦਾ ਕੌਣ ਨਹੀਂ ਸੁਣਦਾ ਸਾਡੇ ਵਰ ਕਨੇ ਬੰਦੇ ਨੇ ਕਨੇ नहीं ਹਣ ਇਹਦਾ ਉਹਨਾਂ ਨੂੰ ਕੋਈ ਮਤਲਬ गल ਇਸ ਗੱਲ ਤੇ ਕਿਹਨੂੰ ਚੰਗੀ ਲੱਗਦੀ ਗੱਲ ਕਿਹਨੂੰ ਨਹੀਂ ਚੰਗੀ ਲੱਗਦੀ ਇਹਦਾ ਗੱਲਾਂ ਸੇ ਕੋਈ ਮਤਲਬ ਨਹੀਂ ਕਿੰਨੇ ਆਦਮੀ ਸਾਡੇ ਨਾਲ ਟੁੱਟਦੇ ਨੇ ਕਿੰਨੇ ਆਦਮੀ ਸਾਨੂੰ ਬੁਰਾ ਸਮਝਦੇ ਨੇ ਸਾਡੀ ਇੱਜ਼ਤ ਵੱਧਦੀ ਹੈ ਜਾਂ ਘਟਦੀ ਹੈ ਕੋਈ ਮਤਲਬ ਨਹੀਂ ਇਸ ਗੱਲ ਦਾ ਉਹ ਆਪਣੇ ਅੰਦਰ ਹੀ ਨਾਲ ਗੁਰਬਾਣੀ ਨੂੰ ਇਮਾਨਦਾਰੀ ਨਾਲ ਮੰਨਦੇ ਨੇ ਗੁਰਬਾਣੀ ਦੀ ਇਮਾਨਦਾਰੀ ਨਾਲ ਗੱਲ ਕਰਦੇ ਨੇ ਗੁਰਬਾਣੀ ਨੂੰ ਸਾਰੇ ਬਦਦਾਰੀ ਨਾਲ ਚਲਦੇ ਸੀ ਉਹ ਆਪਣੇ ਵਾਸਤੇ ਚਲਦੇ ਨੇ ਕਿਸੇ ਵਾਸਤੇ ਨਹੀਂ ਚਲਦੇ ਉਹਨਾਂ ਨੇ ਬਸ ਸੰਗਤ ਤਰਨਾ ਉਹਨਾਂ ਨੂੰ ਕੀ ਲੱਗੇ ਕਿਸੇ ਤੇ ਨਹੀਂ ਉਹ ਸਿਰਫ ਸੰਗਤ ਨੂੰ ਤਰਦੇ ਨੇ ਬਾਕੀ ਕੋਈ ਨਹੀਂ ਤਰਦਾ ਕੋਈ ਕੁਝ ਕਰੀ ਜਾਵੇ ਕੋਈ ਨਕਲ ਕਰੀ ਜਾਵੇ ਉਹਦੀ ਦਰਬਾਰ ਸਾਹਿਬ ਦਾ ਹੋਰ ਬਣਾਉਣਾ ਅਸੀਂ ਆਪਣਾ ਪੈਸੇ ਇਹ ਸਭ ਆਯਾਦਿਆਂ ਖੇਡਾਂ ਨੇ ਸ੍ਰੀcke ਬਾਜੀ ਕਰ ਬਾਇ ਦੀ ਖੇਡ ਕਰ ਲੋ ਇਹ ਦੇ ਬਾਬਾ ਭੁੱਲ ਨਾ ਚ ਦੁਬਾਰਾ ਦੇ ਦੀ ਤਰਦੇ ਜਨਮ ਲੈਂਦੇ ਐਸ ਭਵ ਸਾਗਰ ਦੇ ਵਿੱਚ ਭੁੱਲ ਕੇ ਵੀ ਦੁਬਾਰਾ ਨੇ ਉਹ ਹੁਣ ਤਾਂ ਵਸਾਂ ਨਿਕਲੇ ਨੇ ਉਹ ਤਾਂ ਇਧਰ ਨੂੰ ਪੈਰ ਕਰਕੇ ਵੀ ਨਹੀਂ ਸੋਲਦੇ ਉਹ ਨਹੀਂ ਮਾਇਆ ਮਾਇਆ ਦਾ ਮਾਇਆ ਉਹ ਤੂੰ ਚੱਕਣਾ ਨਹੀਂ ਚਾਹੁੰਦੇ। ਸ਼ਰੀਰ ਬਾਦਮੀ ਜੇੜ ਤੇ ਜਾਦਾ ਹੁੰਦਾ ਨਾ ਛੱਟ ਕੇ ਜੇੜ ਤੇ ਕਿਤੇ ਚਲਿਆ ਜਾਵੇ। ਉੱਥੇ ਕੋਈ ਗਲਤੀ ਹੋ ਜਵੇ। ਤਾਂ ਉੱਥੇ ਬੱਤਾਡੇ ਕਹਿੰਦੇ ਵੀ ਪ੍ਰਮਾਤਮਾ ਇੱਧਰ ਫੇਰ ਨਾ ਲੈਏ ਕਿਤੇ ਮੈਨੂੰ। ਉਹਦਾ ਇਹ ਕਹਿੰਨਾਂ ਇੱਧਰ ਨੂੰ ਫੇਰ ਨਾ ਲੈਈ ਮੈਂ ਰਹੁ ਇੱਧਰ ਨੂੰ ਕਰਦੀ ਕਿ। ਉਹਦਾ ਇਹ ਕਹਿ ਕੇ ਹੁੰਦੇ ਨੇ ਇੱਥੇ ਜਾਂਦੇ ਨੇ। ਉਹਦਾ ਕਹਿੰਨਾਂ ਇੱਥੋਂ ਲੈ ਜਾ ਫੇਰ ਫੇਰ ਕਿੱਥੇ ਹੁਣ ਤਾਂ ਮਸਾੜਾ ਛੱਡਾ ਛੱਟੇ। ਆ ਜਿਹੜੇ ਆਇਆ ਲੋਕ ਜਿਹੜੇ ਬੜੇ ਹੋਏ ਨਾ ਉਹਨਾਂ ਨੇ ਜਾਣਾ ਕਿੱਥੇ ਹੈ ਉਹਨਾਂ ਦੀ ਉਹਨਾਂ ਦਾ ਵਸਾ ਉਹਨਾਂ ਦਾ ਜੀ ਲੱਗਿਆ ਹੋਰੇ ਜਿੱਦੀ ਸੰਗਤ ਉਹਨਾਂ ਨੇ ਜਿਆਦਾ ਇਕੱਠੀ ਕੀਤੀ ਏ ਉਹਨਾਂ ਉਹ ਤਾਂ ਕਹਿੰਦੇ ਨੇ ਕੱਪੜਾ ਸਾਡੇ ਇੱਥੇ ਰੱਖਿਓ ਸੀ ਫੇਰ ਆਏ ਜੇ ਛੱਡ ਵੀ ਉਹਨਾਂ ਦੀ ਤਾਂ ਪਾਰਟੀ ਬਣੀ ਹੁੰਦੀ ਉੱਥੇ ਜੇਲ੍ਹ 'ਚ ਉਹ ਹੀ ਜੇਲੇ ਘਰ ਹੁੰਦਾ ਉਹਨਾਂ ਨੂੰ ਇਕ ਨਾਮ ਬਿਨਾ ਨਹੀਂ ਕੋਟ ਵਰਤੀ ਇਕ ਨਾਮ ਬਿਨਾ ਨਹੀਂ ਕੋਟ ਵਰਤੀ ਵਰਤੀ ਨਾਮ ਤਾਂ ਬਿਨਾ ਕਰੋਨਾ ਪ੍ਰਕਾਰ ਦੇ ਤੁਹਾਡੇ ਸਾਧਨ ਕੋਈ ਛਿੜਾ ਨੀ ਸਕਦਾ ਇੱਥੋਂ ਹੋਰ ਕਰੋੜਾਂ ਪ੍ਰਕਾਰ ਦੇ ਜੱਪ ਤੱਕ ਕੁਝ ਵੀ ਕਰ ਲੋ ਨਹੀਂ ਸਕਦਾ ਤੁਹਾਨੂੰ ਕਰੋੜਾਂ ਇੰਤਜ਼ਾਮ ਕਰ ਲੋ ਨਹੀਂ ਛੁੱਟ ਸਕਦਾ ਅੱਲਾ ਨਾਮ ਛਿਲਾ ਦੂਗਾ। ਏਮਾ ਏਮਾ ਬੇਦ ਉਚਾਰਤ ਸਾਹ ਸੁਤੀ। ਏਵੇਂ ਹੀ ਬੇਦ ਦੀ ਗੱਲ ਬੇਦ ਉਚਾਰਨ ਕਰਦਾ ਏਵੇਂ ਹੀ ਗੁਰਮਤਿ ਸਾਹ ਸੁਤੀ ਗੁਰਮਤਿ ਰੂਹਾਂ। ਏਮਾ ਬੇਦ ਉਚਾਰਤ ਸਾਹ ਸੁਤੀ। ਬੇਦ ਦੀ ਜਿਹੜੀ ਮਤ ਹੈ ਉਹ ਇਹ ਗੁਰਮਤ ਹੈ। ਜਿਨ੍ਹਾਂ ਨੂੰ ਬੇਦ ਤੋਂ ਅਰਜੀ ਹੈ। ਆ ਤਾਂ ਅਸ ਵਾਲੀ ਤੋਂ ਤਾਂ ਅਲੱਗੀ ਦੀ ਉਹਨੂੰ ਗੁਰਬਾਣੀ ਤੇ ਜਿਹੜੀ ਦਸ ਬੁੱਧੀ ਹੈ ਇਹਨੂੰ ਤਾਂ ਮੰਨਦੇ ਨੇ ਦਸ ਬਾਸ਼ਾ ਦੀ ਗੇ ਇਹ ਤਾਂ ਬੇਦਵਾਰ ਬਾਰ ਬਾਰ ਆਇਆ ਤੇ ਦੇ ਵਿੱਚ ਗੁਰਬਾਣੀ ਬੇਦਵਾਰੀ ਹੈ ਬੇਦ ਵਿੱਚ ਨਾਮ ਸੀਗਾ ਨਾਮ ਧੁਰ ਤੋਂ ਹੀ ਚਲਾ ਆਇਆ ਹੈ ਸਰ ਉਹ ਸਿਮਰਦੇ ਸ਼ਾਸਤਰ ਯਾਦ ਆਏ ਨੇ ਉਹਨਾਂ ਨੇ ਉਲਟੇ ਰਸਤੇ ਪਾਇਆ ਸਾਡੇ ਜਿਹੜਾ ਇਤਿਹਾਸ ਲਿਖਿਆ ਉਹ ਉਲਟੇ ਰਸਤੇ ਪਾਇਆ ਗੁਰਦਾਸ ਭਾਈ ਗੁਰਦਾਸ ਦੇ ਨੋਂ ਤੇ ਜਿਹੜੀਆਂ 12 ਲਿਖੀਆਂ ਭਾਈ ਗੁਰਦਾਸ ਦੀ ਕੋਈ ਵਾਰ ਨਹੀਂ ਉਹਦੇ ਨੋਂ ਤੇ ਜਿਹੜੀਆਂ 12 ਲਿਖੀਆਂ ਉਹਨਾਂ ਨੇ ਉਲਟੇ ਰਸਤੇ ਪਾਇਆ ਗੁਰਬਾਣੀ ਔਰ ਵੇਦਬਾਣੀ ਕੋਈ ਗੱਲ ਹੈ ਕਈ ਪਲਟਾਂ ਚ ਹੈ ਕਬੀਰ ਨੇ ਜਿਹੜੀ ਪੜੀ ਉਹ ਸੰਸਕ੍ਰਿਤ ਨਹੀਂ ਸੀ ਹੈ ਹੁਈ ਵੇਦਬਾਣੀ ਗੁਰਬਾਣੀ ਵੇਦਬਾਣੀ ਹੋਈ ਹੈ ਇਹ ਹੀ ਹੈ सरस्वती कहंदे ने ਜਿਹਦੇ ਚ ਸਰਬ ਸ੍ਰੇਸ਼ਟ ਦਾ ਸੋਵੇ ਨਾਮ ਦਾ ਸੋਵੇ ਅਸਰਸਤੀ ਐ ਸਰਸਤੀ ਸਾਰ ਗਿਆਨ ਹੋਵੇ ਜੀ ਚ ਦੁਨੀਆ ਦਾ ਸਾਰ ਗਿਆਨ ਹੋਵੇ ਜੀ ਚ ਆਤਮ ਗਿਆਨ ਹੋਵੇ ਸਰਸਤੀ ਹਿਤ ਜੋ ਵਾਰਸ ਕੇ ਚਸਕੇ ਰਸ ਹੈ ਜੋ ਵਾਰਸ ਕੇ ਚਸਕੇ ਰਸ ਹੈ ਜਿਨ੍ਹਾਂ ਨੂੰ ਉਸ ਨਾਮ ਦੇ ਰਸ ਦਾ ਚਸਕਾ ਪੈ ਗਿਆ ਨਾ ਤੇ ਉਹ ਪੁੱਗ ਨਾ ਕਾਲ ਫੰਦਾ ਫਸ ਹੈ ਉਹ ਪੁੱਲ ਕੇ ਵੀ ਕਾਲ ਦੇ ਫੰਦੇ ਚ ਨਹੀਂ ਪੈ ਸਕਦੇ ਕਾਲ ਦੇ ਫੰਦੇ ਚ ਕੀ ਹੈ ਬਾਹ ਵਾਲਾ ਚੋਗਾ ਕਾਲ ਦੇ ਫੰਦੇ ਚ ਹੈ ਇਹ ਚੋਗਾ ਜੁਗਦਾ ਨਾ ਸੰਤ ਸਿੱਧੀ ਅਸਿੱਧੀਆਂ ਦਾ ਚੋਗਾ ਦਾ ਦੀਦਾ ਇਹਨਾਂ ਨੂੰ ਝਾੜ ਲਈ ਦੀ ਫੱਦਾ ਨਹੀਂ ਦੀਦਾ ਬਸ ਇੰਨਾ ਫਰਕ ਹੈ ਜਿਹੜੇ ਦੂਏ ਨੇ ਉਹਨਾਂ ਨੂੰ ਚੋਗਾ ਵੀ ਦੀਦਾ ਉਹਨਾਂ ਨੂੰ ਫੱਦਾ ਵਹਿਲਾ ਦੀਦਾ ਫੱਦਾ ਉੱਤੇ ਹੈ ਚੋਗਾ ਥੱਲੇ ਹੈ ਜੇ ਪੰਛੀ ਨੂੰ ਜੋਗਾ ਦੇਖੇ ਜਾਲ ਨਾਲ ਨਾ ਦੇਖੇ ਫਿਰ ਫਸ ਜਾਂਦਾ ਜਿਹੜੇ ਪੰਛੀ ਨੂੰ ਜਾਲ ਨਹੀਂ ਜਵੇ ਜਾਲ ਬਰੀਕ ਇਹ ਨਾ ਬਣਾਉਂਦੇ ਤਾਂ ਕਿ ਫਸੜ ਜਿਹੜਾ ਜਾਲ ਹੈ ਪਰਮ ਦਾ ਪਰਮ ਦਾ ਜਾਲ ਹੈ ਜੰਮਦਾ ਜਾਲ ਹੈ ਪਰਮ ਦਾ ਜਾਲ ਹੁੰਦਾ ਥੱਲੇ ਜੋਗਾ ਪਿਆ ਸੰਸਾਰ ਦਾ ਜਿਹੜਾ ਜੋਗਾ ਤੈਨੂੰ ਬਊਗਾ ਨਾ ਭੱਜ ਕੇ ਉੱਤੋਂ ਉੜਦਾ ਉੜਦਾ ਸਭ ਜੋ ਫਸ ਗਿਆ ਜਾਲ ਚ ਚੋਗਾ ਦਾ ਫਿਰ ਉਹਨੇ ਕੀ ਖਾਣਾ ਜਾਲ ਨਹੀਂ ਫੜ ਲੈਣਾ ਉਹਨੂੰ ਛੱਡ ਦੇਈ ਜੂਆ ਭਾਜਦਾ ਜਾਂਦਾ ਯਾਰ ਨਾ ਪਿੰਜਰੇ ਚ ਖਾਣਦਾ ਜਾਂਦਾ ਜਿਹੜਾ ਵਿੱਚ ਪਿਆ ਹੁੰਦਾ ਰਾਸ਼ਨ ਉਹਨੂੰ ਜਦ ਦੇਖਦਾ ਮੈਂ ਫਸ ਗਿਆ ਖਾਣਾ ਭੁੱਲ ਜਾਂਦਾ ਫਿਰ ਫੇੜੀ ਡਿੱਗਰਦਾ ਉਹਦੇ ਫਿਰ ਮੌਤ ਦੀ ਗੱਲ ਆਉਂੂਰੇ ਤਾਂ ਮੌਤ ਹੀ ਘੜੀ ਨੇੜੇ ਰੌਂਦੀ ਐ ਫਿਰ ਕਿਤੇ ਫਿਰ ਤਾਂ ਭੁੱਖ ਮਰ ਜਾਂਦੀ ਐ ਜਿਹੜਾ ਜਾਗਦਾ ਨੇ ਜਾਗਦਾ ਹੈ ਉਹ ਰੁੱਦੀਦਾ ਜੰਮਦਾ ਜਾਲ ਇਹਨਾਂ ਸੁੱਤੇ ਨੂੰ ਕੀ ਦੇਖਣਾ ਇਹਨਾਂ ਨੂੰ ਕੀ ਇਹ ਤਾਂ ਭਾਲਦੇ ਨੇ ਸੰਤ ਤਾਂ ਬਣੀ ਤਾਂ ਨੇ ਚੋਗੇ ਵਾਸਤੇ ਬਣੇ ਨੇ ਸੰਤ ਦੌਰ ਕਾਦੇ ਵਾਸਤੇ ਬਣੇ ਨੇ ਇਹਨਾਂ ਨੇ ਕੀ ਲੈਣਾ ਇੱਥੋਂ ਨਾਮ ਤਿਆਰ ਹੋਲਦੇ ਰਸਤੇ ਰਾਸਹਿਲਾਂ ਨੂੰ ਕਿਹਨਾਂ ਦੱਸਿਆ ਉਹ ਤਾਂ ਜਿਹੜਾ ਰਾਸ ਕਰਕੇ ਸੁਤ ਬਣੇ ਉਹੀ ਰਾਸ ਪੜਦਾ ਹੁੰਦਾ ਰਾਸ ਵਾਸਤੇ ਹੀ ਸੁਤ ਬਣੇ ਉਹ ਪੜਦਾ ਹੁੰਦਾ ਜਿਹੜਾ ਰਾਸ ਵਾਸਤੇ ਨਾ ਬਣੇ ਉਹ ਇਹਨਾਂ ਆਣੇ ਫਿਰ ਕੰਬ ਥੋੜੀ ਕਰਦਾ ਢੋਲਕੀਆਂ ਥੋੜੀ ਘੁੱਟਦਾ ਉਹਨਾਂ ਨੇ ਕੀ ਲੋੜ ਏ ਢੋਲਕੀ ਘੁੱਟਣ ਦੀ ਉਹਦੇ ਵਿੱਚ ਕਿਹਦਾ ਰਾਸ ਰੱਖਿਆ ਹੋਇਆ ਉਹ ਢੋਲਕੀ ਘੁੱਟਣ ਦੀ ਉਹ ਜਿਹੜੀ ਹੈਗਾ ਉਦਰਾ ਉਜੇ ਤਾਂ ਪਹਿਲਾਂ ਦੇ ਸਾਨੂੰ ਬੜਿਆ ਹੋਵੇ ਢੋਲੀਆਂ ਕੁੱਟਣ ਵਾਲੇ ਰੁਫੇ ਤੇ ਗਾਲੋਦਨ ਬੜਿਆ ਬੜਿਆ ਕੇ ਸਾਨੂੰ ਈ ਇੱਕ ਆਸ ਨੂੰ ਗਏ ਉਧਰ ਨੂੰ ਜੋ ਉਹਨਾਂ ਕੋਲ ਉਹ ਲੈਣ ਗਏ ਜੋ ਉਹਨਾਂ ਨੂੰ ਬੜਿਓ ਲੈਣ ਗਏ ਜੋ ਉਹਨਾਂ ਡੇਰੇ ਬਣਾਏ ਸੰਗਤ ਉਹ ਲੈਣ ਗਏ ਤੇ ਉਹ ਰੂਲ ਮਿਲ ਗਿਆ ਜੋ ਬਾਹਰ ਰਸ ਕੇ ਜੋ ਬਾਹਰ ਰਸ ਕੇ ਚਸਕੇ ਰਸ ਹੈ ਜਿਹਨਾਂ ਨੂੰ ਉਸ ਰਸ ਦਾ ਚਸਕ ਚਸਕਾ ਪੈ ਜਾਂਦਾ ਹੈ ਉਹ ਰਸੇ ਪੀਂਦੇ ਨੇ ਫਿਰ ਉਹ ਦੁਗਾਸ ਨਹੀਂ ਪੀਂਦੇ ਨਾਮ ਰਸ ਨੂੰ ਛੱਡ ਕੇ ਮਾਇਆ ਦਾ ਕੋਈ ਰਸ ਉਹਨਾਂ ਵਾਸਤੇ ਕੋਈ ਮੈਨੇ ਨਹੀਂ ਰੱਖਦਾ ਤੇ ਉਹ ਕਾਲ ਫੰਦਾ ਫਸ ਉਹ ਭੁੱਲ ਕੇ ਵੀ ਕਾਲ ਦੇ ਫੱਦੇ ਦੀ ਫਸਦੇ ਇਹ ਰਸਨਾ ਕੀ ਕਹਿੰਦਾ ਗੁਰੂ ਨਾਨਕ ਦੇਵ ਜੀ ਇਹ ਰਸਨਾ ਉਹ ਮਨ ਰਸਨਾ ਚ ਰਹੀ ਮਨ ਰਸਨਾ ਚ ਰਹੀ ਆਪਣੀ ਰਸਨਾ ਨੂੰ ਸੰਬੋਧਨ ਕਰਦੇ ਨੇ ਔਰ ਰਸਨਾ ਜੀਬ ਨਹੀਂ ਦਿੰਦੀ ਰਸਨਾ ਦੀ ਅਕਲ ਸੰਬੋਧਨ ਜੀਬ ਦਾ ਜਿਹੜਾ ਕੋ ਬਾਧਾ ਉਹਦੇ ਨਾਲ ਪੁੱਛ ਕਰਦਾ ਮੇਰਾ ਜੀ ਕਰਦਾ ਖਾਣ ਨੂੰ ਜੀਬ ਨਹੀਂ ਕਰਦੀ ਔਰ ਜੀ ਹੈ ਉਹ ਰਸਨਾ ਕਹਿੰਦਾ ਮੇਰਾ ਫਰਾਲੀ ਚੀਜ਼ ਖਾਣ ਨੂੰ ਜੀ ਕਰਦਾ ਉਹ ਆ ਰਸਨਾ ਜਿਹੜਾ ਜੀ ਹੈ ਜੀ ਬਾਪੇ ਰਸਨਾ ਇਹ ਰਸਨਾ ਤੂੰ ਆ ਨਾ ਰਸ ਰਾਜ ਰਹੀ ਤੂੰ ਤਾਂ ਹੋਰ ਹੋਰ ਨਾ ਸਜ ਰਹੀ ਤੇਰੀ ਪਿਆਸ ਨਾ ਜਾਏ ਇਸੇ ਕਰਕੇ ਦਾ ਤੇਰੀ ਪਿਆਸ ਨਹੀਂ ਜਾ ਰਹੀ ਇਸੇ ਕਰਕੇ ਦਾ ਤੇਰੇ ਤ੍ਰਿਸ਼ਨਾ ਵਧ ਗਈ ਪਿਆਸ ਨਾ ਜਾਏ ਹੋਰ ਤੱਕ ਕਿਤੇ ਇਹ ਪਿਆਸ ਜਾਣੀ ਤੇਰੀ ਕਿਤੇ ਜਦ ਖੱਲਾ ਸਾਰੇ ਸੁਸਾਰ ਸਾਰੀਆਂ ਜੂਨੀਆਂ ਭੂਤ ਲੀਆਂ ਕਿਹੜਾ ਰਸ ਹੈ ਨਾ ਤਾਂ ਖਾਦਾ ਦੀ ਬਿਸਤਰਾ ਦੇ ਵਿੱਚ ਤੈਂ ਰਸਾਰੇ ਖਾਲੇ ਬਿਸਤਰਾ ਦਾ ਕੀੜਾ ਹੋ ਕੇ ਕਿਹੜਾ ਰਸ ਹੈ ਲਾ ਖਾਦਾ ਦੀ ਫਲ ਫਰੂਟ ਹਰੇਕ ਚ ਆਦਮੀ ਬਣ ਕੇ ਨਹੀਂ ਖਾਦਾ ਕੀੜਾ ਬਣ ਕੇ ਤਾਂ ਖਾਦਾ ਰਾਂ ਹਰ ਫਲ ਦੇ ਕੀੜੇ ਪੈਦੇ ਨੇ ਹਰ ਫਰੂਟ ਦੇ ਕੀੜੇ ਪੈਦੇ ਨੇ ਜੇ ਆਦਮੀ ਬਣ ਕੇ ਨਹੀਂ ਬਣਿਆ ਉਹ ਕੀੜੇ ਦੇ ਜਨ ਵਿੱਚ ਤਾਂ ਮਿਲੇ ਹੋਰ ਹਰ ਦਰਖਤ ਤੇ ਕੀੜੇ ਹੁੰਦੇ ਨੇ ਸਾਰੇ ਰਸ ਸੰਸਾਰ ਦੇ ਚੋਣੇ ਨੇ ਜੀਵ ਨੂੰ ਚਾਹ ਕਿਸੇ ਰੂਪ ਚ ਚਗਾਏ ਹੁਣ ਤਾਂ ਹੀ ਦੀਆਂ ਜੋਦੀਆਂ ਨੇ ਹਰ ਪੱਤੇ ਦਾ ਰਸ ਰੂਖ ਹਰ ਕੈਟਾਗਰੀ ਦਾ ਰਸ ਇਹਨੇ ਚੂਸਿਆ ਫਿਰ ਪਿਆਸ ਤੇ ਦੀ ਗਈ ਦੀ ਜਾਉਗੇ ਕਿਵੇਂ ਜਿੱਥੇ ਹਰ ਰਸ ਪੱਲੇ ਨਾ ਪਾਏ ਜਿੱਥੇ ਹਰ ਰਸ ਪੱਲੇ ਨਾ ਪਾਏ ਜਿੰਨਾ ਜਰ ਹਰ ਰਸ ਪੱਲੇ ਦੀ ਪੈਂਦਾ ਪਿਆਸ ਨਹੀਂ ਜਾਣੀ ਗੁਰੂ ਅਰਬਿੰਦਾਸ ਜੀ ਕਹਿੰਦੇ ਨੇ ਉਹਨਾਂ ਦੀ ਗਈ ਸੀ ਤਾਂ ਕਹਿੰਦੇ ਨੇ ਪਹਿਲਾਂ ਗਾਇੀ ਦੀ ਸੀ ਸਮਝ ਆਈ ਉਹ ਦੱਸੀ ਜੇ ਚਾਰ ਹਰ ਹਸਪੱਲੇ ਨਾ ਪਾਏ ਹਰ ਹਸ ਪਾਏ ਪੱਲੇ ਫਿਰ ਤਾਂ ਹਰ ਹਸ ਪੱਲੇ ਪਵੇਗਾ ਤਾਂ ਸਮਝ ਆਵੇ ਕਿ ਤੋ ਕੋਈ ਦੇਲੇ ਵਾਲਾ ਹੋਵੇਗਾ ਤਾਂ ਲੱਭੇ ਫਿਰ ਪੀਏ ਹਰਸ ਨਾ ਪਹਿਲਾਂ ਤਾਂ ਸੁਣ ਲਵੇ ਫਿਰ ਪੀ ਲਵੇ ਜੇ ਕੋ ਖਾਵੇ ਜੇ ਕੋ ਪੁੱਛੇ ਗੁਰਬਾਣੀ ਨੂੰ ਤਿਸਕਾ ਹੋਇ ਹਾਰੋ ਫਿਰ ਪੀਏ ਹਰਸ ਬੌੜ ਨਾ ਦ੍ਰਿਸ਼ਨਾ ਲੱਗ ਆਏ ਤੇ ਤੇਰੇ ਨਾਲ ਕੀ ਦ੍ਰਿਸ਼ਨਾ ਕੇ ਫੇਰ ਉਹ ਦੂਏ ਰਸਨ ਖਾਉ ਫੇਰ ਦੂਏ ਰਸਨ ਪੁੱਛੂ ਬਤ ਆ ਗੱਲ ਸੀ ਇੱਥੇ ਕਹੀ ਭੋਲ ਕਬ ਨਹੀਂ ਫਸਦਾ ਬੋੜ ਨਾਲ ਤ੍ਰਿਸ਼ਨਾ ਲੱਗਿਆ ਹੈ ਕਹੇ ਨਾਨਕ ਹੋਰ ਅਨਰਹ ਸਭ ਇਸ ਜਾਂ ਹਰਬਸੈਵਨ ਜਹਰਬਸ ਬਲੇ ਆਏ ਹਰਬਸੈਵਨ ਹਰਬਸੈਵਨ ਆਏ ਜੋ ਹਰ ਬੰਦੇ ਵਿੱਚ ਆ ਕੇ ਬਸ ਜਾਂਦਾ ਜਾਂ ਸ਼ਬਦ ਅੰਦਰ ਪ੍ਰਗਟ ਹੋ ਜਾਂਦਾ ਹੈ ਜਿਹੜਾ ਉਹ ਰਸ ਆ ਉਹ ਫਿਰ ਬਸ ਸੋਰ ਅੱਲਾ ਸਭ ਬਿਸਰ ਜਾਂਦੇ ਨੇ ਸਾਰੇ ਫੇਰ ਨਹੀਂ ਕੋਈ ਹੋਰ ਰਸ ਰਹਿ ਜਾਂਦਾ ਇਹੀ ਗੱਲ ਇੱਥੇ ਕਹੀ ਹੋਈ ਹੈ ਸਾਰੀ ਉਹ ਜਿਹੜੀ ਆਦ ਵਿੱਚ ਕਹੀ ਹੋਈ ਹੈ ਹਰ ਗੱਲ ਆਦ ਦੇ ਨਾਲ ਮਿਲਦੀ ਹੈ ਪਰ ਮਿਲਦੀ ਹੈ ਤਾਂ ਜੇ ਬੁੱਧ ਪ੍ਰਗਾਸ ਹੋਵੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਦਾ ਵਿਚਾਰਾ ਨੇ ਕੀ ਮਿਲਦੀ ਹੈ ਕੀ ਮਿਲੌੜੀ ਉਹਨਾਂ ਦੇ